ਕੇਆਰਪੀ 1550 ਐਮ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ 11 ਵਜੇ 9 ਮਿੰਟ ਹੋਇਆ ਅੱਜ ਹਲੇ 19 ਜਨਵਰੀ ਦਾ ਦਿਨ ਹੈ ਵੀਰਵਾਰ ਹੈ ਬਰਾ 2017 ਦਾ 6 ਮਾਰਗ ਨਾਨਕ ਸਈ ਸ਼ਰਮਤ 548 ਨਿਗਾ ਹਾਰਦਿਕ ਸਵਾਗਤ ਹੈ ਅੱਜ ਵੀ ਲੋਕ ਸਭਾ ਦੇ ਵਿੱਚ ਅਮ ਘਟਨਾਵਾਂ ਗੱਲਾਂ ਬਾਤਾਂ ਗੀਤ ਸੰਗੀਤ ਸੁਰਖ ਦੇ ਮਸਲਿਆਂ ਤੇ ਗੱਲਬਾਤ ਹੋਏਗੀ ਜੀ ਪਹਿਲੇ ਹਿੱਸੇ ਦੇ ਵਿੱਚ ਅਮਨ ਖੈਰਾ ਸੀਡਬਲਿਊਸੀ ਤੋ ਗੱਲਬਾਤ ਕਰਨਗੇ ਦੂਸਰੇ ਦੋਨਾਂ ਹਿੱਸਿਆਂ ਦੇ ਵਿੱਚ ਪੰਜਾਬ ਦੀਆਂ ਖਬਰਾਂ ਦੁਨੀਆ ਦੀਆਂ ਖਬਰਾਂ ਤੇ ਉਸ ਦੇ ਨਾਲ ਨਾਲ ਭਾਰਤ ਦਾ মিডিਆ ਜਿਹੜਾ ਉਸ ਦੀ ਗੱਲਬਾਤ ਮੈਂ ਕਰਨੀ ਚਾਹੁੰਦਾ ਦੇ ਵਿੱਚ ਜਿੰਨੇ ਵੀ ਜਰਨਲਿਸਟ ਨੇ ਤੇ ਉਹਨੂੰ ਉਹਦਾ ਮਾਲਕ ਕੌਣ ਹੈ ਉਸ মিডিਆ ਆਊਟਲੈਟਸ ਦਾ ਇਸ ਦਿਨ ਆਲ 6000 ਕਰੋੜ ਦੀ ਸਿੰਥੈਟਿਕ ਡਰੱਗ ਦੇ ਵਿੱਚ ਜਿੱਥੇ ਗ੍ਰਿਸ਼ ਭੋਲਾ ਬਰੀ ਹੋਣ ਦੇ ਕਿਨਾਰੇ ਹੈ ਬਿਲਕੁਲ ਸਾਰੇ ਇੱਕ ਇੱਕ ਕਰਕੇ ਬੰਦੇ ਛੁੱਟ ਗਏ ਤੇ ਦੋਸ਼ੀ ਕੌਣ ਸੀ ਇਸ ਗੱਲ ਨੂੰ ਲੱਭਾਂਗੇ ਕੈਰੋਲ ਮੈਗਜ਼ੀਨ ਦੇ ਵਿੱਚ ਸਵਾਰ ਬਲ ਇੱਕ ਚੜ੍ਹਦੀ ਬਰੇਸ ਦਾ ਮੁੰਡਾ ਜਰਨਲਿਸਟਾਂ ਨੇ ਬਹੁਤ ਵਧੀਆ ਇੱਕ ਖੁੱਲੀ ਰਿਪੋਰਟ ਇਸ ਦੀ ਤੇ ਤੁਸੀਂ ਸ਼ਾਮਲ ਹੋਣਾ ਪੰਜਾਬ ਦੇ ਵਿੱਚ ਰਾਜਨੀਤੀ ਬੜੀ ਗਰਮ ਹੋਈ ਪਈ ਹੈ ਸਾਰੇ ਜਿਹੜੇ ਸਾਰੀਆਂ ਪਾਰਟੀਆਂ ਉਹ ਤੇਜ਼ੀ ਦੇ ਨਾਲ ਆਪਣਾ ਚੋਣ ਪ੍ਰਚਾਰ ਕਰ ਰਹੀਆਂ ਹੈ ਕਈ ਕੰਸਤੀਸ਼ਨ ਸੀ ਛੱਡ ਕੇ ਭੱਜ ਰਹੇ ਨੇ ਕੋਈ ਕਿਤੇ ਨੂੰ ਜਾ ਰਹੇ ਕੋਈ ਕਿਤੇ ਨੂੰ ਜਾ ਰਿਹਾ ਦੋ-ਦੋ ਜਗ੍ਹਾ ਤੋਂ ਖੜ੍ਹ ਰਹੇ ਨੇ ਕਿਵੇਂ ਨਾ ਕਿਵੇਂ ਕੁਰਸੀ ਹੱਥ 'ਚ ਰਹਿ ਜਾਏ। ਚੱਲ ਰਹੀ ਹੈ ਪੰਜਾਬ ਦੇ ਵਿੱਚ। 1844 247 1550 ਇਹ ਆਰਟੀਆਈ ਦੇ ਤਹਿਤ ਇੱਕ ਬਹੁਤ ਵੱਡਾ ਇਨਕਸ਼ਾਫ ਜਿਹੜਾ ਦਿੱਲੀ ਦੇ ਵਿੱਚ ਹੋਇਆ ਕਿ 300 ਕਰੋੜ ਦਾ ਠੇਕਾ ਸੜਕਾਂ ਦਾ ਜਿਹਦੇ ਵਿੱਚ ਬਿਲਾ ਦੀ ਅਦਾਇਗੀ ਅੱਧ ਹੋ ਗਈ ਹੈ। ਉਸ ਦੇ ਵਿੱਚ ਕੇਜਰੀਵਾਲ ਦੇ ਸਾਡੁ ਦੀ ਗੱਲ ਬਾਂਸਲ ਦੀ ਚਲਦੀ ਹੈ ਕਿ ਠੇਕਾ ਉਸ ਨੂੰ ਦਿੱਤਾ ਗਿਆ ਇਹ ਵੀ ਇੱਕ ਖਬਰ ਨਮੀ ਦਿੱਲੀ ਤੋਂ ਛਪੀ ਹੈ ਤੇ ਜਿਸ ਦੀ ਇੱਕ ਵੀ ਛੋਟੀ ਜੀ ਵੀਡੀਓ ਹੈ ਜਿਹੜੀ ਮੈਂ ਸ਼ੇਅਰ ਕੀਤੀ ਹੈ ਫੇਸਬੁੱਕ ਤੇ ਉਸ ਨੂੰ ਵੇਖਿਆ ਪਤਾ ਨਹੀਂ ਜਿਹੜੀ ਕਹਾਣੀ ਕਿਵੇਂ ਹੈ ਪਰ ਜਿਹੜੀ ਇਸ ਦੇ ਬਾਅਦ ਅਰਵੰਦ ਕੇਜਰੀਵਾਲ ਦਾ ਕੋਈ ਬਿਆਨ ਨਹੀਂ ਆਇਆ ਪਰ ਇਹ ਗੱਲ ਨੇ ਬਹੁਤ ਖਬਰ ਜਿਹੜੀ ਆ ਗਰਮ ਕਰ ਦਿੱਤੀ 18442471550 ਦੂਸਰੇ ਪਾਸੇ ਕਹਿੰਦੇ ਸਗੀਬ ਸਿੰਘ ਬਾਦਲ ਜਲੰਧਾ ਛੱਡ ਕੇ ਦੂਜੇ ਬੰਦੇ ਨੂੰ ਤੁਰ ਪਏ ਇੰਨਾ ਜੇ ਆਪਾਂ ਕੰਮ ਦਸਾਂ ਸਾਲਾਂ ਚ ਕੀਤਾ ਹੋਵੇ ਵਿਕਾਸ ਵਿਕਾਸ ਵਿਕਾਸ ਕੀਤਾ ਹੋਵੇ ਤਾਂ ਫਿਰ ਕਸਤੀ ਕੁਰਸੀ ਲਈ ਛੱਡਣੀ ਅਮਰਿੰਦਰ ਕੈਪਟਨ ਦੋ ਜਗ੍ਹਾ ਤੋਂ ਕਾਗਜ਼ ਭਰੀ ਬੈਠਾ ਵੀ ਆ ਨਹੀਂ ਤਾਂ ਆ ਹੱਥ ਚ ਰਹੂ ਕਹਾਣੀ ਕਹਿੰਦੇ ਆਮ ਆਦਮੀ ਪਾਰਟੀ ਦਾ ਤਾਂ ਰੌਲਾ ਹੀ ਕੋਈ ਨਹੀਂ ਹੈ ਸਾਡਾ ਰੌਲਾ ਦੋਨਾਂ ਦਾ ਅਕਾਲੀਆਂ ਤੇ ਉਹ ਤਾਂ ਬਾਹਰ ਨੇ ਇਹਦੇ ਪਰ ਵੇਖਿਓ ਜੇ ਕਿਤੇ ਭਗਵੰਤ ਮਾਨ ਜਾ ਕੇ ਖੜਦਾ ਸਾਰਾ ਸ਼ਹਿਰ ਘਰ-ਬਾਰ ਛੱਡ ਪਰ ਜੇ ਫੇਸਬੁੱਕ ਨਾ ਹੁੰਦੀ ਸੋਸ਼ਲ ਮੀਡੀਆ ਨਾ ਹੁੰਦਾ ਕਦੇ ਨਹੀਂ ਸੀ ਪਤਾ ਲੱਗਣਾ ਐਡੀ ਸ਼ਰਮ ਲਾ ਦਿੱਤੀ ਹੈ ਪੰਜਾਬ ਦੇ ਵਿੱਚ ਚੱਲਣ ਵਾਲਾ ਕੋਈ ਵੀ ਚੈਨਲ ਆਮ ਆਦਮੀ ਪਾਰਟੀ ਦਾ ਕੋਈ ਇਕੱਠ ਨਹੀਂ ਦਿਖਾਉਂਦਾ ਇੱਥੇ ਵੀ ਖਬਰਾਂ ਚੱਲਦੀਆਂ ਏਟੀਐਨ ਚੱਲਦਾ ਪੀਟੀਸੀ ਚੱਲਦਾ ਦੇਖਿਓ ਕਿਤੇ ਕੋਈ ਇਕੱਠ ਦੀ ਖਬਰ ਹਾਂ ਨੈਗੇਟਿਵ ਉਹਨਾਂ ਦੀ ਖਬਰ ਹੈ ਜਿਹੜੀ ਨੈਗੇਟਿਵ ਖਬਰ ਹੈ ਉਸ ਦੀ ਗੱਲ ਕਰਨੀ ਬਣਦੀ ਆ ਅਕਰਕੇ ਹਟਿਆ ਮਕੇਜਰੀਵਾਲ ਦੀ ਗੱਲ ਪਰ ਜ਼ੁਰਮ ਹੋ ਗਿਆ ਕਿ 50 50 ਹਜ਼ਾਰ ਦੇ ਇਕੱਠ ਨੂੰ ਕੋਈ ਦਿਖਾ ਹੀ ਨਹੀਂ ਰਿਹਾ ਕਿਤੇ ਵੋਟਾਂ ਜਿੱਤੀਆਂ ਜਾਣੀਆਂ ਯਾਰਪੀਆ radio.com ਤੇ ਤੁਸੀਂ ਸਿੱਧਾ ਪ੍ਰਸਾਰਣ ਸੁਣਦੇ ਹੋ ਤੇ ਨਾਲ ਨਾਲ ਐਪ ਡਾਊਨਲੋਡ ਕਰ ਸਕਦੇ ਹੋ ਲੋਕ ਸੱਤ ਦਾ ਜਿਹੜਾ YouTube ਦਾ ਚੈਨਲ ਹੈ ਲੋਕੇਐਸਐਡਬਲਟੀਐਚ ਜਿੱਥੇ ਸਾਰਾ ਪ੍ਰੋਗਰਾਮ ਪਾ ਦਿੱਤਾ ਹੈ ਬੜੀ ਖੁਸ਼ੀ ਦੀ ਗੱਲ ਹੈ ਜੇ ਪੰਜਾਬ ਦੇ ਵਿੱਚ ਸੁਨੇਹਾ ਸਵੇਰੇ ਉੱਠ ਕੇ ਨਾਲੇ ਤੱਕ ਘਰ ਦੀ ਫੋਟੋ ਖੋਸੇ ਭੇਜੀ ਕਰੋੜ ਕਲਾ ਤੋਂ 4 ਕਰੋੜ ਤੋਂ ਨਾਲੇ ਧੰਨਵਾਦ ਕਿਹਾ ਜਵਨਦੇ ਦਾ ਪ੍ਰੋਗਰਾਮ ਪਾਇਆ ਤੇ ਥੈਂਕ ਯੂ ਧੰਨਵਾਦ ਹੈ ਤੁਹਾਡਾ ਸੁਣਨ ਵਾਲਿਓ ਜਿੱਥੇ ਵੀ ਤੁਸੀਂ ਬੈਠੇ ਹੋ ਪ੍ਰੋਗਰਾਮ ਤਾਂਹੀਂ ਚੱਲਦੇ ਆ ਤੇ ਨਾਲ ਹੀ ਵਪਾਰੀਓ ਜਿਹੜੇ ਪੈਸੇ ਦਿੰਨੇ ਹੋ ਇਹਨਾਂ ਪ੍ਰੋਗਰਾਮਾਂ ਨੂੰ ਚਲਾਉਣ ਲਈ 98442471550 ਉਹ ਨੰਬਰ ਹੈ ਨਿਮੀ ਡੋਲਾ ਜੀ ਦਾ ਨੰਬਰ 604440 6462 info@rpiaradio info@rpiaradio.com ਇਹ ਦੱਸ ਦਿੱਤੀ ਈਮੇਲ ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਪੇਜ ਹੈ ਅਕਾਊਂਟ ਹੈ ਅਕਾਊਂਟ ਤੇ ਤੋਂ ਵੱਧ ਤੁਸੀਂ ਸ਼ਾਮਿਲ ਨਹੀਂ ਹੋ ਸਕਦੇ ਪਲੀਜ਼ ਫਾਲੋ ਕਰ ਲਿਓ ਜਾਂ ਦੂਜੇ ਪੰਜਾਬੀ ਜਾਂ ਆਪਣੇ ਪੇਜ ਵਾਲੇ ਪਾਸੇ ਗੱਲ ਇੱਕੋ ਹੀ ਆ ਤੁਹਾਡੇ ਸੁੱਖ ਸੁਨੇਹ ਪਾਸੇ ਨੇ ਦੋਨਾਂ ਨੂੰ ਫੋਲੋ ਕਰਦਾ ਕੋਸ਼ਿਸ਼ ਕਰਾਂਗੇ ਇੱਕ ਕਰ ਦਈਏ ਪੇਜ ਕਰ ਹੋਣਗੇ ਦੇਖਦੇ ਆ ਹਾਈ ਟੈਕ ਬੰਦਿਆਂ ਦਾ ਕੰਮ ਆ ਇਹ ਕੰਪਿਊਟਰ ਜਾਣਦੇ ਨੇ ਜਿਹੜੇ 18442471550 ਆਨਲਾਈਨ ਨੰਬਰ ਹੈ ਜਿੱਥੇ ਗੱਲਬਾਤ ਅੱਜ ਕਰਨੀ ਆ ਤੁਸੀਂ ਪਿਛਲੇ ਦੋਨਾਂ ਹਿੱਸਿਆਂ ਦੇ ਵਿੱਚ ਤੁਹਾਡੀ ਕੱਲ ਦੀ ਬੀ ਐਲ ਐਸ ਦੇ ਸਬੰਧੀ ਜਿਹੜੀ ਗੱਲਬਾਤ ਤੁਸੀਂ ਕੀਤੀ ਕਿ ਮੁਸ਼ਕਲਾਂ ਆ ਰਹੀਆਂ ਕੋਸ਼ਿਸ਼ ਕਰਾਂਗੇ ਕਿ ਕਾਉਂਸਲ ਖਾਨੇ ਤੋਂ ਕੋਈ ਨਾ ਕੋਈ ਗਲਤ ਕਰੇ ਕੱਲ ਨੂੰ ਸਾਹਮਜੀਤ ਸਿੰਘ ਉਹਨਾਂ ਨੇ ਵਾਦਾ ਕੀਤਾ ਕਿ ਮੈਂ 10 ਮਿੰਟ ਲਈ ਆ ਕੇ ਦੱਸਾਂਗਾ ਕੀ ਕੀ ਮੁਸ਼ਕਲਾਂ ਕਿਵੇਂ ਠੀਕ ਹੋ ਸਕਦੀਆਂ ਕੁਝ ਵੀਜ਼ਾ ਸ਼ਰਤਾਂ ਨਰਮ ਕੀਤੀਆਂ ਲੋਕਾਂ ਲਈ ਜਿਨ੍ਹਾਂ ਨੂੰ ਵੀਜ਼ੇ ਨਹੀਂ ਮਿਲ ਰਹੇ ਸੀ ਉਹਨਾਂ ਨੂੰ ਵੀਜ਼ੇ ਧੜਾ ਧੜ ਪੰਜਾਬ ਦੇ ਜਾਣ ਲਈ ਮਿਲ ਰਹੇ ਹੈ ਚੰਗੀ پیش ਹੈ ਤੇ ਲੋਕ ਇਹ ਦਿਲ ਤੇ ਹੱਥ ਰੱਖਿਆ ਉਹ ਜਾਣ ਸਕਦਾ ਜੀਨੂੰ ਇੱਕ ਵਾਰ ਰਿਫਿਊਜ਼ ਹੋ ਜਾਵੇ ਕੰਤਾ ਲੋਲ ਚੱਕਰਾਂ ਅਗਲਾ ਮਾਰਦਾ ਸਿਰਦਾ ਕਦੇ ਕਿਸੇ ਨੂੰ ਫੋਨ ਕਰ ਕਦੇ ਕਿਸੇ ਨੂੰ ਪੈਸੇ ਢੇਲਿਆਂ ਦੀਆਂ ਗੱਲਾਂ ਚੱਲਦੀਆਂ ਪਰ ਜੇ ਕੋਈ ਅਫਸਰ ਕੱਢ ਦਿੰਦਾ ਸ਼ਰਤਾਂ ਨਰਮ ਹੋਈਆਂ ਕਿਸ ਤਰ੍ਹਾਂ ਦੀ ਗੱਲ ਹੋਈ ਆ ਕੱਲ ਕੋਸ਼ਿਸ਼ ਕਰਾਂਗਾ 18442471550 ਉਹ ਇਹ ਨੰਬਰ ਹੈ ਪਟਿਆਲੇ ਤੋਂ ਸੂਟ ਸੰਵਾਲੇ ਗਲਮੇ ਉੱਤੇ ਫੁੱਲ ਪਵਾਲੇ ਪਟਿਆਲੇ ਤੋਂ ਸੂਟ ਸੰਵਾਲੇ ਗਲਮੇ ਉੱਤੇ ਫੁੱਲ ਪਵਾਲੇ ਸਤ ਰੰਗਾ ਦੇ ਲੀੜੇ ਕਰਲੇ ਮੂਰੀਆਂ ਕੋਲੋਂ ਭੀੜੇ ਕਰਲੇ ਵੰਗਾ ਵੰਗ ਮਾਰ ਦੀ ਸਹੰਦ ਚੜੇ ਤੂਫਾਨਾਂ ਨੂੰ ਹੁਣ ਤਾਂ ਚੁੰਨੀ ਟੱਕ ਲੈਂਦੀ ਅਸਮਾਨਾਂ ਨੂੰ ਹੁਣ ਤਾਂ ਚੁੰਨੀ ਟੱਕ ਲੈਂਦੀ ਅਸਮਾਨਾਂ ਹਰਮਨਜੀਤ ਨੇ ਪਿਛਲੇ ਦਿਨੀ ਪਟਿਆਲੇ ਦੇ ਵਿੱਚ ਪੁਸਤਕ ਮੇਲੇ ਦੇ ਵਿੱਚ ਜਦ ਪਹੁੰਚ ਕੇ ਇਸ ਪੰਜਾਬ ਦੇ ਖੂਬਸੂਤ ਸ਼ਹਿਰ ਦੀਆਂ ਗੱਲਾਂ ਲਿਖੀਆਂ ਇੱਥੇ ਉਸਨੇ ਇਸ ਗੱਲ ਨੂੰ ਲਿਖਿਆ ਉੱਥੇ ਨਾਲੇ ਕਹਿੰਦਾ ਨਾ ਤਾਂ ਇਸ ਪਾਸੇ ਨਾ ਤਾਂ ਉਸ ਪਾਸੇ ਵਿਚੇ ਵਿਚ ਹੀ ਹੋਣ ਸਰਦਾਰੀਆਂ ਨਾ ਤਾਂ ਇਸ ਪਾਸੇ ਨਾ ਤਾਂ ਉਸ ਪਾਸੇ ਵਿਚੇ ਵਿਚ ਹੀ ਹੋਣ ਸਰਦਾਰੀਆਂ ਵੀ ਪੈਰ ਭੁਜੇ ਟਿਕਾਏ ਨਿਗਾ ਅੰਬਰਾਂ ਤੇ ਤੋੜ ਲੈਂਦੀਆਂ ਸਾਰੇ ਕਲਕਾਰੀਆਂ ਵੀ ਤਬਰ ਪਾਲਣੇ ਦਿਲ ਤੋਂ ਸਾਧ ਹੋਣਾ ਨਾਲੇ ਰੱਬ ਦੇ ਨਾਲੇ ਦੁਨੀਆਦਾਰੀਆਂ ਵੀ ਜ਼ਿੰਮੇਵਾਰ ਸਮਾਨ ਦੀਆ ਜਗ ਉਤੇ ਜ਼ਿੰਮੇਵਾਰ ਸਮਾਨ ਦੀਆਂ ਜਗ੍ਹਾ ਉੱਤੇ ਬਾਬਾ ਹੁੰਦੀਆਂ ਆਪ ਸਵਾਰੀਆਂ 'ਵੇ ਬਾਬਾ ਹੁੰਦੀਆਂ ਆਪ ਸਵਾਰੀਆਂ 'ਵੇ ਹਰਮਨਜੀਤ ਰਾਣੀ ਤੱਤ ਇਟਲੀ ਦੇ ਵਿੱਚ ਸੈਂਟਰਲ ਇਟਲੀ ਦੇ ਵਿੱਚ ਤੇ ਪਹਿਲਾ ਪਹਚਾਲ ਆਇਆ ਸੀ ਉੱਥੇ ਪਹਚਾਲ ਦੇ ਖਲ ਛਟਕੇ ਆਏ ਤੇ ਇਹ 'ਚ ਜਿਹੜੇ ਬਰਸਦੀਏ ਦੇ ਤੋਂਦੇ ਜਿਹੜੇ ਖਿਸਕ ਤੇ ਉਹਨਾਂ ਨੇ ਇੱਕ ਬਹੁਤ ਚਾਰ ਮੰਜ਼ਲਾ ਹੋਟਲ ਜਿਹੜਾ ਸਕੀਮ ਵਾਲੇ ਜਿੱਥੇ ਰਹਿ ਰਹੇ ਸੀ ਉਹ ਆਖੇ ਡੱਬ ਲਿਆ ਤੇ ਬੰਦੇ ਵਿੱਚੇ ਵਿੱਚੇ ਬੱਚੇ ਨੇ ਕੋਈ ਵੀ ਨੀ ਦੋ ਜਣੇ ਬਾਹਰ ਫਿਰਦੇ ਸੀ ਉਹ ਬਚ ਗਏ ਬਾਕੀ ਹੋਟਲ ਆ ਜਿਹੜਾ ਸਾਰਾ ਹੀ برف ਨੇ ਢੱਪ ਲਿਆ ਉਸ ਵਿਦਾਤਾ ਨੇ ਸਾਡੇ ਗੁਰੂਆਂ ਨੇ ਇਹ ਚੀਜ਼ਾਂ ਜਿਹੜੀਆਂ ਲਿਖ ਕੇ ਦਿੱਤੀਆਂ ਕਿ ਜਦ ਤੁਸੀਂ ਆਉਣਾ ਉਸ ਸਮੇਂ ਮੌਤ ਲਿਖ ਕੇ ਨਾਲ ਆਉਣੀ ਹੈ ਹੁਣ ਵੇਖੋ ਕਿਧਰੋਂ ਕਿਧਰ ਪੂਰਬ ਤੋਂ ਪੱਛਮ ਵਾਲੀ ਗੱਲ ਉੱਤਰ ਵਾਲੀ ਗੱਲ ਬੰਦੇ ਪਰਿਵਾਰ ਬੱਚੇ ਆਨੰਦ ਕਰਨ ਗਏ ਚਲੋ ਸਹੀ ਕਰਨ ਚੱਲੀ ਸਮਾ ਜਿਹੜਾ ਉਹਦਾ ਕੰਪਿਊਟਰ ਫੀਡ ਹੋਇਆ ਹੈ ਤੇ ਉਸੇ ਸਮੇਂ ਉਚਾਲ ਸੀ ਉਸੇ ਸਮੇਂ ਉਹਨਾਂ ਨੇ ਅੰਦਰ ਨੇ ਆ ਕੇ ਹੋਟਲ ਦੱਬ ਲੈਣਾ ਵੇਖੋ ਦੂਸਰੇ ਬੰਨੇ ਗੱਲ ਗਈ ਖੁਸ਼ ਆਰਾਮ ਵਧੀਆ ਜ਼ਿੰਦਗੀ ਵਤਿਤ ਕਰ ਲਈ ਲੋਕ ਗਏ ਪਰ ਜ਼ਿੰਦਗੀ ਉੱਥੇ ਹੀ ਮੁੱਕ ਗਈ ਦੋ ਬਾਾਰ ਤੁਰੇ ਸੀ ਉਹ ਬਚ ਗਏ ਜਿਹੜੇ ਅੰਦਰ ਸੀ ਉਹਨਾਂ ਦੀਆਂ ਜਿਹੜੀਆਂ ਕਿਉਂਕਿ ਵਰਫ ਜਿਹੜੀ ਇਹ ਐਵਲਾਂਚ ਹੈ ਜ਼ਿਆਦਾ ਜ਼ੋਰ ਨਾਲ ਜੱਟੇ ਢਾਂ ਖਿਸਕਦੀ ਹੈ ਵੇਖਿਆ ਤੁਸੀਂ ਹਿਮਕੁੰਡ ਜਾਣ ਵਾਲਿਆਂ ਨੇ ਵੇਖੜਾ ਪਰ ਜਿਹੜੇ ਪਹਾੜ ਕੱਚੇ ਬਣੇ ਬਣਾਈ ਪਾਣੀ ਜਾਂ ਮੀਂਹ ਉੱਥੇ ਦੜਲ ਦੜਲ ਗਿਰਦਾ ਤੇ ਬਣੇ ਬਣਾਈ ਮਿੱਟੀ ਆ ਜਿਹੜੀ ਖਿਸਕ ਆਉਂਦੀ ਆ ਤੇ ਸੜਕ ਤੇ ਆ ਵਰਦੀ ਜੀ ਨੂੰ ਕਹਿੰਦੇ ਜਨਰਲ ਰਜ਼ਰਵ ਇੰਜੀਨੀਅਰਿੰਗ ਫੋਰਸ ਤੇ ਬਤ ਰੋਡਸ ਜਿਹੜੀਆਂ ਬਾਰਡਰ ਰੋਡਸ ਆ ਕੇ ਸਾਫ਼ ਕਰਦੇ ਆ 20 ਦਿਨ ਕਈ ਵਾਰ ਐਮਕੋਂ ਤੇ ਦਸਨਾਂ ਲੋਕ ਗਏ ਹੋਏ ਉੱਥੇ ਫਸ ਜਾਂਦੇ ਆ ਟਰੱਕਾਂ ਦੇ ਟਰੱਕ ਬੱਸਾਂ ਦੀਆਂ ਬੱਸਾਂ ਖੜ ਜਾਂਦੀਆਂ ਇਹ ਬਹੁਤ ਇਸ ਤਰ੍ਹਾਂ ਦੀਆਂ ਇਹ ਜਿਹੜੀਆਂ ਥਿਗਾ ਜਦ ਗਰਮੀ ਵੱਧ ਜਾਂਦੀ ਹੈ ਤੇ ਥੱਲੇ برف ਜਿਹੜੀ ਜੰਮੀ ਆ ਥਲੜਾ ਹਿੱਸਾ برف ਦਾ ਰਹਿ ਜਾਂਦਾ ਉੱਪਰ ਵਾਲਾ 1.2-2 ਫੁੱਟ ਖਿਸਕਦੇ ਹੁੰਦੇ ਪਰ ਇੱਥੇ ਤਾਂ ਪਚਾਲ ਦੇ ਜਿਹੜੇ ਛਟਕੇ ਲੱਗੇ ਉਹਨਾਂ ਨੇ برف ਕਿਸਕਾਤੀ ਤੇ ਬੰਦੇ ਦੁਨੀਆ ਵਿੱਚ ਰਹਿ ਗਈ ਹੁਣ ਮਰਨ ਵਾਲਿਆਂ ਦੀ ਗਿਣਤੀ ਕੋਈ 30 ਕਹਿੰਦਾ ਕੋਈ 32 ਉਹ ਤਾਂ ਦੇ ਵਿੱਚ ਇੱਕ ਮਲਟੀ ਸਟੋਰੀ ਬਿਲਡਿੰਗ ਦੀ ਅੱਗ ਬੁਝਾਉਂਦੇ ਆ 30 ਦੇ ਕਰੀ ਫਾਇਰਫਾਈਟਰਸ ਵਿੱਚ ਗਏ ਮਰ ਗਏ ਤੇ ਦੇ ਵਿੱਚ ਤੁਰਦੇ ਫਿਰਦੇ ਸਾਰੀਆਂ ਚੀਜ਼ਾਂ ਜਿਹੜੀਆਂ ਕਰਦੇ ਮੌਤ ਦਾ ਜਿਹੜਾ ਖਿਆਲ ਹੈ ਉਹ ਹਰ ਵਕਤ ਸਿਰ ਤੇ ਰਹਿਣਾ ਚਾਹੀਦਾ ਤੇ ਤੁਸੀਂ ਆਰਾਮ ਨਾਲ ਰਹੋਗੇ ਇੱਕ ਮੌਤ ਇੱਕ ਸਬਰ ਦੋ ਚੀਜ਼ਾਂ ਜਿਹੜੀਆਂ ਜ਼ਿੰਦਗੀ ਨੂੰ ਵਧੀਆ ਰੱਖਦੀਆਂ ਸਬਰ ਜਦ ਤੱਕ ਅੰਦਰ ਹੈ ਨਹੀਂ ਨਾ ਕੁਝ ਨਹੀਂ ਕਰ ਸਕਦਾ ਵੱਡ ਖਾਉ ਵੱਡ ਖਾਉ ਬੰਦਾ ਕਰਦਾ ਫਿਰਦਾ ਹਫੜਿਆ ਫਿਰਦਾ ਆ ਵੀ ਕਰਲਾ ਆ ਵੀ ਕਰਲਾ ਇਥੋਂ ਖਚਲਾ ਆ ਕਰਲਾ ਉਹ ਕਰਲਾ ਸਬਰ ਜਦ ਬੱਚਿਆਂ ਨੂੰ 5 ਲੱਖ 4 ਲੱਖ ਡਾਲਰ ਘਰ ਦੇਣ ਤੋਂ ਪਹਿਲਾਂ ਜੇ ਸਬਰ ਸਿਖਾ ਦੇऊं ਕਿ ਸਬਰ ਕੀ ਹੈ ਵਧੀਆ ਰਹਿ ਜਾਣਗੇ ਨਹੀਂ ਤਾਂ ਜਦ ਤੁਸੀਂ ਅੱਖਾਂ ਮੀਚਣੀਆਂ ਵੇਖਣ ਤਾਂ ਕਿਸੇ ਨੇ ਨਹੀਂ ਆਉਣਾ ਤਸੱਲੀ ਮਚਾ ਦੇਣਗੇ ਇਹ ਸਬਰ ਹੋ ਜੋ ਆਕਦੇ ਅੰਦਰ ਇਹ ਨਾ ਨਾ ਨਾ ਸਬਰ ਫਿਰ ਆਰਾਮ ਰਹਿ ਸਕਦਾ ਚੀਜ਼ਾਂ ਮੌਤ ਤੇ ਸਬਰ ਯਾਦ ਕਰਕੇ ਜ਼ਿੰਦਗੀ ਵਧੀਆ ਆਰਾਮ ਨਾਲ ਕੱਟੀ ਜਾ ਸਕਦੀ ਹੈ ਨਹੀਂ ਤਾਂ ਫਿਰ ਪੈਰਾਹੇਟ ਅੱਗ ਮੱਚਦੀ ਹੈ ਭੱਜੇ ਫਿਰ ਸਾਰੇ ਆਪਾਂ ਪੱਪ ਜੇ ਸਰ ਤੇ ਵਪਾਰਕ ਸੰਦੇਸ਼ ਰੋਲੰਡ ਦੇ ਸਪੌਂਸਰ ਹਨ ਹੇਅਰ ਮੋਟਰ 650 450 677 55 ਪਟੋਲਾ ਬ੍ਰਿਜ ਦੇ ਥੱਲੇ hairmotors.com ਅਜੀਤ ਸਿੰਘ ਸਿੰਘ ਹੇਅਰ ਇਨ ਹਾਊਸ ਫਾਈਨੈਂਸਿੰਗਾ ਕਿਤੋਂ ਕਾਰ ਗੱਡੀ ਨਾ ਮਿਲੇ ਜਿਹੜੀ ਤੁਹਾਡੇ ਮਤਲਬ ਦੀ ਤੁਹਾਡਾ ਮਨ ਕਰਦਾ ਅਖੀਰ ਹੇਅਰ ਮੋਟਰਸ ਤੋਂ ਮੈਂਗਾ ਲੋਨ ਕਿਤੇ ਲਈ ਬੈਠੇ ਹੋ ਮਹੀਨੇ ਦੀਆਂ ਕਿਸ਼ਤਾਂ ਚੁੰਡੀ ਵੱਢਦੀਆਂ ਆਰਾਮ ਦੇ ਲਈ ਤਾਂ ਹੇਅਰ ਮੋਟਰਸ ਮਹਿੰਗੀ ਗੱਡੀ ਲੈ ਲਈ ਤੇ ਹੁਣ ਸਸਤੀ ਕਿਵੇਂ ਲਈ ਜਾਵੇ ਤਾਂ ਹੈਅਰ ਮੋਟਰ 65500867555hairmotor.com 350 ਦੇ ਕਰੀਬ ਕਾਰਾਂ ਖੜੀਆਂ ਜਦ ਮਰਜ਼ੀ ਨਾਲ ਗੱਲ ਕਰਿਓ 6045807755 88 ਰੱਖ ਬੋਰੀਨ ਪੇਂਟ 6049401080 ICBC3 ਐਕਸਪਰਟ ਸ਼ਾਪ ਹੈ ਤੇ ਗਲਾਸ ਸ਼ਾਪ ਹੈ ਸ਼ੀਸ਼ਾ ਟੁੱਟ ਗਿਆ ਕਿਤੇ ਨਵਾਂ ਪੈ ਜਾਂਦਾ ਦਿਲਾਂ ਦਿਲ ਨਹੀਂ ਪੈਂਦਾ ਕਹਿੰਦੇ ਦੇ ਨਾਲ ਸਾਰਾ ਜਿਹੜੀਆਂ ਜਾਂ ਵੱਡੀਆਂ ਗੱਡੀਆਂ ਜਿਹੜੀਆਂ ਬਣੀਆਂ ਬਣਾਈਆਂ ਏਟੀਆਈ ਟਰੱਕ ਬੋਡੀਆਂ ਨੂੰ ਪੇਨ ਦੀ ਫੈਸਿਲਿਟੀ 'ਚ ਖਰਜੰਦੀਆਂ 6049401080 ਕਾਗਜ਼ ਪੱਤਰ ਦਰਖਾਸਤ ਹੈ ਤੁਹਾਡੀ ਉਹ ਨਾਲ ਸਿੱਧੀ ਆਪ ਗੱਲ ਕਰਦੇ ਤੁਸੀਂ ਨਹੀਂ ਜਾਣਾ ਉੱਥੇ ਬਸ ਗੱਡੀ ਉੱਥੇ ਤੱਕ ਪਹੁੰਚਦੀ ਕਰਨੀ ਜੇ ਗੱਡੀ ਵੀ ਨਹੀਂ ਜਾਂਦੀ ਉਹਨੂੰ ਵੀ ਛੱਕ ਕੇ ਲੈ ਜਾਣਗੇ 6049401080 88 ਟਰੱਕ ਬੋਡੀਆਂ ਤੇ ਦਿਲਜੀਤ ਦਸਾਂਜ ਦਾ ਗੀਤ ਤੇ ਵਾਪਸ ਆ 11:32 ਵਜੇ ਹੈ ਜੀ ਖਬਰਾਂ ਦੀ ਸ਼ੁਰੂਆਤ ਪਵਾਮਾ ਖਬਰਾਂ ਦੀ ਸਾਂਝ ਪਵਾਮਾ ਸ਼ੁਰੂ ਕਰਾਂ ਤਾਂ ਡੋਨਲਡ 트ੰਪ ਦੀ ਰਾਜਪੋਸ਼ੀ ਜਿਹੜੀ ਕੱਲ ਨੂੰ ਹੈ ਅੱਜ ਪ੍ਰੈਸ ਕਾਨਫਰੰਸ ਉਸਦੇ ਪ੍ਰੈਸ ਸੈਕਟਰੀ ਨੇ ਕੀਤੀ ਬਹੁਤ ਜਿਹੜੇ ਡੈਮੋਕ੍ਰੇਟਸ ਨੇ ਐਮਪੀਓ ਕਹਿੰਦੇ ਅਸੀਂ ਜਾਣਾ ਨਹੀਂ ਹਾਊਸ ਆਫ ਫ੍ਰੀ ਦੇ ਜਿਹੜੇ ਮੈਂਬਰ ਨੇ ਤੇ ਜੋਸ ਡਬਲ ਬੋਸ਼ਾ ਜਿਹੜਾ ਉਸਨੇ ਆਉਣ ਦੀ ਗੱਲ ਕਹੀ ਹੈ ਕਲ ਕੱਲ ਬਾਦ ਬਰਾਕ ਬ੍ਰਾਕਵਾਮਾ ਨੇ ਫਰਗ ਹੋ ਜਾਣਾ ਜ਼ਿੰਦਗੀ ਜਿਹੜੀ ਹੈ ਵਾਮ ਅਖਰੀ ਨੂੰ ਰਹਿ ਕੇ ਉਹਨਾਂ ਨੇ ਕੱਟਣੀ ਹੈ ਤੋ ਇਸ ਤੋਂ ਬਾਅਦ ਜਿਹੜਾ ਉਹਨਾਂ ਦਾ ਅਕਸਰ ਜੇ ਰਾਸ਼ਟਰਪਤੀ ਜਿਹੜੇ ਅਮਰੀਕਾ ਦੇ ਰਹਿੰਦੇ ਆ ਫਿਰ ਉਹ ਪਾਸ਼ਨਾ ਲਈ ਦੁਨੀਆ ਦੇ ਦੂਰ ਬਾਕੀ ਮੁਲਕਾਂ 'ਚ ਜਾਂਦੇ ਆ ਉਹਨੀਆਂ ਸਿਕਿਉਰਿਟੀ ਆ ਬਹੁਤ টাইਟ ਦੇਖ ਜਿਹੜੀ ਲਾਇਬ੍ਰੇਰੀ ਰਾਸ਼ਟਰਪਤੀ ਦੇ ਨਾਂ ਦੀ ਬਣਨੀ ਹੈ ਉਹ ਲਾਇਬ੍ਰੇਰੀ ਸ਼ਿਕਾਗੋ 'ਚ ਬਣੇਗੀ ਕਿਉਂਕਿ ਸ਼ਿਕਾਗੋ ਤੋਂ ਜਿੱਤੇ ਸੀ ਤੇ ਉਸ ਦੇ ਵਿੱਚ ਉਹਨਾਂ ਦੇ ਇਸ ਸਮੇਂ ਦੇ ਵਿੱਚ ਜਿਹੜਾ ਉਹਨਾਂ ਨੇ ਦੋ ਵਾਰ ਰਾਸ਼ਟਰਪਤੀ ਬਣਿਆ ਕੀ ਕੀ ਅਹਿਮ ਚੀਜ਼ਾਂ ਹੋਈਆਂ ਲਿਮੋਜ਼ੀਨ ਜਿਹੜੀ ਹੁੰਦੀ ਰਾਸ਼ਟਰਪਤੀ ਦੀ ਉਹ ਵੀ ਉੱਥੇ ਖੜਾਈ ਜਾਂਦੀ ਹੈ ਬਹੁਤ ਵੱਡਾ ਬਜਟ ਹੁੰਦਾ ਲਾਇਬ੍ਰੇਰੀ ਤੇ ਇਸ ਦੇ ਲਈ ਰਾਖਵਾਂਮਾ ਦੀ ਇਸ ਲੈਗਸੀ ਨੂੰ ਲੋਕ ਯਾਦ ਰੱਖਣਗੇ ਤੇ ਹੁਣ ਅਗਲਾ ਸਫਰ ਜਿਹੜਾ ਸ਼ੁਰੂ ਹੋਣਾ ਦਾ ਕੰਪ ਦਾ ਸੇ ਪਤਾ ਲੱਗੂ ਹੁਣ ਕਿ ਕਿਆ ਰਾਜ ਜਿਹੜਾ ਮੂਰਲਾ ਆਉਂਦਾ ਗੱਲਾਂ ਮੁੱਕ ਜਾਣੀਆਂ ਨੇ ਹੁਣ ਐਕਸ਼ਨ ਦੱਸਣਾ ਹੁਣ ਅਮਨ ਖਹਿਰਾ ਮੇਰੇ ਨਾਲ ਨੇ ਅਮਨ ਕਰਨ ਲਈ ਮੇਰੇ ਨਾਲ ਅਮਨ ਖਹਿਰਾ ਜੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡੇ ਸਾਰੇ ਮੇਰੇ ਵੱਲੋਂ ਪਿਆਰ ਨਮਸਕਾਰ ਸਤਿ ਸ਼੍ਰੀ ਅਕਾਲ ਕੁਝ ਖਾਸ ਜਿਹੜੀ ਜੀ ਫੇਰ ਬਦਲ ਇਮੀਗ੍ਰੇਸ਼ਨ ਦੇ ਵਿੱਚ ਹੋਇਆ ਤੇ ਕੋਈ ਖਾਸ ਖਬਰ ਦੇ ਨਾਲ ਆਪਾਂ ਸ਼ੁਰੂ ਕਰਦੇ ਹਾਂ ਤੁਹਾਡੇ ਹਿਸਾਬ ਦੇ ਨਾਲ ਇਹ ਇਮੀਗ੍ਰੇਸ਼ਨ ਦੇ ਸਬੰਧਤ ਟਾਰਗੇਟ ਨੇ ਵੀ ਜੋ ਵਧਾਏ ਗਏ ਨੇ ਇਮੀਗ੍ਰੇਸ਼ਨ ਆਮ ਤੌਰ ਤੇ 2070 ਤੋਂ 2 ਦੋ ਮਾਫ਼ ਕਰਨਾ 2 ਲੱਖ 7000 ਤੋਂ ਲੈ ਕੇ 2 ਲੱਖ 8000 ਰੈਪੀਨ ਦਾ ਟਾਰਗੇਟ ਜਿਹੜਾ ਸੀ ਪਿਛਲੇ ਸਾਲ ਰੱਖਿਆ ਗਿਆ ਸੀ ਜਿਹੜਾ ਸਰਕਾਰ ਨੇ ਅਚੀਵ ਕੀਤਾ ਇਸ ਵਾਰ ਜਿਹੜਾ ਟਾਰਗੇਟ ਹੈ ਉਹ 3 ਲੱਖ ਨਿਊ ਇਮੀਗ੍ਰੈਂਟਸ ਰੱਖਿਆ ਗਿਆ ਨੰਬਰਸ ਵਧਾਏ ਗਏ ਨੇ ਦੇ ਕੇਸਸ ਨੇ ਦਾ ਪ੍ਰੋਸੈਸਿੰਗ ਟਾਈਮ ਜਿਹੜਾ ਘਟਾਇਆ ਗਿਆ ਬਾਕੀ ਜਿਹੜੇ ਟ੍ਰੇਡੀਸ਼ਨਲ ਇਕਨੋਮੀ ਨੇ ਉਹਨਾਂ ਦਾ ਵੀ ਜਿਹੜਾ ਕੋਟਾ ਵਧਾਇਆ ਗਿਆ ਫੈਡਰਲ ਸਰਕਾਰ ਨੇ ਜਿਹੜੀ ਇੰਟਰਨੈਸ਼ਨਲ ਸਟੂਡੈਂਟਸ ਲਈ ਅਨਾਉਂਸਮੈਂਟ ਕੀਤੀ ਸੀ ਜਿਹੜਾ ਸਟੂਡੈਂਟਸ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੀ ਸੀ ਉਹ ਉਹ ਕਾਫੀ 네ਗੇਟਿਵ ਗਿਆ ਸਟੂਡੈਂਟਸ ਦੇ ਹੱਕ ਦੇ ਵਿੱਚ ਨਹੀਂ ਗਿਆ ਇਨ ਫੈਕਟ ਜਿਹੜੇ ਸਟੂਡੈਂਟਸ ਪਹਿਲਾਂ ਕੁਆਲੀਫਾਈ ਕਰਦੇ ਸੀ ਇਮੀਗ੍ਰੇਸ਼ਨ ਦੇ ਲਈ ਉਹ ਹੁਣ ਕੁਆਲੀਫਾਈ ਨਹੀਂ ਕਰਨਗੇ ਜਾਂ ਉਹਨਾਂ ਨੂੰ ਕੁਝ ਸਮਾਂ ਇੰਤਜ਼ਾਰ ਕਰਨਾ ਪਏਗਾ ਆਪਣੀ ਇਮੀਗ੍ਰੇਸ਼ਨ ਅਪਲੀਕੇਸ਼ਨ ਲਗਾਉਣ ਦੇ ਲਈ ਮਾਜੋਰਟੀ ਆਫ ਸਟੂਡੈਂਟਸ ਜਿਨ੍ਹਾਂ ਨੇ ਥੋੜੇ ਡਿਊਰੇਸ਼ਨ ਦੇ ਕੋਰਸ ਲਏ ਸੀ ਕਿਉਂਕਿ ਸਰਕਾਰੇ ਚਾਹੁੰਦੀ ਹੈ ਅੱਠ ਦਿੱਲੀ ਦਾ ਅ ਜਿਵੇਂ ਆਪਾਂ ਸਪੈਂਡਿੰਗ ਦੀ ਗੱਲ ਕਰਦੇ ਆ ਨੇ ਰੈਵਨਿਊ ਚੰਗਾ ਜਨਰੇਟ ਕਰਦੇ ਨੇ ਥਰੂ ਡਿਫਰੈਂਟ ਸੋਰਸਸ ਡਾਇਰੈਕਟ অর ਇੰਡਾਇਰੈਕਟ ਏਨਿਊਸ ਤੋਂ ਜਿਹੜਾ ਆ ਰਹੇ ਨੇ ਸੋ ਸਰਕਾਰ ਚਾਹੁੰਦੀ ਆ ਉਹ ਜਿਹੜਾ ਸਪੈਂਡਿੰਗ ਹੈ ਉਹ ਰਹੇ ਉਹ ਸਟੂਡੈਂਟ ਵੱਧ ਤੋਂ ਵੱਧ ਕੈਨੇਡਾ ਪੈਸਾ ਖਰਚਣ ਨਾ ਉਹਦੇ ਲਈ ਉਹਨਾਂ ਨੇ ਜਿਹੜੇ ਡਿਗਰੀ ਪ੍ਰੋਗਰਾਮਸ ਨੇ ਉਹਨਾਂ ਨੂੰ ਐਡਵਾਂਟੇਜ ਦਿੱਤੀ ਜਾਂ ਮਾਸਟਰਸ ਕਰਨ ਆਉਂਦੇ ਨੇ ਜਿਹੜੇ ਉਹਨਾਂ ਨੂੰ ਫਾਇਦਾ ਜ਼ਰੂਰ ਦਿੱਤਾ ਪਰ ਜਿਹੜੇ ਡਿਪਲੋਮਾ ਪ੍ਰੋਗਰਾਮਸ ਆਉਂਦੇ ਨੇ ਖਾਸ ਕਰਕੇ 1 ਸਾਲ ਜਾਂ 2 ਸਾਲ ਦੀ ਪੜ੍ਹਾਈ ਲੈ ਕੇ ਕੈਨੇਡਾ ਦੇ ਵਿੱਚ ਆਉਂਦੇ ਨੇ ਉਹਨਾਂ ਲਈ ਜਿਹੜਾ ਇਮੀਗ੍ਰੇਸ਼ਨ ਲੈਣਾ ਕਾਫੀ ਹੱਦ ਤੱਕ ਮੁਸ਼ਕਲ ਹੋ ਗਿਆ ਹੋ ਸਕਦਾ ਮジョਰਿਟੀ ਆਫ ਸਟੂਡੈਂਟਸ ਨੂੰ ਵਾਪਸ ਜਾਣਾ ਪਵੇ ਇਸ ਸਾਲ ਦਾ ਜਿਹੜਾ ਸਟੂਡੈਂਟਸ ਦਾ ਟਾਰਗੇਟ ਸਰਕਾਰ ਨੇ ਲੱਖਿਆ ਹੋਇਆ ਉਹ ਤਕਰੀਬਨ 3.5 ਲੱਖ ਤੋਂ ਲੈ ਕੇ 3 ਲੱਖ 3.6 ਲੱਖ ਸਟੂਡੈਂਟ ਜਿਹੜਾ ਲੈਂਡ ਕਰੇਗਾ ਸੋ ਇਹ ਕੁਝ ਮਾਈਨਰ ਚੇਂਜਸ ਆਈਆਂ ਨੇ ਇਮੀਗ੍ਰੇਸ਼ਨ ਦੇ ਵਿੱਚ ਇਹ ਸਾਬ ਅੱਛਾ ਜੀ ਫੋਨ ਕਰਨ ਲੱਗ ਜਾਂਦੇ ਆ ਉਹ ਸਾਡੇ ਨਾਲ ਗੱਲ ਨਹੀਂ ਕਰਦੇ ਐਕਚੁਅਲੀ ਪ੍ਰੋਸੈਸ ਲੋਕਾਂ ਨੂੰ ਦੱਸਿਓ ਕਿ ਜੇ ਤੁਹਾਨੂੰ ਹਾਇਰ ਕਰ ਲੈਂਦੇ ਤੁਸੀਂ ਉਹਨਾਂ ਦੇ ਕੇ ਗਾ ਇਮੀਗ੍ਰੇਸ਼ਨ ਦੇ ਨਾਲ ਗੱਲਬਾਤ ਕਰਦੇ ਹੋ ਮੈਨੂੰ ਇਹ ਔਣ ਲੱਗਦਾ ਹੈ ਵੀ ਕਿਤਨਾ ਕਿਤੇ ਉਹਨਾਂ ਨੂੰ ਵੀ ਇਨਫੋਰਮੇਸ਼ਨ ਦੀ ਘਾਟ ਹੈ ਕਿਉਂਕਿ ਉਹ ਜਲਦੀ ਤੁਹਾਡੇ ਤੋਂ ਕੁਛ ਨਾ ਕੁਛ ਪਾੜਦੇ ਆ ਤੇ ਤੁਹਾਡੇ ਕੋਲ ਕੋਈ ਸਵਾਲ ਦਾ ਜਵਾਬ ਨਹੀਂ ਹੁੰਦਾ ਇਹਦੇ ਜੀ ਜੀ ਮжоਰਿਟੀ ਆਫ ਹਰਜੀਤ ਜੀ ਜਿਹੜਾ ਇਸ਼ੂ ਰਹਿੰਦਾ ਬਿਕਾਜ਼ ਇਮੀਗ੍ਰੇਸ਼ਨ ਜਿਹੜਾ ਸਿਸਟਮ ਹੈਗਾ ਨਹੀਂ ਇਹ ਜਿਵੇਂ ਸੀਆਈਸੀ ਦੀ ਵੈਬਸਾਈਟ ਹੈ ਯੂਜੂਲੀ ਉਹਦੇ ਤੇ ਜਿਹੜੀ ਇਨਫੋਰਮੇਸ਼ਨ ਹੈ ਉਹ ਕਈ ਵਾਰ ਮਿਸਲੀਡਿੰਗ ਹੋ ਜਾਂਦੀ ਹੈ ਜਿੱਥੇ ਆਮ ਕਰਕੇ ਕਿਹਾ ਜਾਂਦਾ ਵੀ ਜਿਹੜੇ ਪੇਰੈਂਟਸ ਦੇ ਕੇਸ ਨੇ ਮੈਂ ਐਗਜ਼ਾਮਪਲ ਲੈ ਰਹੀਆਂ ਕਈ ਕਾਰਨ ਹੋ ਸਕਦੇ ਨੇ ਆਫਿਸ ਸਾਡਾ ਯੂਜ਼ੂਲੀ ਬਿਜ਼ੀ ਰਹਿੰਦਾ ਵੀ ਹੈਵ ਤਕਰੀਬਨ 35 ਜਣਾਂ ਦਾ ਸਟਾਫ ਹੈ ਜਿਹੜਾ ਸਿਰਫ ਬਰਨ ਵੀ ਆਫਿਸ ਐਬਟੂਡ ਆਫਿਸ ਦੇ ਦੀ ਕੋਈ ਵੀ ਜਿਹੜੀ ਕਲਾਇੰਟਸ ਦੀ ਇਨਕੁਆਰੀ ਹੁੰਦੀ ਹੈ ਉਹਨੂੰ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰੀਦੀ ਹੈ ਬਿਫੋਰਟ ਨੂੰ ਸੋਲਵ ਕੀਤਾ ਜਾ ਸਕੇ ਅ ਬਟ ਪ੍ਰੋਬਲਮ ਡਿਲੇ ਆਉਂਦੀ ਕੇ ਫਿਰ ਇਹ ਜਿਹੜੀ ਆਪਣੀ ਦਲੀਲ ਤੇ ਕਾਇਮ ਹੁੰਦੇ ਵੈਬਸਾਈਟ ਦੇ ਉੱਤੇ 12 ਮਹੀਨੇ ਲਿਖਿਆ ਸੋ ਸਾਡੇ ਕੇਸ ਨੂੰ 12 ਮਹੀਨੇ ਹੋ ਗਏ ਨੇ ਸੋ ਸਾਡਾ ਕੇਸ ਅੱਗੇ ਵਧਿਆ ਜਾਂ ਕਈ ਵਾਰ ਇਹ ਹੁੰਦਾ ਆਪਣੇ ਗਵਾਂਡੀ ਨਾਲ ਕਰਦੇ ਨੇ ਵੀ ਉਹਨਾਂ ਦੇ ਪੇਰੈਂਟਸ ਨੇ ਸੇਮ ਟਾਈਮ ਤੇ ਅਪਲੀਕੇਸ਼ਨ ਲਾਈ ਸੀ ਉਨਾ ਦੇ ਪੇਰੈਂਟਸ ਆਗੇ ਮੇਰੇ ਪੇਰੈਂਟਸ ਕਿਉਂ ਨਹੀਂ ਆਏ ਸੋ ਇਹਦੇ ਡਿਫਰੈਂਟ ਡਿਫਰੰਸ ਕਾਰਨ ਹੁੰਦੇ ਨੇ ਹਰੇਕ ਕੇਸ ਦੀ ਆਪਣੇ ਤੌਰ ਤੇ ਇੰਡੀਵਿਜੂਅਲ ਤੌਰ ਤੇ ਪ੍ਰੋਸੈਸਿੰਗ ਨੇ ਵੈਬਸਾਈਟ ਤੇ ਵੀ ਇਹ ਮੈਂਸ਼ਨ ਕੀਤਾ ਹੋਇਆ ਹੈ ਕਿ ਇਹ ਜਿਹੜੀ ਪ੍ਰੋਸੈਸਿੰਗ ਵੇਰੀ ਕਰ ਸਕਦੇ ਨੇ ਇਹ ਵੇਰੀ ਕਰ ਸਕਦੇ ਆ ਤਕਰੀਬਨ 80% ਕੇਸ ਉਹਨਾਂ ਨੇ ਲਿਖਿਆ ਵੈਬਸਾਈਟ ਤੇ ਕਿ ਜਿਹੜੇ ਉਹਨੇ ਦੇ ਵਿੱਚ ਪ੍ਰੋਸੈਸ ਹੋ ਜਾਂਦੇ ਨੇ ਸੈਕੰਡਰੀ ਕੰਪਲਿਕੇਸ਼ਨ ਵੱਧਦੀ ਹੈ ਜ ਮੈਂ ਤੁਹਾਡੇ ਰੇਡੀਓ ਤੇ ਰਾਹੀਂ ਲੋਕਾ ਦੇ ਜੇ ਆ ਮੇਨ ਕੁਐਸ਼ਨਸ ਹੁੰਦੇ ਨੇ ਉਹ ਆ ਕੇ ਆਪਾਂ ਵਕਤ ਵਧ ਸੁਲਝਾਉਣ ਦੀ ਕੋਸ਼ਿਸ਼ ਕਰੀਏ ਤਾਂ ਕਿ ਉਹ ਨੇ ਜਿਹੜੀ ਜਨਰਲ ਕੁਐਸ਼ਨਿੰਗ ਉਹ ਕਾਫੀ ਹੱਦ ਜਿਹੜੇ ਨੇ ਕਾਫੀ ਜਨਰਲ ਹੁੰਦੇ ਨੇ ਆ ਸਾਡਾ ਕਾਫੀ ਟਾਈਮ ਲੈ ਲੈਂਦੇ ਨੇ ਜਦੋਂ ਆਪਾਂ ਕਿਸੇ ਨੂੰ ਐਕਸਪਲੇਨ ਕਰ ਦਿਆਂ। ਔਰ ਬਾਕੀ ਜਿਹੜੇ ਜੇ ਕਿਸੇ ਕੋਈ ਸਪੈਸੀਫਿਕ ਕੁਐਸ਼ਨ ਹੁੰਦਾ ਤਾਂ ਡੈਫੀਨਿਟਲੀ ਉਹ ਸਾਡੇ ਆਫਿਸ ਨੂੰ ਕੰਟੈਕਟ ਕਰ ਸਕਦੇ ਨੇ। ਔਰ ਆਫਿਸ ਤੋਂ ਉਹਨਾਂ ਨੂੰ ਜਿਹੜਾ ਹੈਗਾ ਟਾਈਮ ਹੀ ਮੈਨੇਜ ਜਿਹੜਾ ਹੈਗਾ ਆਨਸਰ ਮਿਲੇਗਾ ਕਈ ਵਾਰ ਡਿਲੇ ਆਉਂਦੀ ਹੈ ਜਦੋਂ ਆਪਾਂ ਆਨਸਰ ਇਮੀਗ੍ਰੇਸ਼ਨ ਤੋਂ ਲੈਣਾ ਲਿਖਿਆ ਹੋਇਆ ਹੈ ਮਿਲ ਜਾਏਗਾ ਬਟ ਕਈ ਵਾਰ ਪੋਸੀਬਲ ਹੁੰਦਾ ਔਰ ਸਮ ਹੈ ਉਹ ਟਾਈਮਲੀ ਮੈਨੇਜ ਨਹੀਂ ਹੁੰਦਾ ਸੋ ਜਿੰਨਾ ਜਦ ਆਪਾਂ ਨੂੰ ਅੱਗੇ ਤੋਂ ਆਨਸਰ ਨਹੀਂ ਮਿਲਦਾ ਉਮੀਦ ਹੈ ਰ ਆਪਾਂ ਕੋਈ ਇਨਫਰਮੇਸ਼ਨ ਜਰੀਏ ਕਲਾਈਨ ਨੂੰ ਲੈਂਦੇ ਸਕਦੇ देयर आर ਅਦਰ ਸੋਰਸਸ ਟੂ ਜਿੱਥੋਂ ਫੀਸ ਭਰ ਕੇ ਡਿਲੇ ਹੋ ਰਿਹਾ ਆਪਾਂ ਉਹਦੀ ਅਪੀਲ ਵੀ ਕਰਦੇ ਆ ਸਕਦੇ ਆ ਪਰ ਉਹ ਕਲਾਈਂਟ ਲਈ ਖਰਚਾ ਹੁੰਦਾ ਤੋ ਆਪਾਂ ਅਵੋਇਡ ਕਰਨ ਦੀ ਕੋਸ਼ਿਸ਼ ਕਰਦੇ ਵੀ ਉਹ ਖਰਚਾ ਨਾ ਕਰਨਾ ਪਏ ਹੋ ਸ ਹੋ ਸਕੇ ਜੋ ਐਪਲੀਕੇਸ਼ਨ ਬਿਨਾਂ ਖਰਚੇ ਤੋਂ ਜਿਹੜੀ ਹੈ ਅਪਰੂਵ ਹੋ ਜਾਏ ਪਰ ਮੈਜੋਰਟੀ ਆਫ ਜਿਹੜੇ ਰੀਜ਼ਨਸ ਆ ਉਹ ਡਿਲੇ ਦੇ ਕਾਰਨ ਕਰਕੇ ਇਸ਼ੂਜ਼ ਆਉਂਦੇ ਅੱਛਾ ਜੀ ਆਪਾਂ ਲਾਸਟ ਟਾਈਮ ਵਿਦਿਆਰਥੀਆਂ ਦੀ ਬਾਰੇ ਗੱਲ ਸੰਝੀ ਕੀਤੀ ਸੀ ਬਹੁਤ ਬਵੇਲਾ ਹੋਇਆ ਜਦ ਬਰਿਆਸੀ ਰਹਿ ਰਹੇ ਨੇ ਉਹਨਾਂ ਦੇ ਉੱਪਰ ਕੋਸ਼ਸ਼ ਹਮਲੇ ਕੀਤੇ ਗਏ ਮੀਡੀਆ ਵੱਲੋਂ ਤੇ ਉਹਨਾਂ ਹੱਕ ਦੇ ਵਿੱਚ ਹਰਕੇ ਆਪਾਂ ਘੰਟਿਆਂ ਵੱਧੀ ਇਸ ਮੈਂ ਨਿੱਜੀ ਤੌਰ ਤੇ ਪ੍ਰੋਗਰਾਮ ਕੀਤਾ ਉਹਨਾਂ ਨੂੰ ਬੱਚਿਆਂ ਨੂੰ ਜਿਹੜੇ ਇੱਥੇ ਰਹਿ ਰਹੇ ਨੇ ਤੇ ਹੋਰ ਜਿਹੜੇ ਆਉਣੇ ਨੇ ਉਹਨਾਂ ਨੂੰ ਜਨਰਲ ਜਿਹੜਾ ਕੋਈ ਸੁਝਾਅ ਤੁਸੀਂ ਦੇਣਾ ਚਾਹੋ ਕਿ ਕੁਛ ਨਾ ਕੁਛ ਕਿਤੇ ਨਾ ਕਿਸੇ ਗਲਤੀਆਂ ਵੀ ਕਰਦੇ ਹੋਣਗੇ 90 95% ਬਹੁਤ ਵੱਡਾ ਫਾਈਨੈਂਸ਼ੀਅਲ ਬਰਡਨ ਮਾਪਿਆਂ ਦਾ ਲੈ ਕੇ ਲੱਖਾਂ ਡਾਲਰ ਇਸ ਜਗ੍ਹਾ ਖਰਚ ਕੇ ਡਿਗਰੀਆਂ ਲੈਂਦੇ ਤੇ ਮੁੜ ਕੇ ਉਹਨਾਂ ਨੂੰ ਪਤਾ ਪੜਨ ਤੋਂ ਬਾਅਦ ਉਹਨਾਂ ਦੀ ਇਮੀਗ੍ਰੇਸ਼ਨ ਹੋਣੀ ਹੈ ਉਹਨਾਂ ਨੂ ਤੁਹਾਡੇ ਤਜਰਬੇ ਦੇ ਵਿੱਚੋਂ ਤੁਸੀਂ ਪ੍ਰੋਫੈਸ਼ਨਲ ਹੋ ਬੱਚਿਆਂ ਕੋਈ ਸੁਝਾਅ ਜਿਹੜਾ ਵੀ ਬਣਾਇਆ ਜਾਏ ਦੇ ਵਿੱਚ ਆਉਣ ਉਹ ਪ੍ਰੋਗਰਾਮ ਚੰਗਾ ਹੈਗਾ ਥਾਟ ਚੰਗਾ ਹੈਗਾ ਹੀ ਬਟ ਕਿਉਂਕਿ ਨੰਬਰ ਇੰਨੀ ਜਲਦੀ ਵੱਧ ਜਾਂਦਾ ਨੰਬਰ ਇੰਨੀ ਜਲਦੀ ਮਲਟੀਪਲਾਈ ਹੁੰਦਾ ਆਮ ਕਰਕੇ ਜਦੋਂ ਸਟੂਡੈਂਟ ਕੈਨੇਡਾ ਦੇ ਵਿੱਚ ਆਉਂਦਾ ਸਿਰਫ ਉਹ ਸਟੂਡੈਂਟ ਜ਼ਰੂਰ ਖਿਆਲ ਰੱਖਣ ਵੀ ਜੇ ਫਾਈਨੈਂਸ਼ੀਅਲ ਕਪੈਸਿਟੀ ਉਹਨਾਂ ਦੀ ਅਲਾਉ ਨਹੀਂ ਕਰਦੀ ਫਿਰ ਉਹਨਾਂ ਦੀਆਂ ਮੁਸ਼ਕਲਾਂ ਕੋਈ ਦੋਰਾ ਨਹੀਂ ਹੈਗੀ ਕੈਨੇਡਾ ਦੇ ਵਿੱਚ ਆਉਂਦਾ ਜਿਹੜਾ ਫਾਈਨੈਂਸ਼ੀਅਲੀ ਸਟੇਬਲ ਨਹੀਂ ਹੈ ਪਿੱਛੋਂ ਫਿਰ ਕੈਨੇਡਾ ਇੱਕ ਅਜਿਹਾ ਮੁਲਕ ਹੈ ਜਿਹੜਾ ਬਾਕੀ ਕੰਟਰੀਜ਼ ਨੂੰ ਉਹਨਾਂ ਨੂੰ ਸਹੂਲਤਾਂ ਵਧ ਦਿੰਦਾ ਜਿਵੇਂ ਆਸਟ੍ਰੇਲੀਆ ਹੋ ਗਿਆ ਜਾਂ ਅਮਰੀਕਾ ਹੋ ਗਿਆ ਕ੍ਰੋਸ ザ ਬਾਰਡਰ ਉੱਥੇ ਸਟੂਡੈਂਟ ਆ ਕੇ ਕੰਮ ਨਹੀਂ ਕਰ ਸਕਦਾ ਦੇ ਵਿੱਚ 20 ਆਵਰਸ ਦਾ ਤੁਹਾਨੂੰ ਜਿਹੜਾ ਹੈਗਾ ਆਉਂਦੇ ਸਾਰੀ ਕੰਮ ਇਜਾਜ਼ਤ ਮੇਰੀ ਐਡਵਾਈਸ ਰਹੇਗੀ ਸਟੂਡੈਂਟਸ ਨੂੰ ਸੈਕੰਡ ਐਡਵਾਈਸ ਉਹ ਹੈ ਕਿ ਕਾਲਜ ਦੀ ਚੋਣ ਹੈ ਜਦੋਂ ਕਾਲਜ ਦੀ ਚੋਣ ਕਰਦੇ ਨੇ ਤਾਂ ਕਿਰਪਾ ਕਰਕੇ ਉਹ ਪਬਲਿਕ ਫੰਡਡ ਕਾਲਜ ਦੇ ਵਿੱਚ ਆਉਣ ਜਿਉ ਕਿਸੇ ਪ੍ਰਾਈਵੇਟ ਅਦਾਰੇ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਜਿਹੜਾ ਫਰਦਰ ਜਿਹੜੇ ਪ੍ਰਿਵਿਲੇਜਸ ਮਿਲਦੀਆਂ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਕਈ ਜੇ ਤੁਸੀਂ ਦੇ ਵਿੱਚ ਕਾਫੀ ਪ੍ਰੋਗਰਾਮਸ ਨੇ ਜਿੱਥੇ ਤੁਸੀਂ ਡਿਸਕਵਾਲਿਫਾਈ ਹੋ ਜਾਓਗੇ ਤੁਸੀਂ ਲੈ ਸਕੋਗੇ ਸੋ ਇਹ ਜਿਹੜੇ ਨੇ ਕੁਝ ਇੰਪੋਰਟੈਂਟਸ ਨੇ ਬਾਕੀ ਜਿਹੜੀ ਚੀਜ਼ ਹੈਗੀ ਆ ਸਭ ਤੋਂ ਇੰਪੋਰਟੈਂਟ ਜਿਹੜੇ ਖਾਸ ਕਰਕੇ ਮੈਂ ਹਿੰਦੁਸਤਾਨ ਦੇ ਸਟੂਡੈਂਟਸ ਦੀ ਗੱਲ ਕਰੂੰਗਾ ਕਿਉਂਕਿ ਇਸ ਪੁਆਇੰਟ ਵੀ ਰਵੇ ਸਾਡੇ ਕੋਲ ਕਾਫੀ ਜਿਹੜੇ ਮੈਂਗਲ ਸਪੀਕਿੰਗ ਜਾਂ ਕੈਂਟਨੀ ਸਪੀਕਿੰਗ ਜਾਂ ਚਾਈਨਸ ਭਾਈਚਾਰੇ ਤੋਂ ਸਟੂਡੈਂਟਸ ਆਉਂਦੇ ਇੰਗਲਿਸ਼ ਸਿੱਖ ਕੇ ਪੜ੍ਹ ਕੇ ਕੈਨੇਡੀਅਨ ਲੈ ਕੇ ਵਾਪਸ ਜਾਣ ਦਾ ਹੁੰਦਾ ਹੈ ਉਹ ਮੇਰੇ ਪ੍ਰੈਕਟੀਕਲ ਐਕਸਪੀਰੀਅੰਸ ਹੈ ਜਿਹੜਾ ਆਪਣਾ ਭਾਈਚਾਰਾ ਉਹਦੇ ਵਿੱਚ ਤਕਰੀਬਨ 90% ਸਟੂਡੈਂਟਸ ਦਾ ਜਿਹੜਾ ਮੋਟਿਵ ਹੁੰਦਾ ਓ ਕੈਨੇਡਾ ਦੇ ਵਿੱਚ ਪੜ ਕੇ ਫਰਦਰ ਇਮੀਗ੍ਰੇਸ਼ਨ ਹਾਸਲ ਕਰਨਾ ਹੁੰਦਾ ਸੋ ਉਹਦੇ 'ਚ ਕੋਈ ਗਲਤ ਗੱਲ ਨਹੀਂ ਹੈ ਔਰ ਬਹੁਤ ਹੀ ਵਾਈਟਲ ਹੈ ਕਿਉਂਕਿ ਪੜਿਆ ਲਿਖਿਆ ਕੈਨੇਡਾ ਦਾ ਕੈਨੇਡਾ ਦਾ ਐਕਸਪੀਰੀਅੰਸ ਇੰਡੀਵਿਜੂਅਲ ਜਿਹੜਾ ਆਲਰੇਡੀ ਕੈਨੇਡਾ 'ਚ ਸੈਟਲ ਹੋ ਚੁੱਕਿਆ ਕੈਨੇਡੀਅਨ ਪੜਾਈ ਲੈ ਕੇ ਪਲੱਸ ਉਹ ਆਪਣੀ ਜੇਬ ਤੋਂ ਪੈਸੇ ਖਰਚਦੇ ਪੜਾਈ ਲੈਣ ਲਈ ਸੋ ਇਹ ਜਿਹੇ ਰਿਸੋਰਸ ਨੂੰ ਗਵਰਨਮੈਂਟਸ ਨੂੰ ਪਾਲਿਸੀਜ਼ ਨੂੰ ਅਮੈਂਡ ਕਰਨਾ ਚਾਹੀਦਾ ਜਿਹੜੀ ਲੇਟੈਸਟ ਪਾਲਿਸੀ ਹੈ ਕਿਉਂਕਿ ਤੁਹਾਡਾ ਰੇਡੀਓ ਕਾਫੀ ਦੂਰ ਤੱਕ ਸੁਣਿਆ ਜਾਂਦਾ ਤੁਹਾਡੀ ਆਵਾਜ਼ ਵੀ ਬਹੁਤ ਵੈਲਿਊ ਹੈ ਗਵਰਨਮੈਂਟ ਦਾ ਕੋ ਜਿਹੜੇ ਸਪੈਸ਼ਲੀ ਮਨਿਸਟਰ ਆਉਂਦੇ ਨੇ ਜਿਹੜੇ ਪਾਲਿਸੀ ਬਣਾਉਂਦੇ ਨੇ ਉਹਨਾਂ ਨੂੰ ਵੀ ਕਟਹਿਰੇ 'ਚ ਖੜਾ ਕਰਨਾ ਚਾਹੀਦਾ ਪੁੱਛਣਾ ਚਾਹੀਦਾ ਜਿਹੜੀ ਪਾਲਿਸੀ ਲੇਟੈਸ ਲੈ ਕੇ ਆਏ ਨੇ ਕਿ ਸਟੂਡੈਂਟਸ ਲਈ ਕਿਵੇਂ ਲਾਹੇਵੰਦ ਹੈ ਕਿਵੇਂ ਸਟੂਡੈਂਟ ਜਿਹੜਾ ਹੈਗਾ ਆਪਣੀ ਇਮੀਗ੍ਰੇਸ਼ਨ ਜਿਹੜੀ ਹਾਸਲ ਕਰ ਸਕਦਾ ਹੈ ਇਹ ਜਿਹੜੀ ਪਾਲਿਸੀ ਉਹ ਲੇਟੈਸ ਲੈ ਕੇ ਆਏ ਨੇ ਉਹ ਨਵੰਬਰ ਨੂੰ ਜਿਹੜੇ ਰੂਲ ਬਦਲੇ ਨੇ ਉਹਦੇ ਸਟੂਡੈਂਟਸੇ ਬਿਲਕੁਲ ਖਿਲਾਫ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਇਮੀਗ੍ਰੇਸ਼ਨ ਲੈਣਾ ਹੋਰ ਵੀ ਮੁਸ਼ਕਲ ਹੋ ਗਿਆ ਇਹ ਤੋਂ ਪਹਿਲਾਂ ਤਾਂ ਜਿਹੜੀ ਪੁਰਾਣੀ ਪਾਲਿਸੀ ਸੀ ਜਿਹਦੇ ਰਾਹੀਂ ਸੌਲਡ ਨੇ ਪੱਕੇ ਹੋ ਸਕਦੇ ਨੇ ਨਾਓ ਜਿਹੜਾ ਸਭ ਤੋਂ ਇੰਪੋਰਟੈਂਟ ਜਿਹਾ ਉੱਜਤਾ ਜਾ ਸਕਦਾ ਸਰਕਾਰ ਨੂੰ ਸਟੂਡੈਂਟਸ ਨੂੰ ਇਮੀਗ੍ਰੇਸ਼ਨ ਲੈਣ ਲਈ ਇੱਕ ਵੱਖਰੀ ਕੈਟਾਗਰੀ ਸਟਾਰਟ ਕਰਨੀ ਚਾਹੀਦੀ ਹੈ ਉਹਨਾਂ ਨੂੰ ਜਿਹੜੇ ਐਪਲ ਤੇ ਔਰੇਂਜਸ ਇਕੱਠੇ ਨਹੀਂ ਕਰਨੇ ਚਾਹੀਦੇ ਉਹਨਾਂ ਨੂੰ ਕੰਪੀਟੀਸ਼ਨ ਦੇ ਵਿੱਚ ਨਹੀਂ ਪਾਉਣਾ ਚਾਹੀਦਾ ਜਿਹੜੇ ਵਿਅਕਤੀ ਕੈਨੇਡਾ ਤੋਂ ਬਾਹਰ ਜਾ ਰਹੇ ਨੇ ਤੋ ਕੈਨੇਡਾ ਦੇ ਸਟੂਡੈਂਟ ਨੂੰ ਵੱਖਰੀ ਸਹੂਲਤ ਤੇ ਪ੍ਰਿਵੀਲੇਜ ਮਿਲਣੀ ਚਾਹੀਦੀ ਹੈ ਜਦੋਂ ਉਹ ਕੈਨੇਡਾ ਦੇ ਆਪਣੇ ਪੈਸੇ ਕੇ ਪੜ੍ਹਾਈ ਪੂਰੀ ਕਰਦਾ ਤਾਂ ਕਿ ਉਹਦਾ ਜਿਹੜਾ ਇਮੀਗ੍ਰੇਸ਼ਨ ਲੈਣ ਦਾ ਜਿਹੜਾ ਸੁਪਨਾ ਪੂਰਾ ਹੋ ਸਕੇ। ਬਪਾਰਖੰਦੇਸ਼ਾ ਅਮਨ ਖਹਿਰਾ ਜੀ ਸੀਐਲਯੂਸੀ ਤੋਂ ਨੇ ਫੇਰ ਗੱਲ ਕਰਦੇ। ਅਮਨ ਖਹਿਰਾ ਜੀ ਇੱਕ ਦੱਸਿਓ ਕਿ ਨੇ ਹੁਣ ਆਪਣਾ ਨੂੰ ਉਸੱਦਣਾ ਹੈ ਸਪੋਜ਼ਿਸ ਨੂੰ ਚਾਹੇ ਉਹ ਮਰਦਾ ਚਾਹੇ ਔਸਤਰੀ ਹੈ ਉਹਦੇ ਲਈ ਕੁਝ ਇਸ ਵਰੇ ਦੀ ਇਮੀਗ੍ਰੇਸ਼ਨ ਤੇ ਫਰਕ ਹੈ ਤੇ ਇਹਦੇ ਨਾਲ ਹੀ ਮਾਪਿਆਂ ਦਾ ਜਿਹੜਾ 10000 ਦੀ ਗਿਣਤੀ ਹੈ ਉਹਦੇ ਲਈ ਸਾਰੇ ਅਪਲਾਈ ਕਰ ਰਹੇ ਨੇ ਉਹਦੇ ਬਾਰੇ ਕੋਈ ਲੇਟੈਸਟ ਇਨਫੋਰਮੇਸ਼ਨ ਹੋਵੇ ਅ ਜੀ ਫਿਲਹਾਲ ਜਿਹੜੀ ਪੇਰੈਂਟਸ ਦੀ ਬਾਰੇ ਮੈਂ ਦੱਸਣਾ ਚਾਹੂੰਗਾ ਜਿਹੜੀ ਪੇਰੈਂਟਸ ਨਹੀਂ ਲਈ ਜਾ ਰਹੀ ਹਾਲੇ ਸਿਰਫ ਐਕਸਪ੍ਰੈਸ਼ਨ ਆਫ ਇੰਟਰਸਟ ਦੀ ਅਪਲੀਕੇਸ਼ਨ ਲਈ ਜਾ ਰਹੀ ਹੈ ਜਿਹੜੀ ਇੱਕ ਬੜਾ ਸਿੰਪਲਾਈਫਾਈਡ ਪ੍ਰੋਸੈਸ ਹੈ ਤੁਸੀਂ ਉਹ ਅਪਲੀਕੇਸ਼ਨ ਜਿਹੜੀ ਅਪਲਾਈ ਕਰ ਸਕਦੇ ਹੋ ਤੁਹਾਡੀ ਅਪਲੀਕੇਸ਼ਨ ਜਿਹੜੀ ਆਪੂਲ ਦੇ ਵਿੱਚ ਲਈ ਜਾਏਗੀ ਔਰ ਫਰਵਰੀ ਬਿੰਗਿੰਗ ਆਫ ਦੇ ਵਿੱਚ ਉਹ ਅਪਲੀਕੇਸ਼ਨ ਜਿਹੜੀ ਲੈਣੀ ਬੰਦ ਹੋ ਜਾਏਗੀ तकरीबन ਇੱਕ ਮਹੀਨੇ ਲਈ ਉਹ ਅਪਲੀਕੇਸ਼ਨ ਪ੍ਰੋਸੈਸ ਖੁੱਲੇ ਅਸੀਂ ਨਾਓ ਪੇਰੈਂਟੀ ਪਲੀਜ਼ ਉਹ ਵਿਅਕਤੀ ਫਾਈਲ ਕਰਨ ਜਿਹੜੇ ਕੁਆਲੀਫਾਈ ਕਰਦੇ ਨੇ ਜਿਹੜੀ ਕੁਆਲੀਫਿਕੇਸ਼ਨ ਐ ਸਪான்ਸਰਸ਼ਿਪ ਦੀ ਉਹਦੇ ਵਿੱਚ ਕੋਈ ਆਫਿਸ ਨੂੰ ਵੀ ਕੰਟੈਕਟ ਕਰਕੇ ਪੁੱਛ ਸਕਦੇ ਹੋ ਵੀ ਤੁਹਾਡੀ ਫੈਮਿਲੀ ਦਾ ਸਾਈਜ਼ ਕੀ ਹੈ ਔਰ ਜਦੋਂ ਫੈਮਿਲੀ ਦਾ ਸਾਈਜ਼ ਪੁੱਛਦੇ ਹੋ ਤਾਂ ਇਹ ਵੀ ਪਲੀਜ਼ ਡਿਸਕਲੋਸ ਕਰਨਾ ਵੀ ਜਿਹੜੇ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਕੋ-ਸਾਈਨਰ ਸੀ ਉਹਨਾਂ ਨੇ ਕਿ ਦੇ ਫਰਦਰ ਸਪான்ਸਰਮੈਂਟੀ ਤੋਂ ਹੋਵੇ ਕਈ ਵਾਰ ਫੋਨ ਦੇ ਕਾਫੀ ਲਿਮਿਟਿਡ ਹੁੰਦੀ ਹੈ ਸਾਡੇ ਕੋਲ ਕੇ ਆਫਿਸ ਆ ਜਾਓ ਤਾਂ ਕੰਸਲਟੇਸ਼ਨ ਸਾਰੀ ਫ੍ਰੀ ਆਫ ਕਾਸਟ ਹੈ ਤੁਸੀਂ ਇਨਫੋਰਮੇਸ਼ਨ ਜਿਹੜੀ ਲੈ ਸਕਦੇ ਹੋ ਪਤਾ ਕਰ ਸਕਦੇ ਹੋ ਤੁਸੀਂ ਕੁਆਲੀਫਾਈ ਕਰਦੇ ਹੋ ਜਾਂ ਕਰਦੇ ਨਾ ਤੁਹਾਡੀ ਅਪਲੀਕੇਸ਼ਨ ਪੂਲ ਦੇ ਵਿੱਚ ਚੜੀ ਜਾਏਗੀ ਤਾਂ 90 ਦਿਨਾਂ ਦੇ ਵਿੱਚ ਸਰਕਾਰ ਜਿਹੜੀ ਆ 10000 ਅਪਲੀਕੇਸ਼ਨਾਂ ਲਾਟਰੀ ਸਿਸਟਮ ਦੇਣਾ ਹੀ ਤੇ ਕਰੇਗੀ तकरीबन ਪਿਛਲੇ ਸਾਲ 14000 ਐਪਲੀਕੇਸ਼ਨਾਂ ਟੋਟਲ ਰਸੀਬ ਹੋਈਆਂ ਸੀ ਜਿਦੇ ਵਿੱਚ 10000 ਬਾਕੀ 4000 ਐਪਲੀਕੇਸ਼ਨ ਸਰਕਾਰ ਵੱਲੋਂ ਮੋੜ ਦਿੱਤੀਆਂ ਗਈਆਂ ਅਨਫੋਰਚੂਨੇਟਲੀ ਕਈਆਂ ਵਿਅਕਤੀਆਂ ਵਾਪਸ ਨਹੀਂ ਆਈ ਉਹਨਾਂ ਦੇ ਰਾਸਤੇ ਪੈਸੇ ਵੀ ਸਰਕਾਰ ਕੋਲ ਪਏ ਨੇ which is a different issue ਦੀ ਐਪਲੀਕੇਸ਼ਨ ਹੈ ਸਪਾਊਸ ਲਈ ਇਹ ਜ਼ਰੂਰ ਵਧੀਆ ਅਨਾਉਂਸਮੈਂਟ ਹੋਈ ਹੈ ਅ ਵੀ ਜਿਹੜਾ ਪ੍ਰੋਸੈਸਿੰਗ ਟਾਈਮ ਨੂੰ ਹਾਫ ਕਰ ਦਿੱਤਾ ਗਿਆ ਹੈ तकरीबन ਆਮ ਐਵਰੇਜ ਜਿਹੜਾ ਟਾਈਮ 2 ਸਾਲ ਤੱਕ ਚਲਾ ਜਾਂਦਾ ਸੀ ਹੁਣ ਉਹ ਕੱਟ ਤੇ ਹੀ ਅਪਲਾਈ ਹੁੰਦਾ ਬਟ ਇਹਨਾਂ ਦੇ ਵਿੱਚ ਇੱਕ ਖਾਸ ਜਿਹੜੀ ਗੱਲ ਹੈ ਜਿਵੇਂ ਕੋਟਾ ਸਪਾਉਸਸ ਲਈ ਰੱਖਿਆ ਗਿਆ ਉਹ तकरीबन 64000 ਜਿਹੜੀ ਸਪਾਉਸਸ ਐ ਉਹਨਾਂ ਦਾ ਕੋਟਾ ਜਿਹੜਾ ਰੱਖਿਆ ਗਿਆ ਮਿਥਿਆ ਗਿਆ ਆ ਜਿਹਦੇ ਵਿੱਚ 20000 ਜਿਹੜਾ ਕੋਟਾ ਉਹ ਪੇਰੈਂਟਸ ਨੇ ਉਹ ਐਸ ਅ ਪੇਰੈਂਟਸ ਯਾ ਐਸ ਅ ਸਪਾਉਸ ਕੈਨੇਡਾ ਦੇ ਵਿੱਚ ਢੱਕਲ ਹੋਣਗੇ ਨਾ ਸਪਾਉਸ ਤੇ ਲਈ ਇੱਕ ਚੀਜ਼ ਜਿਹੜੀ ਸਰਕਾਰ ਨੇ ਚੇਂਜ ਕਰਨਾ ਚਾਹੀਦਾ ਸੀ ਜਿਹੜਾ ਕਿ ਆਪਣੇ ਭਾਈਚਾਰੇ ਨੂੰ ਬਹੁਤ ਇਫੈਕਟ ਕਰਦਾ ਖਾਸ ਕਰਕੇ ਮжоਰਿਟੀ ਆਫ ਜਿਹੜੇ ਆਪਣੇ रिश्ਤੇ ਹੁੰਦੇ ਨੇ ਉਹ ਅਰੇਂਜ ਮੈਰਿਜਸ ਦੇ थ्रू ਹੁੰਦੇ ਨੇ ਜਿੱਥੇ ਕਾਫੀ ਕੇਸਸ ਦੇ ਵਿੱਚ ਇਹ ਵੀ ਦੇਖਿਆ ਗਿਆ ਜਿੱਥੇ ਤੁਸੀਂ ਆਪਣੇ ਸਪਾਊਸ ਨੂੰ ਦੇਖਿਆ ਵੀ ਨਹੀਂ ਹੁੰਦਾ ਫਿਰ ਵੀ ਤੁਹਾਡੇ ਘਰ ਦੇ ਜਿਹੜਾ ਹੈਗੇ हां ਕਰ ਦਿੰਦੇ ਨੇ ਇਹ ਰਿਸ਼ਤਾ ਪੱਕਾ ਕਰ ਦਿੰਦੇ ਨੇ ਨਾਓ ਜਿਹੜਾ ਕਾਨੂੰਨ ਕੈਨੇਡਾ ਦਾ ਬਣਾਇਆ ਗਿਆ ਸੀਗਾ ਸਪਟੰਬਰ 2011 ਦੇ ਵਿੱਚ ਉਹਦੇ ਵਿੱਚ ਹਾਲੇ ਵੀ ਜਿਹੜਾ ਟੂਲ ਹੈ ਕਾਫੀ ਸਖਤ ਹੈ ਵੀਜ਼ਾ ਆਫੀਸਰ ਦੇ ਹੱਥ ਕਾਫੀ ਸਟਰੋਂਗ ਟੂਲ ਦਿੱਤਾ ਹੋਇਆ ਹੈ ਪ੍ਰੋਸੈਸਿੰਗ ਟਾਈਮ ਘਟਦਾ ਹੈ ਕਾ ਜਿਹੜੀ ਰਿਫਿਊਜ਼ਲ ਰੇਟ ਆ ਉਹ ਬਹੁਤ ਵੱਧ ਜਾਂਦਾ ਇਹ ਪਿਛਲੇ ਟਾਈਮ ਦੇ ਵਿੱਚ ਵੀ ਕੇਸ ਪ੍ਰਾਇੋਰਟੀ ਸੀ ਕਾ ਜਿਹੜਾ ਹੋ ਜਾਂਦੇ ਸੀ ਸੋ ਸਿਮਿਲਰਲੀ ਹੁਣ ਵੀ ਜਿਹੜਾ ਪ੍ਰੋਸੈਸਿੰਗ ਟਾਈਮ ਉਹ ਘਟਾਇਆ ਗਿਆ ਬਟ ਜਿਹੜਾ ਕਾਨੂੰਨ ਦੇ ਵਿੱਚ ਜਿਹੜੀ ਨਰਮੀ ਆ ਉਹ ਨਹੀਂ ਦਿਖਾਈਗੀ ਜਿਹਦੇ ਕਰਕੇ ਜਿਹੜੇ ਅਰੇਂਜ ਮੈਰिजਸ ਦੇ ਕੇਸਿਸ ਨੇ ਅਹ ਇਹ ਜਿਹੇ ਕੇਸਸ ਨੇ ਜਿੱਥੇ ਵੀਜ਼ਾ ਆਫੀਸਰ ਨੂੰ ਇਹ ਡਾਊਟ ਹੁੰਦਾ ਵੀ ਵਿਵਹਾਰ ਬੁਡਾ ਹਿਸਟਰੀ ਡਿਸੀਜਨ ਹੈ ਜਾਂ ਤੁਸੀਂ ਕੈਨੇਡਾ ਦੇ ਵਿੱਚ ਤੁਸੀਂ ਡਿਵੋਰਸ ਲੈ ਕੇ ਸੈਕੰਡ ਮੈਰਿਜ ਕਰਨ ਜਾ ਰਹੇ ਹੋ ਤਾਂ ਤੁਸੀਂ ਸਿੰਗਲ ਕਿਸੇ ਇੰਡੀਵਿਜੂਅਲ ਨਾਲ ਵਿਆਹ ਕਰ ਰਹੇ ਹੋ ਜਿਹਨੂੰ ਸਪੌਂਸਰ ਕਰਨ ਜਾ ਰਹੇ ਹੋ ਸੋ ਇਹ ਜਿਹੜੇ ਕੇਸਸ ਨੇ ਇਹਨਾਂ ਦਾ ਰਿਫਿਊਜ਼ ਹੋਣ ਦਾ ਜਿਹੜਾ ਰਿਸਕ ਹੈ ਉਹ ਵੱਧ ਜਾਏਗਾ ਸੋ ਇਹ ਚੀਜ਼ ਜਿਹੜੀ ਹੈ ਜ਼ਰੂਰ ਹੋਏਗੀ ਬਟ ਪੋਜ਼ਿਟਿਵ ਹੈਗੀ ਹੈ ਕਿਉਂਕਿ ਪ੍ਰੋਸੈਸਿੰਗ ਟਾਈਮ ਘਟ ਗਿਆ ਉਹ ਤੁਹਾਡੇ ਜਿਹੜੇ ਸਪਾਊਸ ਨੂੰ ਕੈਨੇਡਾ ਦੇ ਆ ਸਕੰਦੇ ਆ। ਅੱਛਾ ਜੀ ਵਰਕ ਵੀਜ਼ਾ ਬਾਰੇ ਵੀ ਅਪਡੇਟ ਕਰਿਓ ਕਿ ਐਲਐਮਓ ਜਿਹੜਾ ਐਲਐਮਆਈ ਸ਼ਹਿਰ ਬਣ ਗਿਆ ਤੇ ਕਾਫੀ ਇੰਪੋਰਟੈਂਟ ਹੈ ਜਦੋਂ ਕਰਦੇ ਨੇ ਖਾਸ ਕਰਕੇ ਰਿਸ਼ਤੇਦਾਰ ਨੂੰ ਸਪான்ਸਰਸ਼ਿਪ ਕਰਨ ਤੋਂ ਪਹਿਲਾਂ ਕੋਸ਼ਿਸ਼ੋ ਕਰਨ ਦੀ ਪਰਮਨੈਂਟ ਸਪੌਂਸਰ ਕਰਨ ਕਿਉਂਕਿ ਰਿਫਿਊਜ਼ ਰੇਟ ਉਹਦਾ ਬਹੁਤ ਲੋਅ ờ ਕੋਰਪੋਰਟ ਸਿਸਟਮ ਦੇ ਰਾਹੀਂ ਉਹ ਐਪਲੀਕੇਸ਼ਨ ਪ੍ਰੋਸੈਸ ਕੀਤੀ ਜਾਂਦੀ ਹੈ ਆ ਅਦਰਵਾਇਜ਼ ਖਾਸ ਕਰਕੇ ਜਿਹੜੇ ਰਿਕੁਆਇਰਡ ਕੰਟਰੀ ਤੋਂ ਆ ਰਹੇ ਨੇ ਇੰਡੀਵਿਜੂਅਲ ਜਿਵੇਂ ਇੰਡੀਆ ਤੋਂ ਆ ਰਹੇ ਨੇ ਪਾਕਿਸਤਾਨ ਤੋਂ ਆ ਰਹੇ ਨੇ ਉਹਨਾਂ ਦਾ ਜਿਹੜਾ ਵੀਜ਼ਾ ਰਿਫਿਊਜ਼ ਰੇਟ ਹੈ ਉਹ ਕਾਫੀ ਹਾਈ ਹੈ ਕਾਫੀ ਕੇਸੇ ਦੇਖਿਆ ਗਿਆ ਲੈ ਲੈਣੇ ਉਹਦਾ ਵਰਕ ਪਰਮਿਟ ਉਸੇ ਨਾਲ ਕੋਈ ਗਾਰੰਟੀ ਨਹੀਂ ਹੋ ਜਾਂਦਾ ਵੀ ਤੁਹਾਨੂੰ ਹੁਣ ਜਿਹੜਾ ਵਰਕ ਪਰਮਿਟ ਹੈ ਉਹ ਮਿਲ ਹੀ ਜਾਣਾ ਵਰਕ ਪਰਮਿਟ ਦੀਆਂ ਤੁਸੀਂ ਸਪான்ਸਰ ਕਰਨ ਜਾ ਰਹੇ ਹੋ ਉਹ ਹੈ ਜੇ ਤੁਹਾਡੇ ਫੰਡਸ ਇਮੀਡੀਏਟਲੀ ਟ੍ਰਾਂਸਫਰ ਹੋਏ ਨੇ ਅਕਾਊਂਟ ਦੇ ਵਿੱਚ ਤਾਂ ਬਹੁਤ ਸਟਰੋਂਗ ਚਾਂਸ ਤੁਹਾਡਾ ਕੇਸ ਹੈ ਉਹ ਨਾ ਮਨਜ਼ੂਰ ਹੋ ਜਾਏ ਬਾਕੀ ਸਾਡੇ ਆਫਿਸ ਤੋਂ ਵੀ ਜਿਹੜੀ ਹੈ ਫ੍ਰੀ ਆਫ ਕਾਸਟ ਦੀ ਸੀ ਆਕੇ ਸਲਾ ਲੈ ਸਕਦੇ ਹੋ ਕਾਫੀ ਵਧੀਆ ਪ੍ਰੋਗਰਾਮ ਨੇ ਵੀ ਕਰਨ ਲਈ ਜਿਹੜੀਆਂ ਅਪਲੀਕੇਸ਼ਨਾਂ ਉਹ ਜਾ ਰਹੀਆਂ ਨੇ ਔਰ ਉਹਦੇ ਵਿੱਚ 5800 ਅਪਲੀਕੇਸ਼ਨ ਜਿਹੜੀ ਹੈ ਇਸ ਵਾਰ ਮਨਜ਼ੂਰ ਕੀਤੀ ਜਾਏਗੀ ਇਹ ਸਭ ਧੰਨਵਾਦ ਜੀ ਤੁਹਾਡੇ ਸਮੇਂ ਲਈ ਆਉਣ ਵਾਲੇ ਸਾਹਿਬ ਥੈਂਕ ਯੂ ਸੈਂਕਿਊ ਬਾਈ ਜੀ ਔਰ ਸਾਡੇ ਫੋਨ ਨੰਬਰ ਤੇ ਇਨਫੋਰਮੇਸ਼ਨ ਲੈਣ ਲਈ ਵੈਬਸਾਈਟ ਤੇ ਜਾਇਆ ਜਾ ਸਕਦਾ www.cwccanada.com ਥੈਂਕ ਯੂ ਥੈਂਕ ਯੂ ਬਪ ਬਪਾਰਕ ਸੰਦੇਸ਼ ਤੇ ਖਬਰ 12 ਵਜੇ ਕੇ 8 ਮਿੰਟ ਹੋਏ ਹੈ ਜੀ ਖਬਰਾਂ ਦੀ ਸਾਂਝ ਤੁਹਾਡੇ ਨਾਲ ਮੈਂ ਪਵਾਮਾ ਉਹਦੇ ਵਿੱਚ ਸਭ ਤੋਂ ਜਿਹੜੀ ਵੱਡੀ ਖਬਰ ਹੈ ਉਹ ਪ੍ਰਧਾਨ ਮੰਤਰੀ ਟਰੂਡੋ ਦੇ ਕਿਬੈਕ ਦੇ ਵਿੱਚ ਇੱਕ ਅੰਗਰੇਜ਼ੀ ਬੋਲਣ ਵਾਲੀ ਇਸਤਰੀ ਬਦੋਂ ਜਦ ਮੈਂਟਲ ਹੈਲਥ ਬਾਰੇ ਸਵਾਲ ਪੁੱਛਿਆ ਗਿਆ ਤਾਂ ਪ੍ਰਧਾਨ ਮੰਤਰੀ ਟਰੂਡੋ ਨੇ ਉਹਨੂੰ ਕਿਹਾ ਮੈਂ ਕਿਉਂ ਮੈਂ ਅੰਗਰੇਜ਼ੀ ਦੇ ਵਿੱਚ ਟ੍ਰਾਂਸਫਰ ਨਹੀਂ ਦੇ ਸਕਦਾ ਉਹ ਇਸਤਰੀ ਨੂੰ ਇੰਗਲਿਸ਼ ਦੀ ਸਮਝ ਨਹੀਂ ਸੀ ਉਹਨੇ ਫ੍ਰੈਂਚ ਦੇ ਵਿੱਚ ਜਵਾਬ ਦਿੱਤਾ ਇਸ ਗੱਲ ਦੀ ਬਹੁਤ ਚਰਚਾ ਹੋ ਰਹੀ ਹੈ ਸਾਡੇ ਦੇਸ਼ ਦੇ ਵਿੱਚ ਇਹ ਪਹਿਲਾਂ ਵੀ ਕੱਲ ਹਲੇ ਕਿ ਬਰਕ ਦੀ ਗੱਲ ਹੋ ਰਹੀ ਸੀ ਕਿ ਤੇ ਬਰਕ ਦੀ ਪੁਲਿਸ ਨੂੰ ਉਹਨੇ ਰੋਕਿਆ ਤੇ ਕੁਇਕ ਦੀ ਤਾਂ ਪੁਲਿਸ ਅਫੀਸਰ ਅੰਗਰੇਜ਼ੀ ਸਮਝਦਾ ਹੋਇਆ ਵੀ ਅੰਗਰੇਜ਼ੀ ਨਾਲ ਬੋਲਿਆ ਉਹ ਕਹਿੰਦਾ ਫਿਰ ਮੈਂ ਅੰਗਰੇਜ਼ੀ ਛੱਡ ਕੇ ਪੰਜਾਬੀ ਬੋਲਣ ਲੱਗ ਗਿਆ ਫਿਰ ਮੈਨੂੰ ਅੰਗਰੇਜ਼ੀ 'ਚ ਦੱਸਤਾ ਜਿਵੇਂ ਵੀ ਲੱਗਿਆ ਵੀ ਇਹ ਵੀ ਅੰਗਰੇਜ਼ੀ ਤੋਂ ਪਿਆਰ ਕਰਨ ਵਾਲਾ ਬੰਦਾ ਆਪਣੇ ਬੰਦੇ ਦੁੰਜੂ ਕਰ ਲੈਂਦੇ ਆ ਫੇ ਸਾਡੇ ਇਸ ਦੇਸ਼ ਦੇ ਵਿਚ ਜਿਹੜੀ ਦੋਨੇ ਪਾਸੇ ਬੋਲਣ ਵਾਲੀਆਂ ਜਿਹੜੀਆਂ ਦੋਨੇ ਭਾਸ਼ਾਵਾਂ ਅੰਗਰੇਜ਼ੀ ਤੇ ਫ੍ਰੈਂਚ ਫ੍ਰੈਂਚੀਸੀ ਤੇ ਅੰਗਰੇਜ਼ੀ ਬੋਲਣ ਵਾਲਾ ਦੇਸ਼ ਹੈ ਦੇਸ਼ ਦੇ ਵਿੱਚੋਂ ਮਸਟ ਹੈ ਜਿਹੜਾ ਕਲਾ ਨਿਊ ਬਰੰਜ਼ਵਿਕਾ ਹੈ ਜਿਹੜਾ ਅਫੀਸ਼ੀਅਲੀ ਬਾਈਲੈਂਗੁਅਲ ਹੈ ਜਿੱਥੇ ਦੋਨੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਜਿਹੜੀਆਂ ਸਾਡੀਆਂ ਟੈਟਰੀਜ਼ ਨੇ ਯੂਕੋ ਨਾਰਥ-ਵੈਸਟ ਟੈਟਰੀਜ਼ ਤੇ ਤੇ ਨੋਨਾਵਟ ਇਹਨਾਂ ਦੇ ਵਿੱਚ ਆਫੀਸ਼ੀਅਲੀ ਜਿਹੜੀ ਦੋਨੇ ਪਛਾਵਾਵਾਂ ਬੋਲੀਆਂ ਜਾਂਦੀਆਂ ਕਿ ਬੈਕ ਵਿੱਚ ਸਿਰਫ ਤੇ ਸਿਰਫ ਫ੍ਰੈਂਚ ਬੋਲੀ ਜਾਂਦੀ ਹੈ ਤੇ ਪਰ ਉਸ ਦੇ ਸਰਕਾਰੀ ਦਫ਼ਤਰ ਨੇ ਰੈਵਨਿਊ ਕੈਨੇਡਾ ਪਾਸਪੋਰਟ ਆਫਿਸਰ ਤਾਂ ਹੋਰ ਜਿੱਥੇ ਆਮ ਲੋਕ ਆ ਸਕਦੇ ਉਹ ਅੰਗਰੇਜ਼ੀ ਬੋਲੀ ਜਾਂਦੀ ਬਾਕੀ ਸਾਰੇ ਦੇਸ਼ 'ਚ ਅੰਗਰੇਜ਼ੀ ਬੋਲੀ ਜਾਂਦੀ ਐ ਤੇ ਸਿਰਫ ਨਿਊ ਬੰਬਰਸ ਵਿੱਚ ਆਫੀਸ਼ੀਅਲੀ ਫ੍ਰੈਂਚ ਤੇ ਇੰਗਲਿਸ਼ ਐ ਤਿੰਨ ਜਿਹੜੀਆਂ ਸਾਡੀਆਂ ਟੈਰੀਟਰੀਜ਼ ਨੇ ਯੂਕਾਨਾ ਵੈਸਟ ਟੈਰੀਟਰੀਜ਼ ਤੇ ਨੋਨਾਵਟਾ ਇਹਦੇ ਵੀ ਬਾਈਲੈਂਗੁਅਲ ਐ ਆਫੀਸ਼ੀਅਲੀ ਦੋਨੇ ਅੰਗਰੇਜ਼ੀ ਤੇ ਬਾਕੀ ਜਿਵੇਂ ਆਪਣਾ ਸੂਬਾ ਅੰਗਰੇਜ਼ੀ ਬੋਲੀ ਜਾਂਦੀ ਐ ਤੇ ਇਹਦੇ ਵਿੱਚ ਬਹੁਤ ਹੈਰਾਨੀ ਹੋਈ ਲੋਕਾਂ ਨੂੰ ਕਿ ਅੰਗਰੇਜ਼ੀ ਬੋਲਣ ਵਾਲਾ ਤੇ ਅੰਗਰੇਜ਼ੀ ਭਾਸ਼ਾ ਜਵਾਬ ਦੇਣ ਵਾਲਾ ਜਸਟ ਇਨਕਲੂਡ ਹੋ ਇਹਦੇ ਵਿੱਚ ਗੇਮ ਕੀ ਖੇਲ ਗਿਆ ਲੈਂਗੁਏਜ ਬਲੰਡਰ ਦੇ ਥੱਲੇ ਅੱਜ ਖਬਰਾਂ ਛਪੀਆਂ ਕਿ ਗੱਲ ਕੀ ਹੋਈ ਆ ਜਿਹੜੇ ਅੰਗਰੇਜ਼ੀ ਬੋਲਣ ਵਾਲੇ ਕਿ ਆਜ ਗਿਆ ਇਸ ਗੁੱਸੇ ਚ ਨੇ ਉਹ ਕਹਿੰਦੇ ਸਾਡੀ ਸਾਡੀ ਇਹਦੇ ਹੋਈ ਇਹਦੇ ਵਿੱਚ ਤਿੰਨ ਕਾਰਨ ਹੋ ਸਕਦੇ ਆ ਜਾਂ ਤਾਂ ਅਣਦੇਖਿਆ ਕੀਤਾ ਗਿਆ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਦੇ ਵਿੱਚ ਪ੍ਰਧਾਨ ਮੰਤਰੀ ਕਹਿੰਦਾ ਪੀਟਰ ਬ੍ਰਾਊਨ ਟੈਰੀਓ ਮੈਨੂੰ ਫ੍ਰੈਂਚ ਚ ਪੁੱਛਿਆ ਤਾਂ ਮੈਂ ਅੰਗਰੇਜ਼ੀ ਬੋਲ ਕੇ ਦੱਸਿਆ ਉਸ ਨੂੰ ਇਹ ਤਾਂ ਮੈਂ ਤਾਂ ਇਹ ਪਰ ਗੇਮ ਖੇਲੀ ਗਈ ਹੈ ਇਹਦੇ ਵਿੱਚ ਕੁਛ ਨਾ ਕੀਤੀ ਗਈ ਪਹਿਲੀ ਤਾਂ ਗੱਲ ਇਹਦੇ ਚ ਇਹ ਕਿ ਇੱਕ ਬੈਕ ਦੇ ਵਿੱਚ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਅਣਦੇਖਿਆ ਕੀਤਾ ਗਿਆ ਹੋਰ ਵੀ ਮਿਨੋਰਟੀ ਜਿਹੜੀ ਲੈਂਗੁਏਜ ਬੋਲੀ ਜਾਂਦੀ ਹੈ ਹੋਰ ਆਪਣੀਆਂ ਪਛਾਹਾਂ ਜਿਹੜੀਆਂ ਘੱਟ ਗਿਣਤੀ ਲੋਕ ਬੋਲਦੇ ਨੇ ਉਹ ਆਪਣਾ ਨਰਾਦਰ ਇਸ ਨੂੰ ਸਮਝ ਰਹੇ ਨੇ ਮੈਂਟਲ ਹੈਲਥ ਸਰਵਿਸ ਇੱਕ ਬਹੁਤ ਵੱਡਾ ਇਸ਼ੂ ਹੈ ਉਹਦੇ ਤੇ ਪੀੜਤ ਜਾਂ ਲੱਗੀ ਅਫਗਾਨਿਸਤਾਨ ਦਾ ਬੰਦਾ ਉੱਥੇ ਬੈਠੇ ਜਿਹਨੂੰ ਘੱਟ ਹਰ ਅੰਗਰੇਜ਼ੀ ਬੋਲਣੀ ਆਉਂਦੀ ਸੀ ਉਹ ਕਹਿੰਦਾ ਮੇਰੇ ਤਾਂ ਜਮਾ ਹੀ ਪੱਲੇ ਅੰਗਰੇਜ਼ੀ ਨਹੀਂ ਪੈਂਦੀ ਮੇਰੇ ਪ੍ਰਾਪਤੀ ਮੈਂ ਪੈਂਦੀ ਹੈ ਤੇ ਜਾਂ ਫਿਰ ਕਬਿਕ ਦੇ ਵਿੱਚ ਲੋਕਾ ਨੂ ਕਿਉਂਕਿ ਐਂਡੀਪੀਅਰ ਦਾ ਉੱਥੇ ਬੋਲਵਾਲਾ ਰਹਿੰਦਾ ਤੇ ਉਹਦੇ ਚ ਹਾਲਾਂਕਿ ਆਪ ਮੰਨਿਆ ਜਸਟਨ ਟੂਡਰ ਨੇ ਕਿ ਉਸ ਦੀਆਂ ਅੰਗਰੇਜ਼ੀ ਵਿੱਚ ਜਿੰਨਾਂ ਨੇ ਫ੍ਰੈਂਚੀ ਸਮਾਂ ਰਿਹਾ ਪੜਾਉਂਦਾ ਰਿਹਾ ਤੇ ਬੌਂਸਰ ਵੀ ਰਿਹਾ ਤੇ ਉਸ ਤੋਂ ਬਾਅਦ ਵਿਸਲਰ ਦੇ ਵਿੱਚ ਵੀ ਰਿਆ ਇਸ ਨੂੰ ਉਹ ਆਪਣਾ ਘਰ ਮੰਨਦਾ ਹੈ ਅਸਲ ਇਹਦੇ ਵਿੱਚ ਕਹਾਣੀ ਇਹ ਹੈ ਕਿ Quebec ਦੇ ਲੋਕਾਂ ਨੂੰ ਦੀ ਕਹਾਣੀ ਦੀ ਕਹਾਣੀ ਦਾ ਮੁੰਡਾ 1982 ਚ Quebec ਦੀ ਅਪਰੂਵਲ ਤੋਂ ਬਿਨਾਂ ਉਸਨੇ ਕਨਸਟੀਟਿਊਸ਼ਨ ਪਾਸ ਕੀਤਾ ਰੇਸੀ ਭਾਸ਼ਾ ਜਿਹੜੀ ਨਾ ਬੋਲਣਾ ਰਿਫਿਊਜ਼ ਕਰਨਾ ਤੇ ਕਹਿਣਾ ਕਿ ਆਪਾਂ ਹੁਣ ਕਵਿਕ ਦੇ ਵਿੱਚ ਆ ਤੇ ਮੈਂ ਫ੍ਰੈਂਚ ਦੇ ਵਿੱਚ ਇਸ ਦੀ ਗੱਲ ਕਰੂੰ ਇਹ ਕਹਾਣੀ ਹੋ ਰਹੀ ਇੱਕ ਤੁਰਿਆ ਫਿਰਦਾ ਪ੍ਰਧਾਨ ਮੰਤਰੀ ਗੱਲ ਕਿਵੇਂ ਕਰ ਰਿਹਾ ਗੱਲ ਕਿਸੇ ਪਾਸੇ ਮਿਲਣ ਲਈ ਲੋਕਾਂ ਨੂੰ ਤੁਸੀਂ ਫਿਰਦੇ ਆ ਤੇ ਲੋਕਾਂ ਦੇ ਨਾਲ ਤੁਸੀਂ ਗੱਲ ਜਿਹੜੇ ਭਾਸ਼ਾ 'ਚ ਉਹਨੇ ਪੁੱਛੀ ਉਹ ਪਾਸ਼ਾ ਜਵਾਬ ਨੀ ਦੇ ਰਹੇ ਤਾ ਇਹਦੇ ਲਈ ਲੋਕ ਫਿਕਰਮੰਦ ਨੇ ਹਾਸ ਤੌਰ ਤੇ ਜਿਹੜੇ ਅੰਗਰੇਜ਼ੀ ਬੋਲਣ ਵਾਲੇ ਨੇ ਉਹਨਾਂ ਨੇ ਬਹੁਤ ਇਸ ਨੂੰ ਦੇ ਨਾਲ ਸਮਝਿਆ ਦੇਖਦੇ ਅਗਲੀ ਕਹਾਣੀ ਕੀ ਬਣੂ ਕੈਵਨੋ ਲੇਰੀ ਕੈਵਨੋ ਲੇਰੀ ਜਿਹੜਾ ਉਹ ਡ੍ਰੈਗਨਸ ਡੈਨ ਦੇ ਵਿੱਚ ਤੁਸੀਂ ਅਮੀਰ ਬੰਦਾ ਜਿਹੜਾ ਆਮ ਲੋਕ ਉੱਥੇ ਆਪਣਾ ਬਿਜ਼ਨਸ ਦੀ ਸ਼ੁਰੂ ਦੇ ਵਿੱਚ ਆਉਂਦੇ ਆ ਤੇ ਪੈਸੇ ਮੰਗਦੇ ਇਹਨੇ ਪਰਸੈਂਟ ਦੇ ਦੋ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਉਹ ਕਰਖਤ ਲੰਘਣ ਵਾਲਾ ਬੰਦਾ ਦੇ ਵਿੱਚ ਸਿਟੀ ਦੇ ਵਿੱਚ ਹੋਈ ਫ੍ਰਾਂਸੀਸੀ ਡਿਬੇਟ ਤੋਂ ਬਾਅਦ ਉਸਨੇ ਆਪਣੇ ਆਪ ਨੂੰ ਕਿਹਾ ਰੇਸ ਦੇ ਵਿੱਚ ਆਇਰਿਸ਼ ਲੈਬਨੀਜ਼ ਜਿਹੜੀ ਰੂਟਸ ਤੋਂ ਇਹ ਬੰਦਾ ਹੈ ਉਸ ਨਾਲ ਤੁਹਾਨੂੰ ਯਾਦ ਹੋਏਗਾ ਐਰਲੀਨ ਡਿਕਮਸਨ ਵੀ ਨਾਲ ਬੈਠਦੇ ਹੁੰਦੇ ਸੀ ਜਿਹੜੇ ਕੈਲਗਰੀ ਵੇਸਟ ਸੀਈਓ ਆਵੈਂਚਰ ਕਮਿਊਨੀਕੇਸ਼ਨ ਦੀ ਉਹਦੇ ਨਾਲ ਸੀਬੀਸੀ ਨੇ ਗੱਲ ਕੀਤੀ ਵੀ ਇਹਦੇ ਬਾਰੇ ਦੱਸ ਉਹ ਕਹਿੰਦੀ ਵੀ ਮੈਂ ਉਹਦੇ ਬਾਰੇ ਇਹੀ ਕਹਿ ਸਕਦੀ ਆ ਵੀ ਪੈਸਾ ਉਹਦਾ ਮੁੱਖ ਮੁੱਦਾ ਹੈ ਤੇ ਉਹ ਆਪਣੇ ਲਈ ਜਿਉਂਦਾ 7 ਸਾਲ ਮੈਂ ਉਹਦੇ ਨਾਲ ਸ਼ੋਅ ਕੀਤਾ ਕਾਫੀਆਂ ਤੇ ਚਾਹਾਂ ਤੇ ਤੇ ਉਸ ਤੋਂ ਬਾਅਦ beer ਲਈ ਵੀ ਅਸੀਂ ਬੈਠੇ ਆਂ ਗਲਾਸ ਆ ਵੀ ਬੈਠੇ ਆਂ ਉਹਦਾ ਕੋਈ ਕੁਝ ਨਹੀਂ ਲੱਗਦਾ ਪੰਜਾਬੀ ਚ ਕਹਿਣਾ ਹੋਵੇ ਪੈਸਾ ਹੀ ਉਸਦਾ 메ਨ ਕਾਰਨਾ ਤੇ ਉਹ ਕੇ ਨੰਗਨ ਦੀ ਸਮਰੱਥਾ ਰੱਖਦਾ ਉਹਦਾ ਕੁਝ ਨਹੀਂ ਬਿਜ਼ਨਸ ਉਹਦਾ ਪਰਸਨਲ ਇੱਕੋ ਇਸ਼ੂ ਹੈ ਕਿ ਪੈਸਾ ਪੈਸਾ ਪੈਸਾ ਜੇ ਮੇਰੇ ਹਿਸਾਬ ਨਾਲ 30 ਸਾਲ ਦੇ ਦੀ ਮੈਸ ਬਿਜ਼ਨਸ ਦੇ ਵਿੱਚ ਬਹੁਤ ਗਰੀਬ ਪਰਿਵਾਰ ਦੇ ਵਿੱਚੋਂ ਨਿਕਲ ਕੇ ਮੈਂ ਅੱਗੇ ਆਈ ਬਿਜ਼ਨਸ ਦਾ ਜਿਹੜਾ ਉਹ ਪਰਸਨਲ ਤੁਹਾਡਾ ਆਪਸੀ ਪਿਆਰ ਇਤਫਾਕ ਲੋਕਾਂ ਚ ਤੁਰਨਾ ਫਿਰਨਾ ਬਿਜ਼ਨਸ ਦਾ ਦੂਜਾ ਨਾਮ ਹੈ ਸੋਸ਼ਲ ਸਰਕਲ ਦੂਜਾ ਨਾਮ ਹੈ EMPLOYEES ਤੁਹਾਡੇ PARTNERS ਤੁਹਾਡੇ PUBLIC ਬੰਦੇ ਨੂੰ ਦੇਸ਼ ਦਾ ਦੂਜੇ ਬੰਨੇ ਆਪੋਜੀਸ਼ਨ ਕਦੇ ਵੀ ਹੁਣ ਲੀਡਰ ਚੁਣਦਾ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਕਹਿੰਦਾ ਉਸਨੇ ਅਰਲੀ ਨੇ ਬਹੁਤ ਜ਼ਿਆਦਾ ਜਿਹੜੇ ਸਖਤ ਸ਼ਬਦ ਵਰਤੇ ਉਹ ਕਹਿੰਦੇ ਇੱਕ ਵਾਰ ਯਾਦ ਆਸ ਮੈਨੂੰ ਹੈਲੀਫੈਕਸ ਤੋਂ ਨੇ ਉਸ ਏਰੀਏ ਦੇ ਵਿੱਚ ਥੋੜੀ ਜਿਹੀ ਜ਼ਮੀਨ ਲੈ ਕੇ ਉਹਦੇ ਵਿੱਚ ਹਰਬਸ ਤੇ ਵੈਜੀਟੇਬਲਸ ਜਿਹੜੀਆਂ ਗਾਉਣੀਆਂ ਸ਼ੁਰੂ ਕੀਤੀਆਂ ਆਰਗੈਨਿਕ ਡਰੈਸਿੰਗ ਸੈਲਡ ਡਰੈਸਿੰਗ ਤੇ ਉਸੋ ਨਾਲ ਥੋੜਾ ਜਿਹਾ ਬਿਜ਼ਨਸ ਸੀ ਉਹ 10000 ਡਾਲਰ 5% ਦੇ ਨਾਲ ਰੌਲਟੀ ਨਾਲ ਮੰਗ ਰ ਸੀ ਕਹਿੰਦੀ ਮੈਂ 10 ਸਾਰੇ ਬੱਚਿਆਂ ਤੁਸੀਂ ਵੇਖਿਆ ਹੁਣ ਡ੍ਰੈਗਨ ਡੈਨ ਜਿਹੜਾ ਅ ਅਕਸਰ ਬਹੁਤ ਹਮਦਰਦੀ ਭਰਉ ਦਾ ਵਤੀਰਾ ਹੁੰਦਾ ਸੀ ਪਰ ਇਹ ਕੈਵਨੋ ਲੈ ਰੀ ਇਹਦੇ ੱੱੱਕੇ ਚੜਿਆ ਨਹੀਂ ਬੰਦਾ ਕੋਈ ਇਹਦੇ 10-50000 ਜਿਹੜੇ ਦੇਣਾ ਉਹਦਾ 70% ਬਿਜ਼ਨਸ ਕੋਲ ਨੂੰ ਫਿਰਦਾ ਹੁੰਦਾ ਸੀ ਉਹ ਕਹਿੰਦੇ ਇਹੋ ਜਿਹਾ ਬੰਦਾ ਉਹਨੇ ਜ਼ਿਆਦਾ ਕਰਖਤ ਸ਼ਬਦ ਵਰਤੇ ਉਹ ਕਹਿੰਦੇ ਵੀ ਇਹ ਹੁਣ ਲੀਡਰਸ਼ਿਪ ਭਾਲਦਾ ਇਹ ਦੇਸ਼ 'ਚ ਜਿਹੜਾ thora ਜੇ ਕਿਸੇ ਨੂੰ 10000 ਸਕਦਾ ਜ਼ਰੂਰਤਮੰਦ ਬੰਦਿਆਂ ਨੂੰ ਤੇ ਦੇਸ਼ ਦੀ ਜਿਹੜੀ ਲੀਡਰਸ਼ਿਪ ਕਿਵੇਂ ਉਹ ਬੰਦਾ ਆਪਣੇ ਲਈ ਜੀਉਂਦਾ ਜਿਹੜਾ ਕਿਸੇ ਜਿਹੜਾ ਆਪਣੀ ਫੇਮ ਦੇ ਲਈ ਆਪਣੇ ਬਿਜ਼ਨਸ ਲਈ ਕੁਝ ਵੀ ਕਰ ਸਕਦਾ ਹੈ ਸੈਲਫ ਪ੍ਰੋਮੋਟਰ ਹੈ ਇੰਟੈਲੀਜੈਂਟ ਹੈਗਾ ਅ ਅਰਲਿੰਕੈਨੀ ਵੀ ਬਹੁਤ ਮਸਖਰ ਹੈ ਮੈਂ ਉਸ ਨਾਲ ਬੈਠ ਕੇ ਖੁਸ਼ੀ ਵੀ ਹੁੰਦੀ ਰਹੀ ਪਰ ਇੰਟੈਲੀਜੈਂਟ ਹੈ ਸੈਲਫ ਪ੍ਰੋਮੋਟਰ ਹੈ ਉਸ ਤੋਂ ਬਾਅਦ ਸਭ ਤੋਂ ਵੱਡਾ ਮੌਕਾ ਪਾਲਣ ਵਾਲਾ ਬੰਦਾ ਹੈ ਸਵਾਰਥੀ ਹੈ ਬਹੁਤ ਇਦਾਂ ਨੂੰ ਪਾਵਰ ਤੇ ਜਿਹੜਾ ਪੋਲਿਟੀਕਲ ਸਿਸਟਮ ਦੇ ਵਿੱਚ ਬੜ ਫਿਰਦਾ ਜੇ ਉਹਦੇ ਦਿਲ ਦੇ ਵਿੱਚ ਹਮਦਰਦੀ ਨਹੀਂ ਹੈ ਕਿਸੇ ਦੀ ਇਕੁਐਲਟੀ ਦੀ ਜੇ ਤੋਂ ਜੇ ਕਰਖਤ ਬੰਦਾ ਉਹਨਾਂ ਸਾਰਿਆਂ 'ਚ ਬੈੰਦਾ ਉਹ ਡ੍ਰੈਗਨ ਲੈ ਰਹੀ ਹੈ ਬੈੰਦਾ ਰਿਹਾ ਜਿਹੜਾ ਉਹ ਹੁਣ ਉਹ ਕੰਜ਼ਰਵੇਟਿਵ ਦੀ ਲੀਡਰਸ਼ਿਪ ਚ ਬਣਨਾ ਕਰਨਾਂ ਕੱਖ ਨਹੀਂ ਇਹਨੇ ਵੈਸੇ ਉਈਆਂ ਰਹਿ ਚਿੱਟਿਆ ਇਹ ਬਾਕੀ ਜ਼ਿਆਦਾ ਜਿਹੜੀਆਂ ਅਗਲੀ ਜਿਹੜੀ ਲਾਈਨ ਹੈ ਉਹਦੇ ਵਿੱਚ ਡਾਕਟਰ ਲੀਚ ਹੈ ਰਿਸ ਲਕਜ਼ੈਂਡਰ ਉਹਨਾਂ ਦੇ ਨਾਮ ਜਿਹੜੇ ਨੇ ਅਗਲੀਆਂ ਜਗ੍ਹਾ ਬੋਲਦੇ ਨੇ ਤੇ ਇਹ ਬਾਕੀ 12 14 ਨੇ ਹੌਲੀ ਹੌਲੀ ਸੁਲ੍ਹਾ ਕਰਕੇ ਬਹਿ ਜਾਂਦੇ ਹੁੰਦੇ ਤੂੰ ਮੈਨੂੰ ਆਹ ਦੇ ਮੈਂ ਤੈਨੂੰ ਆਹ ਦੇ ਇਹ ਕਰਦੇ ਕਰਦੇ ਕਰਦੇ ਗੱਲ ਠੀਕ ਆ ਜਾਂਦੀ ਹੁੰਦੀ ਅਸਲ ਕਹਾਣੀ ਇਹ ਹੈ ਅਗਲੇ ਹਿੱਸੇ ਦੇ ਵਿੱਚ ਹੁਣ ਜਿਹੜਾ ਲੋਕਾ ਦੇ ਵਿੱਚ ਉਹਨਾਂ ਨੇ ਉੱਤਰਨਾ ਲੋਕਾਂ ਤੋਂ ਵੋਟਾਂ ਜਿਹੜੀਆਂ ਮੰਗਣੀਆਂ ਕੰਸਟਿਟੂਐਂਸੀਜ਼ ਦੇ ਵਿੱਚੋਂ ਸੌਰੀ ਰਾਈਡਿੰਗਸ ਦੇ ਵਿੱਚੋਂ ਲੋਕ ਜਾਣਗੇ ਇਹ ਦੇਸ ਤੋਂ ਅੱਗੇ ਫਿਰ ਲੀਡਰਸ਼ਿਪ ਦੀ ਰੇਸ ਦੇ ਵਿੱਚ ਕੌਣ ਜਿੱਦਾ ਕੰਜ਼ਰਵੇਟਿਵ ਲਈ ਉਹਦਾ ਪਤਾ ਲੱਗੂ ਹੁਣ 12 14 ਇਹ ਦੀਪਕ ਅਵਰਾਏ ਵੀ ਖੜਾ ਸੀ ਮਫਲਰ ਪਾਈ ਵਿੱਚ ਵਿਪਾਰਕ ਸੰਦੇਸ਼ ਬਾਲਾਵਦੀ ਕੇ ਬਾਈਮੈਂਟ ਹੋਇਆ ਜੀ ਭਾਰਤੀ মিডিਏ ਬਾਰੇ ਕੁਝ ਇੱਕ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜਾ মিডিਆ ਹੈ ਉਹਦੇ ਜੜਾ ਕਿੱਥੇ ਹੈ ਉਹਨੂੰ ਚਲਾਉਣ ਵਾਲੇ ਉਹਦੇ ਮੇਨ ਐਂਕਰ ਜਿਹੜੇ ਪ੍ਰੋਡਿਊਸਰ ਨੇ ਉਹ ਕੌਣ ਨੇ ਹਿੰਦੁਸਤਾਨ ਟਾਈਮਜ਼ ਇੱਕ ਸਭ ਤੋਂ ਵੱਧ ਪੜਿਆ ਜਾਣ ਵਾਲਾ ਪੇਪਰ ਹੈ ਸ਼ੋਭਨਾ ਭਾਰਤੀ ਹੈ ਜਿਹੜੀ ਓਨਰ ਤੇ ਐਡੀਟਰ ਇਨ ਚੀਫ ਹਿੰਦੁਸਤਾਨ ਟਾਈਮ ਦੀ ਹੈ ਉਹ ਕਾਂਗਰਸ ਐਮਪੀ ਹੈ ਰਾਜ ਸਭਾ ਦੀ ਵਿਨੋਦ ਸ਼ਰਮਾ ਹਿੰਦੁਸਤਾਨ ਟਾਈਮ ਦਾ ਪੋਲਿਟਿਕਲ ਅਫੇਅਰਜ਼ ਐਡੀਟਰ ਹੈ ਜਿਹੜਾ ਕਿ ਕਾਂਗਰਸ ਦਾ ਸਪੋਕਸਮੈਨ ਹੈ ਸਾਰੇ ਟੀਵੀ ਪੈਨਲ ਡਿਸਕਸ਼ਨ ਤੇ ਉਸ ਤੋਂ ਬਾਅਦ ਹੁਣ ਉਸਦੇ ਮਨਚੇ ਹੈ ਕਿ ਜਦ ਉਸ ਦਾ ਬੌਸ ਸਭਾ ਦਾ ਮੈਂਬਰ ਹਟ ਜੂ ਤੇ ਮੈਂ ਬਣਾਂ ਬਰਖਾ দত্ত ਤੇ ਵੀਰ ਸਿੰਘ ਵੀ ਕਾਂਗਰਸ ਦੇ ਲਈ ਬਹੁਤ ਐਡੀਟੋਰੀਅਲ ਲਿਖਦੇ ਰਹੇ ਇਲੈਕਟ੍ਰੋਨਿਕ মিডিਏ ਦੇ ਤੌਰ ਤੇ ਜਾਂਦੇ ਰਹੇ ਹਿੰਦੁਸਤਾਨ ਟਾਈਮ 'ਚ ਲਿਖਦੇ ਰਹੇ ਦੋਨਾਂ ਨੂੰ ਪਦਮਸ਼ਰੀ ਦੇ ਅਵਾਰਡ ਨਰੂਡ ਅਨੈਸਟੀਬਲੋਂ ਤੇ ਕਾਂਗਰਸ ਪਾਰਟੀ ਬਲੋਂ ਮਿਲੇਗਾ ਉਹਦੇ ਬਾਅਦ ਐਨਡੀ ਟੀਵੀ ਦੇ ਪ੍ਰੋਮੋਟਰ ਨੇ ਜਿਹੜੇ ਰੈਨੋਇ ਰੌਏ ਤੇ ਰਾਜਕਾਲੀ ਸਿਸਟਰ ਬ੍ਰਿੰਦਾ ਕਰਾਇਤ ਹੈ ਜਿਹੜੀ ਉਹ ਫੇਮਸ ਸੀਪੀਐਮ ਲੀਡਰ ਤੇ ਬ੍ਰਿੰਦਾ ਦਾ ਜਿਹੜਾ ਹਸਬੰਦ ਘਰ ਵਾਲਾ ਹੈ ਪ੍ਰਕਾਸ਼ ਕਰੱਟ ਉਹ ਕਮ ਅਰਬਕ ਸਰਬਕ ਲਿਖਦੇ ਹੀ ਰਹੀ ਉਰਨ ਜਿਹੜੀ ਅਰੰਦਤੀ ਰੁਆਏ ਹੈ ਉਹ ਉਹਦੀ ਫਸਟ ਕਜ਼ਨ ਹੈ ਦੇਖੋ ਤੁਸੀਂ ਕਿਵੇਂ ਸਾਰੀਆਂ ਦੀ ਬਰਕਤ ਅੱਤ ਦੀ ਰਿਐਲਿਟੀ ਇਹ ਹੈ ਕਿ ਉਹ ਬਹੁਤ ਐਕਸ਼ਨਾਂ ਦੇ ਵਿੱਚ ਉਸ ਨੂੰ ਲੱਭਿਆ ਗਿਆ ਇੱਕ ਵਾਰ ਜਦ ਗੁਜਰਾਤ ਦੇ ਵਿੱਚ ਜਿਹੜੇ ਗੋਧਰਾ ਕਾਂਡ ਹੋਇਆ ਉਸ ਸਮੇਂ 사ウਦੀ ਅਰਬ ਤੋਂ ਪੈਸੇ ਲੈਣ ਦੀ ਗੱਲ ਚੱਲੀ ਸੀ ਕਿ ਤਾਹ ਐਸਓਆਰਸ ਦੇ ਵਿੱਚ ਜਿਹੜੇ ਰਾਇਟਸਸ ਨੂੰ ਕਹਿੰਦੇ ਆ ਕਿ ਉਹਦੇ ਵਿੱਚ ਹਿੰਦੂਆਂ ਦੀ ਵੀ ਮੌਤ ਹਿੰਦੂਆਂ ਦੀ ਗੱਲ ਨਹੀਂ ਕਰਨੀ ਉਹਦੇ ਵਿੱਚ ਐਨਡੀਟੀਵੀ ਦੀ ਸੋਨੀਆ ਸਿੰਘ ਜਿਹੜੀ ਉੱਤਰ ਪ੍ਰਦੇਸ਼ ਦੇ ਕਾਂਗਰਸ ਐਮਪੀ ਦੀ ਘਰ ਵਾਲੀ ਹੈ ਯੂਨੀਅਨ ਮਨਿਸਟਰ ਤੇ ਆਰਪੀਐਨ ਸਿੰਘ ਦੀ ਘਰ ਹੈ ਉਹ ਐਨਡੀਟੀਵੀ ਜਲਦੀ ਦੇ ਨਾਲ ਤਰੱਕੀ ਤੇ ਦੋਨੇ ਵੀ ਆਂ ਐਨਡੀਟੀਵੀ ਦੀ ਨਦੀ ਰਾਜਦਾਨ ਜਿਹੜੀ ਓ ਹੁਣ ਗਰਲਫ੍ਰੈਂਡ ਦਾ ਉਮਰ ਅਬਦੁੱਲਾ ਦੀ ਉਮਰ ਨੇ ਪਹਿਲੀ ਘਰਵਾਲੀ ਤੇ ਜਿਹੜੇ ਉਹਦੇ ਦੋ ਬੱਚੇ ਸੀ ਉਸ ਤੋਂ ਬਾਅਦ ਹੁਣ ਨਦੀ ਰਾਜਦਾਨ ਇਕੱਠੇ ਸੀਐਨਐਨ ਆਈਬੀਐਨ ਜਿਹੜੀ ਰਾਜੀਪ ਸਰਦਸਾਈ ਦੀ ਘਰਵਾਲੀ ਤੇ ਕੋ ਪ੍ਰੋਮੋਟਰ ਸੀਐਨਐਨਆਈਬੀਐਮ ਦੀ ਸੰਗਰੀਕਾ ਗੋਸ਼ ਜਿਹੜੀ ਐਂਕਰ ਕਰਦੀ ਹੈ ਫੇਸ ਦਾ ਨੇਸ਼ਨ ਤੇ ਫੇਮਸ ਜਰਨਲਿਸਟ ਹੈ ਇਹ ਵੀ ਕਾਂਗਰਸ ਵਾਲੇ ਪਾਸੇ ਹੈ ਸੰਗਰੀਕਾ ਦਾ ਪਿਤਾ ਜਿਹੜਾ ਭਾਸਕਰ ਗੋਸ਼ ਸਰਕਾਰੀ ਭਾਰਤੀ ਦੂਰਦਰਸ਼ਨ ਪ੍ਰਚਾਰ ਪ੍ਰਸਾਰ ਭਾਰਤੀ ਉਹਦਾ ਉਹ ਮੇਨ ਰਹਿ ਚੀਫ ਭਾਸਕਰ ਗੋਸ਼ ਜਿਹੜਾ ਨੇਰੂ ਦੇ ਨਸਤੀ ਨੇਰੂ ਪਰਿਵਾਰ ਦਾ ਚਪਲੀ ਝਾੜ ਰਿਹਾ ਬਹੁਤ ਚ ਜਿਹੜੀ ਸੰਗਰੀਕਾ ਦੀ ਅਗਲੀ ਫੈਮਲੀ ਹੈ ਉਹਦੀ ਚਾਚੀ ਰੂਮਾ ਪਾਲ ਸੁਪਰੀਮ ਕੋਰਟ ਦੇ ਜਸਟਿਸ ਹੈ ਨੇਰੂ ਦੇ ਨੇੜੇ ਤੇ ਇਸ ਤੋਂ ਅੱਗੇ ਸੀਐਨਐਨ ਆਈਬੀਐਨ ਦੀ ਮੀਡੀਆ ਪਰਸਨੈਲਿਟੀ ਹਿੰਦੁਸਤਾਨ ਟਾਈਮ ਲਿਖਦਾ ਕਰਨ ਥਾਪ ਨੇਡੂ ਫੈਮਲੀ ਦੇ ਸਭ ਤੋਂ ਕਲੋਜ਼ ਇਹ ਪਰਿਵਾਰ ਹੈ ਬੰਦਾ ਸਾਪਰ ਫੈਮਲੀ ਬਹੁਤ ਹਾਈ ਪ੍ਰੋਫਾਈਲ ਫੈਮਲੀ ਰਹੀ ਹੈ ਆਂ ਇੰਡੀਆ ਦਾ ਆਰਮੀ ਚੀਫ 1962 ਦੇ ਲਈ ਦੇ ਵੇਲੇ ਚੀਨਾ ਦੀ ਜੰਗ ਨਾਲ ਜਨਰਲ ਪੀ ਐਨ ਥਾਪਰ ਜਿਹੜਾ ਕਿ ਬਰਧਨ ਲਾ ਹੈ ਨਯੰਤਰਾ ਸੈਗਲ ਦਾਤੋਗਾ ਡਾਕਟਰ ਬੀਜਲక్ష్ਮੀ ਜਨਰਲ ਥਾਪਰ ਦਾ ਬੇਟਾ ਜਿਹੜਾ ਕਰਨ ਥਾਪਰ ਤੇ ਜਦੋਂ ਥਾਪਰ ਦੀ ਭੈਣ ਰੋਮਲਾ ਥਾਪਰ ਜਿਹੜੀ ਜਵਾਲਲਾਲ ਨਹਿਰੀ ਯੂਨੀਵਰਸਿਟੀ ਦੇ ਵਿੱਚ ਇੱਕ ਸਟੋਰੀਅਨ ਹੈ ਤੇ ਜਿਹੜੇ ਨੈਕਸਟ ਮਾਰਕ ਮਾਰਕ ਸਵਾਦ ਤੇ ਇਹ ਦਾ ਗੰਡਾ ਬਹੁਤ ਕਰਦੇ ਰਹੇ ਆ Hindu ਦਾ Hindu ਐਨ ਰਾਮ ਤੇ ਐਡੀਟਰ ਉਹਨਰ ਤੇ ਐਡੀਟਰ ਚੀਫ ਫਰਵਰੀ 2012 ਤੱਕ ਵਾਈਸ ਪ੍ਰੈਜ਼ੀਡੈਂਟ ਰਿਆ ਸਟੂਡੈਂਟ ਫੋਰੇਸ਼ਨ ਆਫ ਇੰਡੀਆ ਦਾ ਸੀਪੀਐਮਬੀਓ ਸਟੂਡੈਂਟ ਵਿੰਗ ਸੀ ਗੱਲ ਕੀ ਕੋਈ ਵੀ ਇਹ ਜਆ ਨਿਊਜ਼ ਤੇ ਜਾਂ ਕੋਈ ਪੱਤਰ ਜਾਂ ਪੇਪਰ ਜਾਂ ਟੀਵੀ ਜਿਹੜਾ ਚੈਨਲ ਨਹੀਂ ਜਿਸ ਦੇ ਮਾਲਕਾਂ ਦਾ ਰਾਜਸੀ ਤਾਣਾ ਬਾਣਾ ਨਾ ਹੋਵੇ ਨਿਊਜ਼ 24 ਹਿੰਦੀ ਮੀਡੀਆ ਚੈਨਲ ਜਿਹਨੂੰ ਔਨ ਕਰਦਾ ਐਕਸ ਜਰਨਲਿਸਟ ਐਡੀਟਰ ਅਜੀਬ ਸ਼ਕਲਾ ਫੇਮਸ ਕਾਂਗਰਸ ਐਮਪੀ ਰਾਜ ਸਭਾ ਦਾ ਜੂਨੀਅਰ ਮਿਸਟਰ ਇੰਡਸਟਰੀਅਲਿਸਟ ਲੋਕਮਤ ਇੱਕ ਚੱਲਦਾ ਮਰਾਠੀ ਦਾ ਨਿਊਜ਼ਪੇਪਰ ਹੈ ਮਹਾਰਾਸ਼ਟਰਾ ਚ ਜਿਹਦਾ ਉਹਨਾਂ ਤੇ ਐਡੀਟਰ ਚੀਫ ਵਿਜੇ ਦਰਦਾ ਕਾਂਗਰਸ ਦਾ ਐਮਪੀ ਐ ਰਜਿੰਦਰ ਦਰਦਾ ਕਾਂਗਰਸ ਐਮਐਲਏ ਮਹਾਰਾਸ਼ਟਰਾ ਤੋਂ ਆ। ਤੋਂ ਇੱਕ ਇੱਕ ਕਹਾਣੀ ਨਹੀਂ ਹੈ ਮਹਿਰੂ ਪਰਿਵਾਰ ਦੇ ਸਭ ਤੋਂ ਨੇੜੇ ਦਾ مالک ਜਿਹੜੇ ਨੇ ਦੇ ਐਨਡੀਟੀਵੀ ਦੇ ਆ ਸਾੰਪ ਕੇ ਜਿਹੜਾ ਇਹਨਾਂ ਨੂੰ ਪੈਸੇ ਕਿੱਥੋਂ ਆਉਂਦੇ ਐ ਐਨਡੀਟੀਵੀ ਜਿਹੜਾ ਬਹੁਤ ਟੀਵੀ ਨਿਊਜ਼ ਮੀਡੀਆ ਇਹਨੂੰ ਇੱਕ ਚੈਰਿਟੀ ਜਿਹੜੀ ਸਪੇਨ ਦੀ ਐ ਕਰਦੀ ਐ ਉਹ ਇਸ ਪੈਸੇ ਭੇਜਦੀ ਇਸ ਕਰਕੇ ਹੀ ਥੋੜਾ ਜਿਹਾ ਪਾਕਿਸਤਾਨ ਵਾਲੇ ਪਾਸੇ ਰਹਿੰਦਾ ਕਿਉਂਕਿ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਨੇ ਇਨਾ ਨੂੰ ਇੱਕ ਚੈਨਲ ਚਲਾਉਣ ਦੇ ਲਈ ਪਾਕਿਸਤਾਨ ਦੇ ਵਿੱਚ ਇਜਾਜ਼ਤ ਹੁਣੇ ਦਿੱਤੀ ਹੈ ਇੰਡੀਅਨ ਜਿਹੜਾ ਸਾਡਾ ਇਹ ਐਨਡੀਟੀਵੀ ਦਾ ਸੀਈਓ ਹੈ ਦਨੋ ਅਰੋਏ ਇਹ ਜਿਹੜਾ ਨਾਲ ਦਾ ਭਾਈ ਪ੍ਰਕਾਸ਼ ਕਾਰ ਜਿਹੜਾ ਕਿਹਾ ਦੋਨੇ ਆਸ ਵਿੱਚ ਸਾਧੂ ਨੇ ਇੰਡੀਆ ਟੂਡੇ ਨੈਸ਼ਨਲ ਵੀਕਲੀ ਜਿਹੜਾ ਜਿਹਨੇ ਬੀਜੇਪੀ ਨੂੰ ਸਪੋਰਟ ਕੀਤਾ ਹੁਣ ਉਸ ਨੂੰ ਐਨਡੀਟੀਵੀ ਨੇ ਖਰੀਦ ਲਿਆ C&NBN 100% funded Southern Baptist Church ਤੇ ਜਿਹੜੀਆਂ ਬ੍ਰਾਂਚਾਂ ਨੇ ਸਾਰੀ ਦੁਨੀਆ ਦੇ ਵਿੱਚ ਹੈੱਡਕੁਆਟਰ ਅਮਰੀਕਾ 'ਚ ਹੈ 800 ਮਿਲੀਅਨ ਦੇ ਕਰੀਬ ਇਹ ਆਪਣੇ ਚੈਨਦਲਾਂ ਦੇ ਲਈ پیسے ਖਰਚਦੇ ਟਾਈਮਸ ਗਰੁੱਪ ਲਿਫਟਾ ਜਿਹੜੀ ਉਹਨਾਂ ਦੀ ਸੁਣ ਲਓ ਟਾਈਮਸ ਆਫ ਇੰਡੀਆ ਮਿਡਡੇ ਨਾਪਾਰਟਸ napa times stardust femina biz times bize karnatka times now 24 hours news channel there many more times group the times group you know ਜਿਹੜਾ ਸਭ ਤੋਂ ਕਲੋਜ਼ ਦੋਸਤ ਹੈ ਸੋਨੀਆ ਗਾਂਧੀ ਦਾ ਓ ਇਸ ਦੇ ਵਿੱਚ ਮੇਨ ਪੈਸੇ ਲਾਉਂਦਾ ਸਟਾਰ ਟੀਵੀ ਆਸਟ੍ਰੇਲੀਅਨ ਇਹਨੂੰ ਕਰਦਾ ਉਸ ਤੋਂ ਬਾਅਦ ਜਿਸਨੂੰ ਸ਼ੋਭਨਾ ਪਾਤੀ ਮੈਂ ਤੁਹਾਨੂੰ ਦੱਸਿਆ ਉਸਨੇ ਟੇਕਓਵਰ ਕੀਤਾ ਤੇ ਨਾਲ ਇਸ ਦੀ ਗੱਲਬਾਤ ਚੱਲ ਰਹੀ ਹੈ ਕਿ ਇਕੱਠੇ ਹੋਣ ਵਾਲੇ ਨੇ ਦਾ ਇੰਗਲਿਸ਼ ਡੇਲੀ 125 ਸਾਲ ਪਹਿਲਾਂ ਜਿਹੜਾ ਸ਼ੁਰੂ ਹੋਇਆ ਅਖਬਾਰ ਹੈ ਉਸ ਨੂੰ ਸਵਿਟਜ਼ਰਲੈਂਡ ਨੇ ਲਿਆ ਤੇ ਐਨ ਰਾਮ ਦੀ ਘਰ ਵਾਲੀ ਹੈ ਜਿਹੜੀ ਜਿਹੜਾ ਇਹਦਾ ਮਾਲਕ ਨੈਸ਼ਨਲ ਇੰਡੀਅਨ ਐਕਸਪ੍ਰੈਸ ਦੋ ਗਰੁੱਪਾਂ ਚੱਲ ਗਿਆ ਨਿਊ ਇੰਡੀਅਨ ਐਕਸਪ੍ਰੈਸ ਸੋਦਰਨ ਡੀਟ ਐਡੀਸ਼ਨ ਆ ਏਸੀਪੀਐਸ ਮੇਜਰ ਸ਼ੇਅਰ ਨੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਸਟੇਸਮੈਨ ਜਿਸ ਨੂੰ ਕਮਿਊਨਿਸਟ ਪਾਰਟੀ ਆਫ ਇੰਡੀਆ ਜਿਹੜੀ ਉਹ ਹੌਲ ਕਰਦੀ ਹੈ ਏਸ਼ੀਅਨ ਏਜ ਅਰਬ ਦੀ ਕੰਪਨੀ ਅਕਬਰ ਕਰਦੀ ਹੈ ਗੁਜਰਾਤ ਰਾਇਟ ਜਿਹੜੇ 2002 ਚ ਹੋਏ ਸੀ ਜਿਹਦੇ ਵਿੱਚ Hindu ਲੋਕ ਵੀ ਮਾਰੇ ਗਏ ਰਾਜੀਵ ਰਾਜੀਵ ਸਰਦਸਾਈ ਤੇ ਵਰਖਾ ਐਨ ਡੀ ਪੀ ਵੀ ਉਸ ਸਮੇਂ ਕੰਮ ਕਰਦੇ ਸੀ ਉਹਨਾਂ ਨੂੰ 5 ਮਿਲੀਅਨ ਡਾਲਰ ਸਾਊਦੀ ਅਰਬ ਤੋਂ ਮਲੇ ਜਿਨ੍ਹਾਂ ਨੇ ਸਿਰਫ ਤੇ ਸਿਰਫ ਮੁਸਲਮ ਨੇ ਜਿਹੜੇ ਉਹ ਕਵਰ ਕੀਤੇ ਸਿੰਧੂਆਂ ਬਾਰੇ ਕੋਈ ਗੱਲ ਨਹੀਂ ਉਹਦੇ ਵਿੱਚ ਕੀਤੀ ਗਈ ਇਹ ਆ ਮੀਡੀਆ ਉੱਥੇ ਦਾ ਜਿਹਨੂੰ ਅਸੀਂ ਇੱਥੇ ਵੀ ਦੇਖਦੇ ਆ ਪੈਸੇ ਦੇ ਦੇ ਕੇ ਇਹ ਮੀਡੀਆ ਨੇ ਕੀ ਤਰਫਦਾਰੀ ਕਰਨੀ ਤਿੰਨ ਦਿਨ ਪ੍ਰਾਣੀ ਬ੍ਰੇਕਿੰਗ ਨਿਊਜ਼ ਹੈ ਤੇ ਦਿਖਾਈ ਜਾਂਦੀ ਹੈ ਬ੍ਰੇਕਿੰਗ ਨਿਊਜ਼ ਪਤਾ ਨਹੀਂ ਕਿੱਥੋਂ ਉਹ ਸ਼ਬਦ ਕੱਢਦੇ ਆ ਕਿੱਥੋਂ ਉਹ ਗੱਲਾਂ ਲੈ ਕੇ ਆਉਂਦੇ ਆ ਇਹ ਮੀਡੀਆ ਦੀ ਅਸਲ ਖਸਲਤ ਹੈ ਆਹਾ ਕੁਸ਼ੇ ਕਹਾਣੀ ਇਹ ਹੈ ਵਰਖਾ দত্ত ਵੀ ਹੁਣ ਕਿਸੇ ਨੂੰ ਡਰਾਉੂ ਹੈ ਸ਼ਾਇਦ ਕੋਈ ਜਿਹੜਾ ਉਸ ਡੇਟਿੰਗ ਕਰ ਰਹੀ ਹੈ ਅੱਜਕੱਲ ਉਹਦੇ ਨਾਲ ਰਹਿੰਦੀ ਹੈ ਉਹ ਕਸ਼ਮੀਰ ਦਾ ਹੀ ਮੁਸਲਮਾਨ ਹੈ ਉਹ ਉਮਰ ਅਬਦੁੱਲਾਹ ਜੀ ਤੁਸੀਂ ਸੁਣ ਹੀ ਸਕਿਓ ਦੋਨੇ ਐਨਡੀ ਟੀਵੀ ਦੇ ਜਾਂ ਸਟਾਰ ਐਂਕਰਸ ਦੇ ਇਹਨਾਂ ਨੂੰ ਭਾਲਦੇ ਕੀ ਹਾਂ ਲੋਕ 1.5 ਅਰਬ ਦੇ ਲੋਕ ਇਹਨਾਂ ਨੂੰ ਵੇਖਦੇ ਘਰ-ਘਰ ਦੇ ਵਿੱਚ ਕੇਵਲ ਦੇ ਕੇ ਤੇ 30 ਚੈਨਲ ਆਉਂਦੇ ਆ ਕਮਲੀ ਕੀਤੀ ਪਈ ਐ ਅੱਧੇ ਨਿਊਜ਼ ਚੈਨਲਾਂ ਤੇ ਅੱਧੇ ਜਿਹੜੇ ਸੀਰੀਅਲ ਹੁਣ ਕਿਹਜਾ ਬਾਇਸ ਹੈ ਪੰਜਾਬ ਪੇਪਰ ਨੇ ਉਹਨਾਂ ਦੀ ਮਲਕੀਅਤ ਹੈ ਜਿਹੜੀ ਉਹ ਤੁਹਾਨੂੰ ਪਤਾ ਹੀ ਹੈ ਕਿ ਅਜੀਤ ਹਮਦਰਦ ਜਿਹੜਾ ਵਕੀਲ ਲਿਖਦਾ ਰਿਹਾ ਕਿ ਕੋਈ ਸਮਾਂ ਸੀ ਜਦ 70 ਤੋਂ 92 ਤੱਕ ਦੇ ਪੇਜ ਦੇ ਇਸ਼ਤਿਆਰ ਫਲਾਣੇ ਸਿੰਘ ਦੀ ਸ਼ਹੀਦੀ ਤੇ ਭੋਗ ਤੇ ਅੰਤਮ ਅਰਦਾਸ ਤੇ ਉਹ ਹੁਣ ਬੜਾਂਗਾ ਕੰਮ ਤੇ ਲੱਗਿਆ ਹੈ। ਟ੍ਰਿਬਿਊਨ ਨੇ ਬਹੁਤ ਪੱਖਪਾਤੀ ਜਿਹੜੀ ਭੂਮਿਕਾ ਨਿਭਾਈ ਹੈ। ਦਇਆ ਸਿੰਘ ਮਜੀਠੀਆ ਤੋਂ ਆ ਰੀਆਂ ਦਾ ਇਹ ਪੇਪਰ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਇਦੇ ਵਿੱਚ ਪ੍ਰੇਮ ਪਾਟੀਏ ਵਰਗੇ ਉਸ ਤੋਂ ਬਾਅਦ ਕਮਲ ਸੰਧੂ ਵਰਗਿਆਂ ਨੇ ਐਂਟੀ ਸਿੱਖ 엘ਮੈਂਟਸ ਹੁੰਦੇ ਆ ਬਹੁਤ ਕੁਛ ਸਿਕਸ ਅਗਸਤ ਦੇ ਸਮੇ ਸਾਡੇ ਖਿਲਾਫ ਝੋਕ ਕੇ ਲਿਖਿਆ ਤੇ ਵੀ ਉਹਨਾਂ ਨੇ ਇਹਨਾਂ ਕਰਨ ਲਈ ਦੱਸਿਆ ਸੀ ਕਿ ਸੰਸਥਾ ਜਿਵੇਂ ਦੀ ਕਿਤਾਬਾਂ ਦੇ ਵਿੱਚ ਹੈ ਉਹ ਸੰਸਥਾ ਕਿਵੇਂ ਕੰਟਰੋਲ ਕਰਦੀ ਰਹੀ ਉਹਦੇ ਲਈ ਕਿੰਨੇ ਪੈਸੇ ਸੈਂਟਰ ਤੋਂ ਆਉਂਦੇ ਰਹੇ ਤੇ ਉਹ ਕਿਸ ਤਰ੍ਹਾਂ ਜਰਨਲਿਸਟਾਂ ਨੂੰ ਸੱਦ ਕੇ ਰੋਟੀਆਂ ਪਾਣੀਆਂ ਪਾਣੀ ਖਲੌਂਦੇ ਰਹੇ ਤੇ ਕਿਵੇਂ ਉਸ ਸਮੇਂ ਦੇ ਗਵਰਨਰ ਦੇ ਘਰੇ ਆਲੂ ਵਾਲੀਆਂ ਜਿਹੜਾ ਗੁਰੂਗ੍ਰਾਂਥ ਸਾਹਿਬ ਯੂਨੀਵਰਸਿਟੀ ਦਾ ਚਾਂਸਲਰ ਬਣਾਇਆ ਬਲਾਤਕਾਰੀ ਬੰਦਾ ਉਹ ਕਿਵੇਂ ਦੂਜੇ ਪੱਤਰਕਾਰਾਂ ਰਿਹਾ ਉੱਥੇ ਕੀ ਕੁਝ ਹੁੰਦਾ ਰਿਹਾ ਕਿ ਸਾਡੇ ਪੱਖ ਦੀਆਂ ਖਬਰਾਂ ਲਾਓ ਤੇ ਹੁਣ ਮੇਨ ਉੱਥੇ ਦੇ ਪੀਟੀਸੀ ਆ ਜਾਂ ਏਟੀਐਨ ਇੱਥੇ ਵੀ ਚੱਲਦੇ ਉਹਨਾਂ ਨਿਊਜ਼ ਤੇ ਵਿੱਚ ਸਾਰੀਆਂ ਕਾਂਗਰਸ ਦੀ ਖਬਰ ਹੋਊ ਅਕਾਲੀ ਦੀ ਖਬਰ ਹੋਊ ਤੇ ਕਦੇ ਵੀ ਆਮ ਆਦਮੀ ਪਾਰਟੀ ਦਾ ਇਕੱਠ ਗੱਲ ਹੈ ਜਿਹੜੀ ਉਹ ਲੋਕਾਂ ਨੂੰ ਹੁਣ ਦੁਖੀ ਕਰ ਰਹੀ ਹੈ ਇੱਥੇ ਸ਼ਾਮ ਨੂੰ ਤੁਸੀਂ ਬਹਿਨੇ ਹੋ ਘੰਟੇ ਸਤਿ ਅਕਾਲ ਨਿਊਜ਼ ਆਉਂਦਾ ਆਉਂਦੀ ਘੰਟਾ ਉਹ ਲੱਗੇ ਰਹਿੰਦੇ ਆ ਉਹਦੇ ਵਿੱਚ ਸਾਰੀਆਂ ਇਵਨ ਨਾਮ ਪੇਪਰ ਵੀ ਕਦੇ ਕਾਂਗਰਸੀ ਦਿਖਾਤੇ ਕਰੇ ਅਕਾਲੀ ਦਿਖਾਤੇ ਆਮ ਆਦਮੀ ਪਾਰਟੀ ਨੇ ਵੀ ਪੇਪਰ ਭਰੇ ਨੇ ਸਾਰੀਆਂ ਸੀਟਾਂ ਤੇ ਇੱਕ ਵੀ ਕੈਂਡੀਡੇਟ ਨਹੀਂ ਦਿਖਾਇਆ ਉਹ ਉਸ ਤੋਂ ਬਾਅਦ ਉਹਨਾਂ ਦੇ 81 ਵੋਟਰਾਂ ਦੇ ਠੀਕ ਹੈ ਜੇ ਕਿ ਸਿਰਫ 10 ਕਿਲੋਮੀਟਰ ਦਾ ਆਮ ਆਦਮੀ ਪਾਰਟੀ ਦਾ ਵਾਸੀ ਮੰਨ ਲੈਂਦੇ ਨਵੀਂ ਪਾਰਟੀ ਆ 5 ਕਿਲੋਮੀਟਰ 5 ਦਿਖਾਉਣਾ ਫਰਜ਼ ਹੈ ਇੱਕ ਪੱਤਰਕਾਰੀ ਇਕ ਕਾਲੀ ਲਿਖਣ ਵਾਲੇ ਤੇ ਕਾਲੇ ਹੀ ਬੋਲਣ ਵਾਲੇ ਕਾਲੀ ਜਵਾਨ ਚੋਂ ਨਿਕਲਣ ਵਾਲੇ ਸ਼ਰਦ ਜਿਹੜੇ ਨੇ ਉਹ ਬਰਾਬਰਤਾ ਦੀ ਗੱਲ ਕਿਉਂ ਨਹੀਂ ਕਰਦੇ ਇੱਕ ਪਾਸੇ ਦੀ ਖਬਰ ਕਿਉਂ ਦਿੰਦੇ ਗੱਲ ਬਣੇ ਸੋ ਆਹਾ ਕਿਸੇ ਨੇ ਕਿਹਾ ਸੀ ਕਿ ਇਹ মিডিਏ ਬਾਰੇ ਕੁਝ ਲੱਭੀ ਜਿੰਨਾ ਕੁ ਮੈਨੂੰ ਲੱਭਿਆ ਮੈਂ ਤੁਹਾਨੂੰ ਸੁਣਾਇਆ ਆ ਕੁਛ ਹੈ ਇਹ ਹਿੰਦੁਸਤਾਨ ਟਾਈਮਜ਼ ਦਾ ਹਿੰਦੂ ਤੇ ਉਸ ਤੋਂ ਬਾਅਦ ਟਾਈਮਜ਼ ਆਫ ਇੰਡੀਆ ਤੇ ਐਨ ਡੀ ਟੀਵੀ ਇਹਨਾਂ ਨੂੰ ਕੌਣ ਓਨ ਕਰਦਾ ਜੀ ਟੀਵੀ ਦਾ ਮਾਲਕ ਹੈ ਤੁਹਾਨੂੰ ਪਤਾ ਹੋਣੀ ਰਾਜਸਭਾ ਦਾ ਮੈਂਬਰ ਬਣਿਆ ਡਾਕਟਰ ਸੁਭਾਸ਼ ਕਾਲੇ ਨੇ ਪਟੇ ਜੇ ਇੰਦਰਾ ਗਾਂਧੀ ਵਾਂਗੂ ਉਹਦੇ ਹੁਣ ਇਹਦੀਆਂ ਮਾਲਕ ਨੇ ਜੀ ਲਾਈਨ ਨੰਬਰ 2 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੋ ਜਿਹੜੀ 700 ਕਰੋੜ ਦੀ ਵਾਦੀ ਹੈ ਨਾ ਉਹਨੂੰ ਕੰਟਰੋਲ ਕਰਨ ਵਾਸਤੇ ਇਹ ਗਵਰਨਮੈਂਟਾਂ ਦਾ ਵੀ ਇੱਕ ਹਥਿਆਰ ਹੈ ਆਪਣਾ ਪ੍ਰੋਪਾਗੈਂਡਾ ਕਰਨਾ ਜਿਵੇਂ ਕਸ਼ਮੀਰ 'ਚ ਵੋਟਾਂ ਆ ਗਈਆਂ ਉੱਥੇ ਜਿਹੜਾ ਕਸ਼ਮੀਰੀ ਜਾਂ ਜਿਹੜੇ ਮੁਸਲਮਾਨ ਸੋਚਦੇ ਚੈਨਲ ਨੇ ਉਹਨਾਂ ਨੂੰ ਪੈਸੇ ਦੇ ਕੇ ਤੇ ਇਹ ਚੈਨਲ ਨਾ ਹੁਣ ਮੈਨੂੰ ਲੱਗਦਾ ਦੁਨੀਆ ਕਾਬੂ ਕਰਨੀ ਇਹਨਾਂ ਦੇ ਇਕੱਲਿਆਂ ਦਾ ਵਸਦਾ ਰੋਗ ਨਹੀਂ ਹੈਗਾ ਜੀ ਨੇਤਿਆਂ ਦੇ ਤੇ ਇਹ ਵੀ ਨਾਲ ਰੋਲ ਪਲੇ ਕਰਦੇ ਚਾਹੇ ਕਿਸੇ ਪਾਸੇ ਵੀ ਦੇਖ ਲਈ ਆਪਾਂ ਦੇ ਚਾਹੇ ਵੈਸਟਰਨ ਕੰਟਰੀਸ 'ਚ ਵੀ ਚਲੋ ਇੱਥੇ ਥੋੜੇ ਜਿ ਨੇ ਮੂਰੇ ਬੰਦਾ ਪੜਿਆ ਜਾਂਦਾ ਚੋਰੀ ਫੜੀ ਜਾਂਦੀ ਹੈ ਮੂਰੇ ਆ ਜਾਂਦੀਆਂ ਚੀਜ਼ਾਂ ਕਦੇ ਨਾ ਕਦੇ ਇਹਨਾਂ ਦੀ ਜਮੀਰ ਜਾਗ ਜਾਂਦੀ ਹੈ ਪਰ ਆਪਣੇ ਉੱਥੇ ਸਿਸਟਮ 250 ਕਰੋੜ ਅੱਧੀ ਦੁਨੀਆ ਉੱਥੇ বাসਦੀ ਹੈ ਤੇ ਆਪਾਂ ਹਸਾਬ ਲਾ ਸਕਦੇ ਹਾਂ ਕਿਵੇਂ ਇਹਨਾਂ ਦੇ ਮੇਲੇ ਘੋਤ ਨਾਲ ਉਹਨਾਂ ਨੂੰ ਕੰਮਲੇ ਕਰਕੇ ਰੱਖਿਆ ਹੋਇਆ ਤੇ ਲੋਕ ਜੇ ਵਿਹਲੇ ਰਹਿਣਗੇ ਉਹ ਸੋਚਣਗੇ ਆਪਣਾ ਉਹਨਾਂ ਨੂੰ ਚਾਰੇ ਪਾਸੇ ਕੇ ਰੱਖੋ ਫੋਰਸਸ ਤੇ ਆਪਣੇ ਫਿਊਚਰ ਬਾਰੇ ਨਾ ਸੋਚ ਸਕਣ ਧੰਨਵਾਦ ਵੀਰ ਜੀ ਸਰਵਜ ਗੁਰੰਦਰ ਸਪான்ਸਰ ਮਹਿਕ ਤੇ ਸਕਾਟ ਰੈਸਟੋਰੈਂਟ ਨਵੀਂ ਮੈਨੇਜਮੈਂਟ ਥੱਲੇ ਹੈ ਓਪਨਿੰਗ ਦੇ ਸਮੇਂ ਤੇ ਬਹੁਤ ਜ਼ਿਆਦਾ ਰਿਆਗਤਾਂ ਨੇ ਬੈਠ ਕੇ ਤੁਸੀਂ ਖਾਣਾ ਖਾ ਸਕਦੇ ਹੋ ਆਰਡਰ ਕਰ ਸਕਦੇ ਹੋ ਮਹਿਕ ਰੈਸਟੋਰੈਂਟ ਤੇ 6045853331 ਮੈਕ ਰੈਸਟੋਰੈਂਟ 94th ਸਕੋਰ ਤੇ ਬਹੁਤ ਪ੍ਰਾਣਾ ਰੈਸਟੋਰੈਂਟ ਉਹ ਤੁਹਾਨੂੰ ਯਾਦ ਹੋਣਾ ਸ਼ੁਰੂ ਦੇ ਸਮਿਆਂ ਦੇ ਵਿੱਚ ਜਦ ਪੰਜਾਬੀ ਡਾਈਨ ਆਊਟ ਕਰਨ ਲੱਗੇ 10 ਸਾਲ ਪਹਿਲਾਂ ਫਲਿੱਪਾਂ ਚੰਗੀਆਂ ਹੋਈਆਂ 2005 ਚ ਜਦ ਦੀ ਮਾੜੀ ਜੀ ਹਰੇਵਾਈ ਆਈਏ ਤੇ ਉਹਦੇ ਬਾਅਦ ਫਿਰ ਇਹ ਕਲਚਰ ਸ਼ੁਰੂ ਹੋ ਗਿਆ ਖਾਣ ਪੀਣੇ ਖਰਚਣ ਲੱਗੇ ਅਸੀਂ ਪੈਸੇ ਮੈਕ ਰੈਸਟੋਰੈਂਟ ਜਦ ਬਹੁਤ ਫੇਮਸ ਹੁੰਦਾ ਸੀ ਬਹੁਤ ਵਧੀਆ ਹੁਣ ਉਸ ਨਮੀ ਮੈਨੇਜਮੈਂਟ ਥੱਲੇ ਬਹਿਕ ਰੈਸਟੋਰੈਂਟ 6045853331 ਥਾਮੀ ਨਾਰੰਗ ਐਂਡ ਕੰਪਨੀ ਵਕੀਲਾਂ ਦੀ ਵੱਡੀ ਕੰਪਨੀ 6048646131 ਅਮਰੀਕ ਨਾਰੰਗ ਤੇ ਰਾਜ ਥਾਮੀ 6048646131 ਆਠਾ ਵਕੀਲ ਨੇ ਦੋ ਦਫਤਰਾਂ ਮੈਂ ਆਈਸੀਬੀ ਦਾ ਕੇਸ ਲੜਦੇ ਆ ਥਾਮੀ ਨਾਰੰਗ ਐਂਡ ਕੰਪਨੀ ਅਮਨ ਖੜਕੜ ਮੌਰਦੇ ਦੇ ਵੱਡਾ ਨੌ ਹੈ 6048251314 ਅਮਨਦਰ ਸੀਏ ਸਰੀਆ ਫਸਰ ਬੈਂਕ ਨੇ ਮਾਰਗੇਜ ਕਿਸੇ ਕਿਸਮ ਦੀ ਲਾਈਫ ਕਿਸੇ ਕਿਸਮ ਦੀ ਮਾਰਗੇਜ ਤੁਸੀਂ ਲੈਣੀ ਹੈ ਚਾਹੇ ਕੰਸਟਰਕਸ਼ਨ ਆ ਚਾਹੇ ਰੈ residenial ਮਾਰਗੇਜ ਆ ਸਿੰਘ ਕਾਫੀ ਮਾੜਾ ਜਿਗਰਾ ਤੁਸੀਂ ਖੋਲਦੇ ਹੋ ਮੇਰਾ ਤਾਂ ਪਹਿਲੇ ਦਿਨ ਤੋਂ ਹੀ ਇਹ ਮੰਨਣਾ ਰਿਹਾ ਵਾ ਜਿਹੜਾ 99% মিডিਆ ਦਾ ਇੰਡੀਆ ਦਾ ਉਹ ਬਕਾਊ ਤੁਸੀਂ ਦੇਖ ਵੀ ਲਿਓ ਹੋ ਗਈ ਕਾਂਗਰਸ ਦੀ ਬੰਦੇ ਬੰਦੇ ਕਾਲੀਆਂ ਦੀ ਹੋ ਹੁਣ ਆਪ ਵਾਲਿਆਂ ਦਾ ਵੀ ਵੀ ਜਾਂਦੇ ਹੋਣਗੇ ਜਰੂਰ ਪਰ ਮੈਂ ਇਹ ਦੇਖਿਆ ਕਿ ਜੇਲ੍ਹ ਕਿਹੜਾ ਪੁਲਿਸ ਵਾਲੇ ਹੁੰਦੇ ਸੀ ਅੱਗੇ ਜਿੱਦਾਂ ਪੁਰਾਣੇ ਨਵੇਂ ਮੁੱਦੇ ਤੇ ਕਾਫੀ ਵਧੀਆ ਪੁਲਿਸ ਸੈਕਟਰ ਵਿੱਚ ਵੀ ਉਹ ਰਾਜ ਜਮੀਰ ਹੈਗੀ ਆ ਜਿਹੜੇ ਪ੍ਰਾਣੇ ਨਹੀਂ ਹੁੰਦੇ ਪੁਲਸਾਂ ਜਿੱਦਾ ਹਲਕੇ ਤੁਰੇ ਫੈਨਾ ਜੀ ਪੂਟ ਸੈਰਾਂ ਘੇਰ ਕੇ ਆ ਜੀ ਹੂੰ ਸਤਿਕਾਰ ਜੀ ਸਤਿਕਾਰ ਜੀ ਨੰਬਰ 3 ਹਿਊਸਟਨ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਪੰਦੇ ਸਾਹਿਬ ਬਹੁਤ ਵਧੀਆ ਲੈ ਕੇ ਆਇਆ ਦਾ ਕੱਲ ਮੈਂ ਨਿਊਜ਼ ਪੜ੍ਹ ਰਿਹਾ ਸੀਗਾ ਆਪਣੇ ਅਜੀਤ ਪੱਤਰ ਦੇ ਕਿਸੇ ਪੱਤਰਕਾਰ ਨੇ ਲਿਖਿਆ ਕੋਈ ਗੱਲਾਂ ਬੜੀਆਂ-ਵੜੀਆਂ ਲਿਖਣੀਆਂ ਆ ਜਾਂਦੀਆਂ ਇਹਨਾਂ ਨੂੰ ਜਿਵੇਂ ਪੈਸੇ-ਪੂਸੇ ਵਧੀਆ ਮਿਲ ਜਾਂਦੇ ਆ ਤੇ ਉਹਨੇ ਲਿਖਿਆ ਕਿ ਬਾਕੀ ਫੂਲਕਾ ਜੀ ਨੇ ਪੇਪਰ ਭਰੇ ਆਗੇ ਜੀ ਐਚਐਸ ਫੂਲਕਾ ਬਾਕੀ ਸਾਰੀਆਂ ਚੀਜ਼ਾਂ ਤੇ ਉਹਨੇ ਲਿਖਿਆ ਸ਼ੇਅਰ ਮਾਰਕੀਟ ਦੇ ਵਿੱਚ ਸ਼ੇਅਰ ਖਰੀਤੇ ਗਏ ਸ਼ੇਅਰ ਖਰੀਤੇ ਗਏ ਤੇ ਨਾ ਇੱਕ ਕੰਟਰੋਲ ਪਲਾਜ਼ੇ ਦੀ ਆਨਲਾਈਨ ਵੈਬਸਾਈਟ ਜਾ ਕੇ ਤੁਸੀਂ ਕੋਈ ਵੀ ਉਹਦੇ ਉੱਤੇ ਚਾਹੇ 100 ਰੁਪਏ ਦਾ 100 ਡਾਲਰ ਦਾ ਆਪਾਂ ਸ਼ੇਅਰ ਖਰੀਦ ਸਕਦੇ ਆ ਤਾਂ ਜਾਣ ਬੁੱਝ ਕੇ ਇਹਨਾਂ ਨੇ ਉਹਦੇ ਉੱਤੇ ਇਹ ਚੀਜ਼ ਪਾ ਦਿੱਤੀ ਹੈ ਕਿ ਹਿੱਸੇਦਾਰੀ ਆ ਹੂੰ ਦੇਖੋ ਤੇ ਉਹ ਉਹ ਗੱਲ ਕਿਵੇਂ ਘੁਮਾ ਦਿੱਤਾ ਤੇ ਕੱਲ ਦੇ ਹਰੇਕ ਅਕਾਲੀ ਬੰਦੇ ਦੇ ਤੇ ਹਰੇਕ ਕਾਂਗਰਸੀ ਬੰਦੇ ਦੇ ਫੇਸਬੁਕ ਪੇਜ ਤੇ ਇਹੀ ਮੈਸੇਜ ਆ ਰਿਹਾ ਦੇਖੋ ਜੀ ਹਿੱਸੇਦਾਰੀ ਆ ਦੇਖੋ ਜੀ ਹਿੱਸੇਦਾਰੀ ਉਹਨੂੰ ਖੋਲ ਕੇ ਦੇਖ ਰਹੇ ਹਾਂ ਕਿ ਇਹਦੀ ਅਖਬਾਰ ਦੀ ਮੰਨਦੀ ਆ ਪੱਤਰਕਾਰ ਕੀ ਲਿਖ ਰਿਹਾ ਹੂੰ ਹਾਂ ਏ ਧੀਮੇ ਧੀਮੇ ਇਲੈਕਸ਼ਨ ਨੇੜੇ ਆ ਰਹੇ ਨੇ ਤਾ ਹਰੇਕ ਬੰਦੇ ਤੇ ਉਹ ਬੰਦੇ ਨੂੰ 35 34 35 ਸਾਲ ਹੋ ਗਏ ਜੀ ਸਿੱਖ ਸਿੱਖਾਂ ਲਈ ਲੜਦੇ ਨੂੰ ਉਹਨਾਂ ਨੇ ਆਪ ਵੀ ਤਾਂ ਵੀਡੀਓ ਬਣਾ ਪਰ ਫਿਰ ਵੀ ਲੋਕ ਵੀ ਕਰ ਸਕਦਾ ਆਪਣੀ ਉਹਦੀ ਕਲਮ ਦੇ ਜੋਰ ਤੇ ਉਹ ਝੂਠ ਨੂੰ ਸੱਚ ਵੀ ਦਿਖਾ ਸਕਦਾ ਤੇ ਸੱਚ ਨੂੰ ਝੂਠ ਵੀ ਦਿਖਾ ਸਕਦਾ ਬਿਲਕੁਲ ਜੀ ਥੈਂਕ ਯੂ ਅਗਲੇ ਪ੍ਰੈਜ਼ੇਂਟੇਸ਼ਨ ਤੋਂ ਬਾਅਦ ਪੰਜਾਬ ਦੇ ਹੇਰ ਕਰੋੜ ਕਰੋੜ ਦਾ ਜਿਹੜਾ ਡਰੱਗ ਰੈਕੇਟ ਹੈ ਉਸ ਦੀ ਗੱਲ ਬਹੁਤ ਵਧੀਆ ਇੱਕ ਕੈਰਾਵਨ ਮੈਗਜ਼ੀਨ ਮੈਂ ਉੱਥੇ ਦਾ ਉਹਦੇ ਵਿੱਚ ਹਰਤੋਸ਼ ਸਿੰਘ ਬਰਦ ਨੇ ਅੰਡਰ ਅ ਕਲਾਉਡ ਕਵਰ ਸਟੋਰੀ ਵਧੀਆ ਕਿਵੇਂ ਫਰਨ ਤੋਂ ਲੈ ਕੇ ਕਿਵੇਂ ਤੱਕ ਬੰਦੇ ਭੋਲਾ ਮਨਿੰਦਰ ਆਲਖ ਚਾਹ ਸਭ ਬਾਰੋ-ਬਾਰੀ ਛੁੱਟ ਰਹੇ ਨੇ ਕੀਤੀ ਕੀ ਨੇ ਉਹ ਕਿੱਧਰ ਗਈਆਂ ਜੀ ਦੀਆਂ ਫੈਕਟਰੀਆਂ ਤੇ ਕਵਾਂਟਲਾ ਦੇ ਕੋਨਟਰ ਸਿੰਥੈਟਿਕ ਡਰਗ ਜਿਹੜੀ ਕੈਨੇਡਾ ਪਹੁੰਚੀ ਹੈ ਕੈਨੇਡਾ ਚ ਰਹਿਣ ਵਾਲੇ ਸੱਤਾ ਦੋ ਬੰਦਿਆਂ ਦੀ ਮਜੀਠੇ ਦੇ ਨਾਲ ਦੋਸਤੀ ਦੀ ਗੱਲ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੋਲ ਮਕੰਮ ਦੀ ਗੱਲ ਭੋਲੇ ਤੇ ਔਲਖ ਵੱਲੋਂ ਕਹਿਣ ਦੀ ਗੱਲ ਕਿ ਮੈਨੂੰ ਕਿਹਨੇ ਬੁਲਾਇਆ ਸਾਰੇ ਸੁਆਸ ਕਰ ਸੇਮੀਆਂ ਕਰਤਾ 6000 ਕਰੋੜ ਦਾ ਐਡਾ ਵੱਡਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਕੰਮ ਸਰਜੀਤ ਸਿੰਘ ਬੇਰਕਾ ਜਿਹੜਾ ਇੰਟਰਨੈਸ਼ਨਲ ਹਿਊਮਨ ਰਾਈਟਸ ਕਰਦੇ ਆ ਬਹੁਤ ਵੱਡੇ ਵੱਡੇ ਸਟਿੰਕ ਕੱਢ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਸਸੰਸਨੀ ਖੇਜ ਉਪਰਟਾਵਾ ਕਰਨ ਜਾ ਰਹੇ ਨੇ ਕੁਝ ਰਿਪੋਰਟ ਨਵੀਂ ਕੱਢ ਰਹੇ ਨੇ ਤੇ ਭੋਲਾ ਜਿਹੜਾ ਇਹਦੇ ਵਿੱਚ ਕਹਿੰਦਾ ਮਾੜੀ ਛੋਟੀ ਜੀ ਇੱਕ ਮੱਛੀ ਆ ਵੱਡੇ ਸਮੁੰਦਰ 'ਚ ਹੋਣ ਦੇ ਨੇੜੇ ਆ ਉਹਦੇ ਯਾਰ ਦੋਸਤ ਜਿਹੜੇ ਘੁੱਦੇ ਰਹੇ ਨੇ ਪਹਿਲੇ ਦਿਨੋਂ ਕਹਿੰਦੇ ਰਹਿੰਦੇ ਨੇ ਭੋਲਾ ਇਹਦੇ ਵਿੱਚ ਬੇਕਸੂਰਾ ਭੋਲਾ ਇਹਦੇ ਵਿੱਚ ਬੇਕਸੂਰਾ ਵੱਡੇ ਬੰਦੇ ਹੋਰ ਨੇ ਪਰतोष ਬਲ ਦੀ ਅੰਦਰ ਇੱਕ ਕਲਾਉਡ ਸਟੋਰੀ ਦਪਾਰਸ਼ਣੇਸ਼ਰ ਬਾਤ ਤੁਹਾਨੂੰ ਸੁਣਾਉਂਦਾ ਹਰਤੋਸ਼ ਸਿੰਘ ਬੱਲ ਇਸ ਸਟੋਰੀ ਦੀ ਸ਼ੁਰੂਆਤ 2008 ਦੇ ਵਿੱਚ ਪੰਜਾਬੀ ਮੂਵੀ ਰਸਤ ਮੈਂ ਹਿੰਦੀ ਗੱਲ ਨਾਲ ਕਰਦਾ ਜਗਦੀਸ਼ ਭੋਲਾ ਜਿਹੜਾ ਐਜ਼ ਅ ਰੈਸਲਰ ਇਹਦੇ ਵਿੱਚ ਫਿਲਮ 'ਚ ਕੰਮ ਕਰਦਾ ਤੇ ਕਦੇ ਵੀ ਆਪਣੀ ਪੁਲਵਾਨੀ ਦੇ ਨਾਲ ਤਗਾ ਨਹੀਂ ਕਰਦਾ ਉਹਨੇ ਸਿਲਵਰ ਜਿੱਤਿਆ 1991 'ਚ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ 'ਚ ਉਦੇ ਬਾਅਦ ਅਰਜਨ ਅਵਾਰਡ ਉਹਨੂੰ ਮਿਲਿਆ ਪੁਲਿਸ ਜੌਬ ਮਿਲੀ ਪੁਲਿਸ ਦੇ ਵਿੱਚ ਉਹਦੀ ਕੰਮ ਲਈ ਕਮਿਟਮੈਂਟ ਘਟ ਗਈ 2002 ਦੇ ਵਿੱਚ ਸਸਪੈਂਡ ਹੋਇਆ ਡਰਗ ਟ੍ਰੇਡ ਲਈ ਉਦੇ ਬਾਅਦ 10 ਕਰੋੜ ਦੀ ਡਰਗ ਗੋਸਟੇ ਘਰੋਂ ਮਹਾਲੀਆਂ ਮਿਲੀ ਪੋਲਾ ਬਹੁਤ ਤਿਆਰੀ ਰਹਿੰਦਾ ਰਿਹਾ ਖੰਨੇ ਦੇ ਲੋਕ ਉਸਨੂੰ ਜਾਣਦੇ ਰਹੇ ਕਿ 6-5 ਰੰਗ ਦੀਆਂ ਗੱਡੀਆਂ ਦੇ ਵਿੱਚ ਪੋਲਾ ਸਫਰ ਕਰਦਾ ਰਿਹਾ ਗਨਮੈਨ ਨਾਲ ਪੂਰੀ ਤਿਆਰੀ ਦੇ ਵਿੱਚ 2002 ਦੇ ਵਿੱਚ ਸੀਓ ਹੋਏ ਗੱਲ ਮੰਨਣੀ ਤੋਂ ਤੇ ਲੋਕਾ ਜੀ ਨੇ ਵੇਖਿਆ ਉਹਨਾਂ ਨੇ ਦੱਸਿਆ ਉਹਦੇ ਬਾਦ ਉਹ ਭੱਜ ਲਿਆ ਤੇ 11 ਨਵੰਬਰ 2013 ਨੂੰ ਤੇਰਾ ਨੂ ਗਿਆ ਨਾਲ ਉਹਦੇ ਨਾਲ ਚਾਰ ਜਣੇ ਸੀ ਉਹਦੇ ਬਾਅਦ 700 ਕਰੋੜ ਦੀ ਸਿੰਥੈਟਿਕ ਡਰੱਗ ਰੈਕਟ ਦੀ ਗੱਲ ਅਰੈਸਟ ਹੋਇਆ ਉਹਦੇ ਚ ਕਰੋੜ ਦੇ ਕਰੀਬ ਉਹਦੇ ਕੋਲ ਡਰੱਗ ਸੀ ਆਈਸ ਜਿਹੜੀ ਐਫੈਡਰੇਟ ਐਸੀਡੋ ਰਿਕਵਰ ਹੋਈ ਆਈਸਾ ਜਿਹੜੀ ਉਹ ਪਿਓਰਿਸਟ ਫਾਰਮ ਆ ਮੈਥਮ ਫੈਟਾਮਾਈਨ ਦੀ ਜਿਹੜੀ ਹਜ਼ਾਰ ਡਾਲਰ ਦੀ ਗ੍ਰਾਮ ਸਾਡੇ ਸ਼ਹਿਰਾਂ 'ਚ ਵਿਕਦੀ ਆ ਇਸ ਬਹੁਤ ਮਹਿੰਗੀ ਹੈ ਉਹ ਲੈਨੇ ਪੁਲਿਸ ਨੂੰ ਦੱਸਿਆ ਕਿ ਡਰੱਗ ਆ ਜਿਹੜੀ ਸਪਲਾਈ ਕੀਤੀ ਗਈ ਜਗਜੀਤ ਸਿੰਘ ਚਾਹਲ ਵੱਲੋਂ ਚਾਹਲ ਜਿਹੜਾ ਦੋ ਫਾਰਮਾਸਿਊਟੀਕਲ ਕੰਪਨੀਆਂ ਸੀ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿੱਥੇ ਮੋਸਟਲੀ ਸਾਡੇ ਪੰਜਾਬ ਦੀ ਜਿਹੜੀ ਸਨਤ ਹੈ ਬੱਦੀ ਚ ਮੂਵ ਹੋਈ ਤੇ ਜਦ ਚਾਹਲ ਨੂੰ ਅਰੈਸਟ ਕੀਤਾ ਜਦੋਂ ਦੀ ਇੰਟੈਰੋਗੇਸ਼ਨ ਹੋਈ ਤੇ ਉਹਦੀਆਂ ਫਰਮਾਂ ਤੇ ਰੇਡ ਹੋਈ ਤੇ 110 ਕਿਲੋਗ੍ਰਾਮ ਦੇ ਕਰੀਬ ਜਿਹੜਾ ਨਸ਼ੀਲਾ ਪਦਾਰਥ ਉਥੋਂ ਮਿਕਸ ਮਿਲਿਆ ਗਿਆ 225 ਕਿਲੋ ਜਿਹੜਾ ਸੇਡੋਫੈਡਰੀਨ 75 ਕਿਲੋ ਫੈਡਰੀਨ ਕਿਲੋ ਆਈਸ ਐਮਬੀਪੀ ਫਾਰਮਾ ਮੰਦ ਜਿਹੜੀ ਛਾਲ ਦੀ ਇੱਕ ਕੰਪਨੀ ਤੇ ਉਹਦੇ ਬਾਅਦ ਬਾਇਓ ਫਾਰਮਾ ਉਹਦੇ ਬਾਅਦ ਉਹਦੇ ਚ 165 ਕਿਲੋ ਦੇ ਕਰੀਬ ਨਸ਼ੀਲਾ ਪਦਾਰਥ ਮਲੇ ਆਉਦੇ 175 ਕਿਲੋਗ੍ਰਾਮ ਸਿਡ ਆਫ ਐਡਰੀਨ ਤੇ ਸਾਢੇ 8 ਕਿਲੋ ਆਈਸੋ ਦੇ ਵਿੱਚੋਂ ਇਹ ਜਿਹੜੀਆਂ ਅ ਐਫੈਡਰੀਨ ਉਸ ਤੋਂ ਬਾਅਦ ਆਪਣੇ ਸਰੀਰ 'ਚ ਗੱਲਾਂ ਚੱਲੀਆਂ ਤੇ ਬਾਲਟੀਆਂ ਆਉਂਦੀਆਂ ਉੱਥੋਂ ਬਾਲਟੀਆਂ 'ਚ ਪੈਸਾ ਬਹੁਤ ਬਣਦਾ ਲੱਖ ਡਾਲਰ ਬਣਦਾ ਇਹ ਉਹ ਬਾਲਟੀਆਂ ਨੇ ਸੁਣ ਲਿਓ ਹੁਣ ਖਿਆਲ ਲਾ ਕਈਆਂ ਨੇ ਢੋਈਆਂ ਬਾਲਟੀਆਂ ਹੁਣ ਸਾਊ ਆ ਬਹੁਤ ਤੇ ਇਹ ਚਾਹਲ ਨੇ ਜਿਹਦੇ ਕੋਲ ਲਾਇਸੈਂਸ ਸੀ ਮੈਨੂਫੈਕਚਰ ਕਰਨ ਦਾ ਤੇ ਲੀਗਲ ਡਰੱਗ ਦਾ ਤੇ ਉਹਨੂੰ ਇਹ ਕੋਟੇਫੈਡਰੀਨ ਤੇ ਸਿਡੋਫੈਡਰੀਨ ਮਿਲਦੀ ਸੀ ਜਿਹੜੀ ਸਿਡੋਫੈਡਰੀਨ ਆ ਇਸ ਤੇ ਦੋਨਾਂ ਦੇ ਨਾਲ ਮਿਕਸ ਕਰਕੇ ਮੈਥਾਮਫੈਟਾਮੀਨ ਬਣਾਈ ਜਾਂਦੀ ਹੈ ਜਿਸ ਦੇ ਨਾਂ ਤੁਸੀਂ ਸੁਣਦੇ ਹੋ ਉਹਦੇ ਬਾਅਦ ਅਕਤੂਬਰ 2015 ਦੇ ਵਿੱਚ ਜਦ ਅਰਵਿਸਟੀਗੇਸ਼ਨ ਕਲੀਅਰ ਹੋ ਗਈ ਤੇ ਸੀਬੀਏ ਦੀ ਇਨਕੁਆਰੀ ਖਾ ਖੂ ਖਾਤੇ ਪਾਤੀ ਤੇ ਭੋਲੇ ਦੇ ਪਿਤਾ ਨੇ ਸੀਬੀਏ ਇਨਕੁਆਰੀ ਦੀ ਗੱਲ ਕੀਤੀ ਤੇ ਉਹਦੇ ਸਿਨੀਅਰ ਪੁਲਿਸ ਅਫਸਰੇ ਇਨਵੈਸਟੀਗੇਸ਼ਨ ਤੇ ਲਾਤੇ ਬਸ ਉਦੋਂ ਇਹ ਰਿਪੋਰਟ ਕਿਉਂਕਿ ਗਾਣਾ ਮਜੀਠੀਆ ਦਾ ਨਾਮ ਆਉਂਦਾ ਸੀ ਜਾਂ ਮਜੀਠੀਆ ਦਾ ਨਾਮ ਆਉਂਦਾ ਸੀ ਤਾਂ ਕਰਕੇ ਗੱਲਾਂ ਠੰਡੀਆਂ ਹੋ ਗਏ ਜਿਹਦੇ ਵਿੱਚ ਮਨਿੰਦਰ ਸਿੰਘ ਆਲਖ ਜਿਹੜਾ ਫੜਿਆ ਗਿਆ ਉਸਨੇ ਜਿਹੜਾ ਸੇਮ ਡੇ ਜਦੋਂ ਚਾਲ ਫੜਿਆ ਉਹਨੇ ਬਿਕਰਮਜੀਠੀ ਹਦਾਇ ਦੇ ਵਿੱਚ ਨਾਮ ਇਨਫੋਰਸਮੈਂਟ ਡੈਕਟੋਰੇਟ ਦੇ ਇੰਟਰੋਗੇਸ਼ਨ ਉਹਨਾਂ ਨੇ ਕਰੋੜ ਦੀ ਵੀ ਗੱਲ ਚੱਲੀ ਜਿਹੜੀ 7700 ਕਰੋੜ ਤੋਂ 6000 ਕਰੋੜ ਤੱਕ ਪਹੁੰਚ ਗਈ। ED ਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਆਦੇ ਗੱਲਾਂ ਚੱਲੀਆਂ ਕਿ ਇੱਕ ਕਿਹਦੇ ਨਾਲ ਕਿਹਦੀਆਂ ਜੁੜੀਆਂ ਕੌਣ ਕਿਸ ਨੂ ਇਸ ਨਾਂ ਮਿਲਦਾ ਰਿਹਾ ਭੋਲੇ ਨੇ ਜਿਹੜਾ ਦੱਸਿਆ ਕਿ ਦੋ ਬੰਦੇ ਸਤਪ੍ਰੀਤ ਸਿੰਘ ਸੱਤਾ ਤੇ ਪ੍ਰਵਿੰਦਰ ਸਿੰਘ ਪਿੰਦੀ ਉਹ ਕਲੋਜ਼ਲੀ ਇਹਦੇ ਚ ਇਨਵੋਲਵ ਸੀ ਉਹਨੇ ਜਿਹੜੀ ਸਟੇਟਮੈਂਟ ਇਹਦੀਨ ਦਿੱਤੀ ਉਹਦੇ ਵਿੱਚ ਉਹਨੇ ਕਿਹਾ ਮਜੀਠੀਏ ਨੇ ਮੈਨੂੰ ਔਲਕਸੈਟ ਦਰ ਸੱਤਾ ਵਜ਼ ਟੂ ਮੀ ਬਾਈ ਬਿਕਰਮ ਸਿੰਘ ਮਜੀਠੀ ਐਨ ਈਅਰ 2007 ਮਜੀਠੀਆ ਔਲਖ ਨੇ ਕਿਹਾ ਕਿ ਮੈਨੂੰ ਉਸਨੇ ਕਿਹਾ ਕਿ ਸੱਤਾ ਉਹਦਾ ਦੋਸਤ ਹੈ ਕੈਨੇਡਾ ਰਹਿੰਦਾ ਹੈ ਉਹਦੇ ਬਾਅਦ ਸੱਤੇ ਨੇ ਉਸ ਦੀ ਇਲੈਕਸ਼ਨ ਕੈਂਪੇਨ ਦੇ ਵਿੱਚ ਵੀ ਮਜੀਠਾ ਕੰਸਟੀਟੂਐਂਸੀ ਵਿੱਚ ਕੰਮ ਕੀਤਾ ਤੇ ਮਜੀਠੇ ਨੇ ਇਸ ਨੂੰ ਕਿਹਾ ਮੈਨੂੰ ਕਿਹਾ ਕਿ ਇਸ ਦੀ ਮਦਦ ਕੀਤੀ ਜਾਵੇ ਇਹਦਾ ਕੁਝ ਮੈਡੀਸਨ ਦਾ ਬਿਜ਼ਨਸ ਹੈ ਇਥੋਂ ਮੈਡੀਸਨ ਲੈ ਕੇ ਜਾਣੀ ਇਹਦੀ ਮਦਦ ਕਰੋ ਚਾਹਲ ਉਹਦੇ ਬਾਅਦ ਔਲਖ ਨੇ ਈਡੀ ਨੂੰ ਦੱਸਿਆ ਕਿ ਮੈਨੂੰ ਪਰਮਿੰਦਰ ਸਿੰਘ ਪਿੰਦੀ ਸਤਪ੍ਰੀਤ ਨੇ ਮਿਲਾਇਆ 25 ਨਵੰਬਰ 2009 ਨੂੰ ਮਜੀਠੀਏ ਦੀ ਵਿਆਹ ਦੀ ਇਵੈਂਟ ਸੱਤੇ ਨੇ ਫਿਰ ਔਲਖ ਨੂੰ ਦੱਸਿਆ ਕਿ ਮਿੰਦ ਪਿੰਦੀ ਆ ਜਿਹੜਾ ਉਹ ਕੁਝ ਲੈ ਕੇ ਜਾਣਾ ਚਾਹੁੰਦਾ ਉੱਥੇ ਇਹਦਾ ਬਿਜ਼ਨਸ ਹੈ ਇਹ ਕਹਿੰਦਾ ਮੇਰਾ ਦੋਸਤ ਚਾਲ ਮੈਂ ਸੱਤੇ ਨੂੰ ਜਗਜੀਤ ਸਿੰਘ ਚਾਲ ਮਲਾਤਾ ਤੇ ਮੈਂ ਉਸ ਨੂੰ ਦੱਸਿਆ ਕਿ ਸੱਤਾ ਬਿਕਰ ਮਜੀਠੀਏ ਦਾ ਦੋਸਤ ਹੈ ਪਿੰਦੀ ਸੱਤੇ ਨੂੰ ਜਾਣਦਾ ਦੋਨੇ ਕੈਨੇਡਾ ਦੇ ਰਹਿਣ ਵਾਲੇ ਆ ਪਿੰਦੀ ਨੇ ਕੁਝ ਦਵਾਈਆਂ ਲਿਖ ਕੇ ਦਿੱਤੀਆਂ ਜਿਹੜੀਆਂ ਫਾਰਮਾਸਿਊਟੀਕਲ ਡਰਗਸ ਸੀ ਤੇ ਉਹਦੇ ਬਾਅਦ ਨੇ ਆਪਣੇ ਕੈਮਿਸਟ ਨੂੰ ਪੁੱਛਿਆ ਉਹ ਕਹਿੰਦਾ ਤਾਂ ਕੰਟਰੋਲਡ ਡਰਗਸ ਨੇ ਇਹ ਨਹੀਂ ਮਿਲਦੀਆਂ ਇਹ ਜਿਹੜੀਆਂ ਉਹ ਤੇ ਉਸ ਤੋਂ ਬਾਅਦ ਇਹ ਚੀਜ਼ਾ ਮੰਗ ਰਿਹਾ ਇਹ ਤਾਂ ਹੈ ਨਹੀਂ ਆਪਣੇ ਕੋਲ ਉਹ ਖਾ ਉਹਦੇ ਬਾਅਦ ਜਿਹੜੀਆਂ ਦੋਸਤ ਦੀਆਂ ਕੰਪਨੀਆਂ ਜਿਹੜੀਆਂ ਓਨ ਕਰਦਾ ਸੀ ਉਹਨਾਂ ਕੋਲ ਲਾਇਸੈਂਸ ਪਰਚੇਜ਼ ਕਰਦਾ ਐਮਬੀਪੀ ਫਾਰਮਾ ਤੇ ਮਾਉਂਟੈਕ ਬਾਇਓਫਾਰਮਾ ਉਹਨਾਂ ਤੇ ਰੇਡ ਹੋਈ ਸੀ ਉਹਦੇ ਬਾਦ ਗੱਲ ਇਹ ਚੱਲੀ ਕਿ ਦੋਨਾਂ ਨੂੰ ਚਾਹਲ ਨੇ ਇਹ ਡਰੱਗਸ ਭੇਜਣੇ ਮੰਨ ਦਿੱਤੇ ਉਹਦੇ ਬਾਅਦ ਚਾਹਲ ਤੇ ਪਿੰਡੀ ਤੇ ਸੱਤੇ ਦੀ ਕੋਈ ਮੁਸ਼ਕਲ ਹੋਈ ਜਿਹੜੀ ਮਜੀਠੀਆ ਨੇ ਦੇ ਕੇ ਠੀਕ ਕਰਾਈ ਔਰਖ ਨੇ ਸਭ ਕੁਝ ਦੱਸਿਆ ਉਹਦੇ ਬਾਅਦ ਫਿਰ ਗੱਲਾਂ ਚੱਲੀਆਂ ਕਿ ਬਜੀਠੀਆ ਦੀ ਪੁੱਛ ਗਿਆ ਕਹਿੰਦੇ ਮੈਂ ਸੱਤੇ ਨੂੰ ਨਹੀਂ ਜਾਣਦਾ ਪਰ ਇਸੇ ਗੱਲ ਦੇ ਵਿੱਚ ਸੱਤਾ ਉਸ ਦੇ ਬਿਕਰਮਜੀਤ ਜੀ ਦੇ ਨਾਲ 2010 ਦੇ ਵਿੱਚ ਪੰਜਾਬ ਗਵਰਨਮੈਂਟ ਦਾ ਜਿਹੜਾ ਅਫੀਸ਼ੀਅਲ ਫੰਕਸ਼ਨ ਸੀ ਖਾਸ ਤਾ ਕਾਲਜ ਅਮਸਰ ਉੱਥੇ ਦੇਖਿਆ ਗਿਆ ਜਿਹਦੇਆਂ ਫੋਟੋਆਂ ਸਰਜੀਤ ਹਰਤੋਸ਼ ਬੱਲ ਨੂੰ ਦਿਖਾਈ ਨੇ ਮੈਨੂੰ ਦੱਸਿਆ ਪੰਜਾਬ ਪੁਲਿਸ ਇਨਫੋਰਸਮੈਂਟ ਦੋਨੇ ਹੀ ਚਾਲਾ ਵਟਣ ਜਦ ਦਾ ਮਜੀਠੀਏ ਦੇ ਸ਼ੁਰੂ ਹੋਇਆ ਸੱਤਾ ਤੇ ਦੋਨੇ ਕਨੇਡਾ ਦੇ ਵਿੱਚ ਨੇ ਤੇ ਨੇ ਬਹੁਤ ਬੜਾ ਡਰਗ ਟ੍ਰੇਡ ਚਲਾਇਆ ਜਿਹੜਾ ਦੁਨੀਆ ਦੇ ਵਿੱਚ ਉਹਨਾਂ ਨੇ ਫਲਾਇਆ ਤੇ ਉਹਨਾਂ ਦੇ ਕੈਨੇਡੀਅਨ ਪੋਲੀਟੀਸ਼ੀਅਨ ਨਾਲ ਵੀ ਇਹ ਗੱਲ ਚੱਲੀ ਸੀ ਤੁਹਾਨੂੰ ਯਾਦ ਹੈ ਕਿ ਅਰੈਸਟ ਕੁਸ਼ਨ ਚ ਹੋਈਆਂ ਸੀ ਰਾਜਨੀਤਿਕ ਬੰਦਿਆਂ ਨਾਲ ਵੀ ਉਹਨਾਂ ਦੇ ਰਾਜਨੀਤਿਕ ਬੰਦਿਆਂ ਦੇ ਕਲੋਜ਼ ਬੰਦੇ ਇਹਦੇ ਵਿੱਚ ਫੜੇ ਗਏ ਹੁਣ ਗੱਲ ਇਹ ਹੈ ਕਿ ਹਲੇ ਗੱਲ ਮੁੱਕੀ ਨਹੀਂ ਨਵੰਬਰ ਦੇ ਵਿੱਚ ਪਿਛਲੇ ਸਾਲ ਚਿਨਾਈ ਦਾ ਮੈਗਜ਼ੀਨ ਇਕਾ ਫੌਂਟੈਨ ਇਨਕ ਉਹਦੇ ਇੱਕ ਨਵੀਂ ਸਟੋਰੀ ਦਿੱਤੀ ਜਿਹਦੇ ਵਿੱਚ ਇੱਕ ਸੀਜ਼ ਹੋਇਆ ਮਈ ਦੇ ਵਿੱਚ ਲਿਬਿਆ ਨਜਾਰਾ ਸ਼ਿਪ ਗ੍ਰੀਕ ਦੀ ਇੱਕ ਪੋਰਟ ਤੇ ਮਿਲੀਅਨ ਕਰੀਬ 26 ਮਿਲੀਅਨ ਗੋਲੀਆਂ ਟ੍ਰੈਮਾਡੋਲ ਦੀਆਂ ਸੀ ਜਿਹੜੀਆਂ ਪੇਨਕਿਲਰ ਜਿਹਦੇ ਵਿੱਚ 225 ਐਮਜੀ ਤੋਂ ਵੱਧ ਸੀ ਤੇ ਮਿਲੀਅਨ ਦੀ ਇਹ ਸੀ ਤੇ ਇਹ ਵੀ ਜਿਹੜੀ ਜਿਹੜੀ ਦਵਾਈ ਹੈ ਉਹ ਜਵਾਲਾਲ ਨਹਿਰੂ ਪੋਰਟ ਬੰਬਈ ਤੋਂ ਸ਼ੁਰੂ ਹੋਈ ਟ੍ਰੈਮਾਡੋਲ ਬਣਾਈ ਗਈ ਅੰਮ੍ਰਿਤਸਰ ਦੇ ਵਿੱਚ ਰਾਇਲ ਇੰਟਰਨੈਸ਼ਨਲ ਫਾਰਮਾਸਿਊਟੀਕਲ ਕੰਪਨੀ ਜਿਹੜੀ ਬਾਹਰ ਦਵਾਈਆਂ ਭੇਜਦੀ ਹਰ ਰੱਬ ਜਾਣਦਾ ਜਿਸ ਖਿੱਤੇ ਦੇ ਵਿੱਚੋਂ 7.1 ਕਰੋੜ ਦੇ ਕਰੀਬ ਗੋਲੀਆਂ ਬਣ ਕੇ ਅੰਮ੍ਰਿਤਸਰ ਤੋਂ ਆਈਆਂ ਤੇ ਉਹ ਫੜੀਆਂ ਗਈਆਂ ਜਾਂ ਲਿਬੀਆ ਨੂੰ ਜਾਣ ਤੋਂ ਪਹਿਲਾਂ ਗਰੀਸ ਦੇ ਵਿੱਚ ਉਹਦਾ origin ਪੰਜਾਬ 26 ਮਿਲੀਅਨ ਗੋਲੀਆਂ ਉਹ ਇਹ ਇੱਕ ਬਹੁਤ ਵੱਡੀ ਉਸਨੇ న్యూਸ ਛਾਪੀ ਮੋਟਾ ਤੋਂ ਪਹਿਲਾਂ ਹੋਰ ਵੀ ਗੱਲਾਂ ਚੱਲ ਰਹੀਆਂ ਨੇ ਇੰਟਰਨੈਸ਼ਨਲ ਹਿਊਮਨ ਰਾਈਟਸ ਗੱਲਾਂបੱਤਾਂ ਕਰਦੀ ਫਿਰਦੀ ਐ ਵੇਰਕਾ ਇਸਤੇ ਕੰਮ ਕਰ ਰਿਹਾ ਸਰਜੀਤ ਵੇਰਕਾ ਹੋ ਸਕਦਾ ਇਹਦੇ ਵਿੱਚ ਕੁਝ ਹੋਰ ਕੱਢ ਕੇ ਲਿਆਵੇ ਸਾਰੇ ਇਹਦੇ ਵਿੱਚੋਂ ਨਿਕਲ ਗਏ ਬੰਦੇ ਭੋਲਾ ਇਕੱਲਾ ਰਹਿੰਦਾ ਭੋਲੇ ਨੇ ਬਰੀ ਹੋ ਜਾਣਾ ਉਹਦਾ ਸਮਾਂ ਨੇੜੇ ਆ ਤੁਹਾਡੇ ਸਾਹਮਣੇ ਆ ਕੁਝ ਕੇ ਕੇਸ ਨੇ ਬਾਕੀ ਸਾਰੇ ਕੇਸਾ ਚੋਂ ਬਰੀ ਹੋ ਗਿਆ ਕਵਾਂਟਲ ਦੇ ਕਵਾਂਟਲ ਇਹ ਬਾਲਟੀਆ ਬਖਤਾਂ ਜਿਹੜੀਆਂ ਆ ਸਾਡੀ ਧਰਤੀ ਤੇ ਆਈਆਂ ਇੱਥੋਂ ਬਣ ਕੇ ਲੋਕਾਂ ਦੇ ਖਲਕਾ ਸਈ ਸਾਡੇ ਜੋ ਆਕਾਂ ਦੇ ਦੇ ਵੀ ਨਹੀਂ ਦੇ ਡਰਗ ਨੇ ਬਹੁਤ ਬਲੀ ਲਈ ਲੋਕਾਂ ਦੀ ਲੋਕ ਗਏ ਸਮਝੌਤੇ ਹੋਏ ਤੇ ਵੱਡੇ ਬੰਦਿਆਂ ਨੇ ਖਬਰਾਂ ਦੇਣ ਵਾਲਿਆਂ ਨੇ ਜਾ ਕੇ ਫਿਰ ਬੱਚੇ ਗੱਬੇ ਬੰਦੇ ਸਾਲਸੀ ਪਾ ਕੇ ਕੈਨੇਡਾ 'ਚ ਵੱਡੀਆਂ ਗੱਲਾਂ ਚੱਲੀਆਂ ਤੇ ਐਮਪੀ ਦਾ ਭਾਈ ਇੱਕ ਫੜਿਆ ਗਿਆ ਤੇ ਬੜਾ ਕੁਸ਼ ਹੈ ਤੇ ਹੀ ਸਰਜੀਤ ਸਿੰਘ ਵੇਰਕੇ ਨੇ ਜਿਹੜਾ ਇਸ ਬੱਲ ਦੀ ਕਹਾਣੀ ਚ ਕਿਹਾ ਵੀ ਵੇਰਕੇ ਨੇ ਮੈਨੂੰ ਦੱਸਿਆ ਵੀ ਜਿਹੜਾ ਇਹ ਬੰਦੇ ਜਿਹੜੇ ਸੱਤਾ ਤੇ ਪਿੰਦੀ ਸੀ ਇਹਦੇ ਪੋਲਿਟਿਕਲ ਬੰਦਿਆਂ ਦੇ ਕੈਨੇਡਾ ਦੇ ਵਿੱਚ ਵੀ ਇਹਨਾਂ ਦੇ ਸਬੰਧ ਹੁਣ ਦੱਸਿਆ ਵੀ ਸਬੰਧ ਤੇ ਪਰ ਸੱਤਾ ਮਜੀਠੀਆ ਦੇ ਨਾਲ ਵੇਖਿਆ ਗਿਆ ਉਹਦੀ ਉਹਦੀਆਂ ਫੋਟੋਆਂ ਜਿਹੜੀਆਂ ਨੇ ਇਹ ਜਿਹੜੀਆਂ ਦਾ ਗੱਲ ਜਿਹੜੀ ਕੀਤੀ ਜਾਊ hartosh uh, bal writes that based on told me both the Punjab police and enforcement directorate have shied away from investigating key facts of the case once mazeesh's name has come up and satta te pindy both of whom are in canada clearly seems to be running against synthetic drug trade with international ramifications extending to canada our information suggests that they have close links to some canadian politicians as well ਸਿੰਪਲ ਇਨਵੈਸਟੀਗੇਸ਼ਨ ਸਟੈਪ ਚਾਹੀਦੇ ਆ ਕਿ ਉਹਨਾਂ ਦੇ ਸੈੱਲ ਫੋਨ ਰਿਕਾਰਡ ਜਿਹੜੇ ਕੱਢੇ ਜਾਣ ਇਹ ਉਸ ਤੋਂ ਬਾਅਦ ਪਤਾ ਲੱਗ ਜਾ ਕਿਹਨੂੰ ਕਿਹਨੇ ਫੋਨ ਕੀਤਾ ਰਾਮੇ ਦੀ ਤੇ ਕਬਰ ਉਸ ਤੋਂ ਬਾਅਦ ਅਗਲੇ ਹਿੱਸੇ 'ਚ ਆਪਾਂ ਗੱਲਬਾਤ ਇਸ ਤੇ ਤੇ ਪੰਜਾਬ ਦੀ ਵੱਡਾ ਜਿਹੜਾ ਡਰੱਗ ਦਾ ਡਰੱਗ ਸਮਗਲਿੰਗ ਦਾ ਜਿਹੜਾ ਪੰਜਾਬ ਤੋਂ ਸ਼ੁਰੂ ਹੋ ਕੇ ਦੂਸਰੇ ਪੰਜਾਬ ਤੱਕ ਪਹੁੰਚਿਆ ਇੱਥੇ ਉਹ ਖੂ ਖਾਤੇ ਪੈ ਗਿਆ ਕਿਸੇ ਪਾਸੇ ਨਹੀਂ ਤੇ ਇਨਵੈਸਟੀਗੇਸ਼ਨ ਦੇ ਵਿੱਚੋਂ ਕਲੀਨ ਚਿੱਟ ਜਿਹੜੀ ਭੋਲੇ ਨੂੰ ਮਿਲੀ ਹੈ 600 ਕਰੋੜ ਦੇ ਡਰੱਗ ਤੇ ਜਿਹੜੀ ਇਹ ਸਿੱਟ ਦੀ ਇੱਕ ਪੈਂਡਿੰਗ ਰਿਪੋਰਟ ਜਿਹੜੀ ਪਈ ਹੈ ਟ੍ਰਾਇਲ ਕੋਰਟ ਦੇ ਵਿੱਚ ਇਹ ਗੱਲ ਕਲੀਅਰ ਹੋਣੀ ਆ ਪਰ ਜਿਹੜੀ ਰਿਪੋਰਟ ਹੈ ਉਹ ਮੇਰੇ ਕੋਲ ਆ ਜਿਹਦੇ ਵਿੱਚ ਲਿਖਿਆ ਗਿਆ ਕਿ ਵਿਗਿਆਨਕ ਪਹਿਲੂਆਂ ਦੇ ਸਵੰਦਰ ਦੇ ਵਿਅਕਤੀਆਂ ਦੇ ਬਿਆਨਾਂ ਤੇ ਵਿਸ਼ਲੇਸ਼ਣ ਤੋਂ ਤਾਂ ਸਾਹਮਣੇ ਆਉਂਦਾ ਹੈ ਕਿ ਜਗਦੀਸ਼ ਸਿੰਘ ਔਰ ਭੋਲਾਪੁਰ ਲੱਗੇ ਜ਼ੁਰਮਾਂ ਦਾ ਵੇਰਵਾ ਵਾਪਿਸ ਬਾਅਦਬਾਦ ਨਹੀਂ ਹੈ ਤੇ ਨਾ ਹੀ ਜਾਬ ਜਾਬਤਾ ਮੁਤਾਬਕ ਬਸ ਇਹ ਤਿਆਰੀ ਹੈ ਅ ਇਹ ਉਸ ਤੋਂ ਕੀਤਾ ਜਾਏਗਾ ਤੁਹਾਡੇ ਸਾਹਮਣੇ। ਲਾਈਨ ਨੰਬਰ 2 ਦਿਓਲਜੀ ਤੁਸੀਂ ਇਰਤੇ ਜੀ ਸਰ ਸਸਿਕਾ ਗੋਲਡੀ ਜੀ ਹਾਂਜੀ ਜਦੋਂ ਜੀ ਤੁਹਾਨੂੰ ਪਤਾ ਹੀ ਆ ਇਹ ਤਾਂ ਕੋਈ ਧੋਰਾਮਾ ਹੀ ਨਹੀਂ ਹੈਗਾ ਜੋ ਵੀ ਅੱਗੇ ਵੀ ਜੋ ਹੁੰਦਾ ਮੈਂ ਕਹਿੰਦਾ ਇਹਦੇ ਬਾਰੇ ਇੰਨਾ ਕੁਝ ਕਰਨਾ ਪਹਿਲੀ ਗੱਲ ਤੇ ਪੰਜਾਬ ਦੀ ਪੋਲਟਿਕਸ ਕਰਨਾ ਚਾਹੁੰਦਾ ਮੀਡੀਆ ਦੀ ਗਲਤੀ ਸੀ ਫੇਲੀ ਹਾਂ ਉਹ ਮੀਡੀਆ ਦੀ ਜਿਹੜੀ ਬਿਲਕੁਲ ਤੁਹਾਡੀ ਗੱਲ 100% ਸਹੀ ਆ ਵੀ ਇਹ ਜੇ ਨਿਊਜ਼ਾ ਉਹਦੇ ਵਿੱਚ ਆਮ ਆਦੀ ਪਾਰਟੀ ਦੀ ਕਵਰੇਜ ਨਹੀਂ ਲਖੜੀ ਜਾਂਦੀ ਜਦ ਕੋਈ ਵੀ ਪੀਪਲ ਚੋਕੀਆਂ ਦੇ ਉਮੀਦਵਾਰਾਂ ਨੂੰ ਮਿਠਾਲਦੀ ਉਹਨਾਂ ਗਲਤ ਹੈ ਕਿ ਦੀ ਸਰਕਾਰਾਂ ਤੋਂ ਤੁਸੀਂ ਉਮੀਦ ਵੀ ਨਹੀਂ ਰੱਖਦੇ ਪਰ ਦੂਜੇ ਪਾਸੇ ਮੈਨੂੰ ਦੂਜੇ ਪਾਸੇ ਏਸੀ ਦੀ ਵੀ ਮੈਨੂੰ ਬੜੀ ਘਾਤ ਮਸੂਹ ਹੋ ਰਹੀ ਆ ਵੀ ਇੱਥੇ ਜਿਹੜਾ ਮੀਡੀਆ ਆ ਜਾਂ ਸਾਰਾ ਨਹੀਂ ਮੈਂ ਕਹਿੰਦਾ ਜਾਂ ਏਰੀਆ ਦੇ ਕੁਝ ਸੱਤਰਕਾਰ ਆ ਜਾਂ ਉਹ ਵੀ ਇੱਕ ਤਰਫ ਆ ਜੀ ਲਾਈਕ ਸੱਤਰਕਾਰੀ ਘੱਟ ਕਰਦੇ ਤੇ ਉਹ ਆਮ ਆਦੀ ਪਾਰਟੀ ਦੇ ਸਪੋਰਟਰ ਬਣ ਕੇ ਜਿਆਦਾ ਗੱਲ ਕਰਦੇ ਆ ਉਹ ਵੀ ਤੋਂਤੀ ਰਹਿੰਦੇ ਲੱਗਦੀ ਆ ਹੁਣ ਇੱਥੇ ਕਈ ਵਾਰੀ ਸਾਖਸ਼ੋ ਦੇਖੀ ਜੇ ਦੂਜਾ ਬੰਦਾ ਆਮ ਆਦੀ ਪਾਰਟੀ ਦੇ ਵਿਰੋਧ ਜਾਂ ਉਹਨਾਂ ਦੇ ਕੋਈ ਕੁਐਸਚਨ ਕਰਦਾ ਉਹ ਕੋ ਸੁਣ ਲੈ ਤਿਆਰੀ ਹੈ ਨਹੀਂ ਈਵਨ ਸੋਸ਼ਲ ਮੀਡੀਆ ਤੇ ਇਹਨਾਂ ਦੇ ਬੰਦਿਆਂ ਨੇ ਇੰਨਾ ਕਬਜਾ ਕਰ ਦਿੱਤਾ ਆ ਤੁਸੀਂ ਕੋਈ ਬੈਲੈਂਸ ਵਾਲੀ ਗੱਲ ਕਰ ਨਹੀਂ ਸਕਦੇ ਇਹ ਨਵਾਂ ਇੱਕ ਸਪੈਸਟ ਨੂੰ ਬੋਲਦੇ ਰਹੇ ਕਹਿੰਦੇ ਅਸੀਂ ਆਮ ਆਦਮੀ ਪਾਰਟੀ ਚਲਾਉਨੇ ਆ ਉਹ ਬੰਦੇ ਇੰਨੀ ਘਟੀਆ ਸ਼ਬਦਾਬਲੀ ਯੂਜ਼ ਕਰਦੇ ਆ ਫੇਕ ਆਈਡੀਆ ਬਣਾਈਆਂ ਆ ਪਰ ਪਰ ਸੱਚ ਤਾਂ ਉਹ ਬੰਦੇ ਏਦਾਂ ਜਿੰਨੇ ਸੋਸ਼ਲ ਮੀਡੀਆ ਦੇ ਇਹਨਾਂ ਲੋਕਾਂ ਤੋਂ ਦੁਖੀ ਆ ਇਹਦੇ ਲਈ ਏਦਾਂ ਨਹੀਂ ਕਿ ਮੈਂ ਕੋਈ ਹਵਾ ਚ ਗੱਲਾਂ ਕਰਦਾ ਆਮ ਬੰਦੇ ਜਿਹੜੇ ਮਰਜ਼ੀ ਤੁਸੀਂ ਟਾਕ ਤੋਂ ਰੱਖ ਲਿਓ ਤੁਹਾਡੀ ਠੀਕ ਆ ਕਿ ਉਹ ਹਲੇ ਤਕ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਜਿਹੜੇ ਲੋਕ ਉਹਦੇ ਸਪੋਰਟਰ ਰਾਜਨੀਤਿਕ ਪਾਰਟੀਆਂ ਤੱਕ ਮੰਗਦੇ ਉਹ ਕਹਿੰਦੇ ਰਾਜਨੀਤਿਕ ਪਾਰਟੀ ਨਹੀਂ ਰਾਜਨੀਤਿਕ ਪਾਰਟੀ ਦੇ ਤੌਰ ਤੇ ਵਿਸ਼ਲੇਸ਼ਣ ਨਹੀਂ ਇਹਦਾ ਹੋ ਸਕਦਾ ਆ ਗੱਲ ਦਾ ਬਹੁਤ ਵੱਡਾ ਇੱਕ ਰੇਡਕਾ ਹਾਲਾਂਕਿ ਸੱਚ ਇਹ ਕੋਈ ਰਾਜਨੀਤਿਕ ਪਾਰਟੀ ਹੈ ਜਿਹਾ ਕਾਲੀਆਂ ਕਾਂਗਰਸੀਆਂ ਦਾ ਵਿਸ਼ਲੇਸ਼ਣ ਹੋਵੇ ਉਸੇ ਤਰਜ਼ ਤੇ ਆਮ ਆਦਮੀ ਪਾਰਟੀ ਦਾ ਵਿਸ਼ਲੇਸ਼ਣ ਹੋਣਾ ਚਾਹੀਦਾ ਜੀ ਦੇਖੋ ਇਹਦਾ ਜੀ ਮੈਂ ਤੁਹਾਨੂੰ ਦੱਸਦਾ ਮੈਂ ਇਹ ਸਰਫਰ ਮੈਂ ਬਿਲਕੁਲ ਨਹੀਂ ਨਵੀਂ ਪਾਰਟੀ ਮੰਨਦਾ ਅਸੀਂ ਕਾਲੀਆਂ ਕਾਂਗਰਸੀਆਂ ਤੋਂ ਸਵਾਲ ਪੁੱਛਦੇ ਜਿਨ੍ਹਾਂ ਤੋਂ ਦੁਖੀ ਹੋਏ ਜਿਨ੍ਹਾਂ ਦੇ ਬਾਪ ਦਾਦਿਆਂ ਨੇ ਪੰਜਾਬ ਦੇ ਮੁੱਦਿਆਂ ਦਾ ਘਾੜ ਕੀਤਾ ਉਹੀ ਬੰਦੇ ਬਾਪ ਦਾਦੇ ਜਿਹੜੇ ਕਰਦੇ ਲੈ ਕੇ ਬੈਠੇ ਸਾਰੀ ਪਾਰਟੀ ਦੇ ਕਾਰਜਾ ਕੀਤਾ ਆ ਇਹ ਕਹਿੰਦੇ ਉਹਨਾਂ ਨੂੰ ਸਵਾਲ ਨਾ ਕਰੋ ਅਸੀਂ ਕਿਉਂ ਨਾ ਸਵਾਲ ਕਰੀਏ ਅਸੀਂ ਖੈਰੇ ਨੂੰ ਅਮਨਪੱਲੀ ਨੂੰ ਗੁਰਪ੍ਰੀਤ ਪੱਟੀ ਨੂੰ ਜਾਂ ਟੋੜਾ ਪਰਿਵਾਰ ਨੂੰ ਕਮਲਜੀਤ ਪਰਿਵਾਰ ਨੂੰ ਦਿਲਬਾਖ ਧੌਰ ਨੂੰ ਜਾਂ ਜਿੰਨੇ ਇਥੇ ਦਰਬਾਰੀ ਆਵੜੇ ਦੂਜੇ ਦਿਨ ਚਲੇ ਇਹਨਾਂ ਨੂੰ ਕਿਉਂ ਨਾ ਪਰਿਵਾਰਾਂ ਨੂੰ ਕਰੀਏ ਤੁਸੀਂ ਵੀ ਉਨੇ ਜੁम्मेवार ਜਿੰਨੇ ਉਹ ਲੋਕ ਇਹ ਕੱਲੇ ਕੈਪਟਨ ਬਾਦਲ ਤੋਂ ਨਹੀਂ ਦੁਖੀ ਅਸੀਂ ਦੁਖੀ ਸੀਗੇ ਉਹਨਾਂ ਦੇ ਦਲਾਲਾਂ ਹੀ ਪਰਗਟ ਦੋਸ਼ੀ ਆ ਉਨਾ ਹੀ ਖਹਿਰਾ ਦੋਸ਼ੀ ਆ ਉਨਾ ਹੀ ਤਕੀ ਜਾਂ ਉਹਨੇ ਸਾਰੇ ਦਲ ਬਦਲੂ ਆ ਇਹਨਾਂ ਵਿੱਚੋਂ ਕਿਹੜਾ ਬੰਦਾ ਬਾਹਰ ਖੜੀ ਕਰਕੇ ਕਹਿ ਲੂਗਾ ਵੀ ਮੈਂ ਨਹੀਂ ਦਲ ਬਦਲੂ ਇਮਾਨਦਾਰ ਦਲ ਬਦਲੂ ਨੀ ਕੋਈ ਲੱਭੇ ਨਹੀਂ ਜਾ ਸਕਦਾ ਨਾ ਸਿੱਧੂ ਨੇ ਕਰਪਸ਼ਨ ਕੀਤੀ ਆ ਮੈਂ ਕਹਰੇ ਕੀਤੀ ਮੈਂ ਪਰਗਟ ਨਹੀਂ ਕੀਤੀ ਹੈਗੇ ਤਾਂ ਦਲ ਬਦਲੂ ਆ ਹੁਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਸਵਾਲ ਇਹ ਆ ਵੀ ਕਿ ਕਿਹੜੇ ਪਾਰਟੀਆਂ ਨੂੰ ਵੋਟ ਪਾਉਣੀ ਆ ਆਮ ਆਦੀ ਪਾਰਟੀ ਦਾ ਪਾਰਟੀਆਂ ਨੂੰ ਵੋਟ ਪਾਣੀ ਆ ਦੂਜੀਆਂ ਦੇ ਇਹਨਾਂ ਦੇ ਵਿੱਚੋਂ ਕੋਈ ਵੀ ਜੇ ਤੁਸੀਂ ਆਮ ਆਦੀ ਪਾਰਟੀ ਦੇ ਹੱਕ ਵਿੱਚ ਗੱਲਾਂ ਕਰਦੀਆਂ ਇਹਨਾਂ ਦੇ ਆ ਕੇ ਸਪੋਰਟਰ ਬੜੇ ਖੁਸ਼ ਹੋ ਜਾਂਦੇ ਆ ਜੀ ਬਾਬਾ ਨੇ ਆਹ ਕਰਤਾ ਫਲਾਣਾ ਪਰ ਇਹ ਕਦੇ ਜਵਾਬ ਦੇਣ ਨੂੰ ਤਿਆਰ ਨਹੀਂ ਹੁੰਦੇ ਵੀ ਤੁਹਾਡੇ ਵਿੱਚ ਪਹਿਰਾ ਆ ਕੇ ਕਿਦਾਂ ਸਾਫ਼ ਹੋ ਗਿਆ ਤੁਹਾਡੇ ਉਹ ਨਵੇਂ ਸ਼ਹਿਰ ਤੋਂ ਇੱਕ ਵਾਰ ਸੱਚਾ ਖੜਾ ਇੱਕ ਵਾਰੇ ਭਤੀਜਾ ਖੜਾ ਇੱਕ ਕਾਂਗਰਸ ਵਾਲੋ ਖੜਾ ਕਾਪਲ ਨੂੰ ਖੜਾ ਉਹਨਾਂ ਨੇ ਆਫਿਸ ਪਰਿਵਾਰ ਨਹੀਂ ਦਾ ਉਹਨਾਂ ਨੇ ਕੀ ਆ ਔਰ ਗੌਰਪ੍ਰੀਤ ਭੱਟੀ ਦੇ ਦਰਬਾਰ ਭੱਟੀ ਵਾਰੇ ਚਾਚਾ ਕ ਭਤੀਜਾ ਆ ਇਹਨਾਂ ਦੀਆਂ ਰਿਸ਼ਤੇਦਾਰੀਆਂ ਕੀ ਆ ਔਰ ਕੇਹਰਾ ਸਾਹਿਬ ਦੀ ਦਰਬਾਰਾ ਸਿੰਘ ਦੇ ਘਰੇ ਰਿਸ਼ਤੇਦਾਰੀਆਂ ਇਹ ਸਾਰੇ ਮੇਰਾ ਕਹਿਣ ਦਾ ਮਤਲਬ ਆ ਵੀ ਅਸੀਂ ਤਾਂ ਚਾਹੁੰਦੇ ਸੀਗੇ ਪੰਜਾਬ ਨੂੰ ਬਈ ਬੈਲੈਂਸ ਰੱਖ ਕੇ ਸਾਰਿਆਂ ਤੋਂ ਉਜਿਆਤ ਮਿਲੇ ਪਰ ਇਹ ਬੰਤ ਇਹਨਾਂ ਨੇ ਤਾਂ ਲਿਆ ਕੇ ਬਲਵਤ ਨੂੰ ਕਰ ਦਿੱਤੇ ਅਸੀਂ ਮੈਂ ਕਹਿੰਦਾ ਵੀ ਅੱਜ ਸਵਾਲ ਇਹ ਹੋਣਾ ਚਾਹੀਦਾ ਵੀ ਸਾਰੇ ਕਾਂਗਰਸੀਆਂ ਕਾਲੀਆਂ ਨੂੰ ਵੋਟ ਪਾਈਆਂ ਨੇ ਕਿੰਨੀਆਂ ਬਲਵਤ ਨੂੰ ਨਾ ਪਾਈਆਂ ਜਾਣ ਕੋਈ ਆਮ ਆਦਮੀ ਜਾਂ ਕੋਈ ਕਾਂਗਰਸੀ ਆਕਾਲੀ ਮੇਰਾ ਨਜੀਬ ਜਾ ਰਿਹਾ ਇਹ ਸਾਰਿਆਂ ਨੂੰ ਬਾਹਰ ਕੱਢਿਆ ਜਾਣਾ ਤੁਹਾਮਾ ਛੋਟੇ ਘਰਾਣੇ ਭਾਵੇਂ ਵੱਡੇ ਘਰਾਣੇ ਅਸਲ ਤੇ ਜਿਨ੍ਹਾਂ ਨੂੰ ਕਾਂਗਰਸੀਆਂ ਆਕਾਲੀਆਂ ਦੇ ਕੋਲ ਜਾਣ ਦਾ ਦਲਾਲੀ ਕਰਮਾ ਟਾਈਮ ਨਹੀਂ ਲੱਗਾ ਉਹ ਸਾਰੇ ਅੱਜ ਇਸ ਪਾਰਟੀ ਦੇ ਕਬਜ਼ਾ ਕਰਕੇ ਬੈਠ ਗਏ ਆ ਹੁਣ ਇਹਨਾਂ ਨੂੰ ਪੁੱਛੇ ਕਿ ਜਿਹੜੇ ਹੋਰਾਂ ਨੂੰ ਜਿਹੜੇ ਪੱਕੀ ਹੋਣਾ ਉਹ ਕਿ ਇਹਨਾਂ ਲੋਕਾਂ ਨੇ ਕਿੱਦਾਂ ਜਾਇ ਬਣਾਈਆਂ ਇਹਨਾਂ ਲੋਕਾਂ ਨੇ ਕ੍ਰਾਪਟ ਨਹੀਂ ਕੀਤੀ ਜਾਂ ਇਹਨਾਂ ਦੇ ਇਹਨਾਂ ਲਈ ਉਹ ਵਖਰੇ ਕਿਤੇ ਇਹਨਾਂ ਨੇ ਰਾਹ ਖੋਲੇ ਰੱਖੇ ਇਹਨਾਂ ਦੀਆਂ ਵੀ ਅੱਜ ਕਰੋੜਾਂ ਦੇ ਵਿੱਚ ਜਾਇਦਾਦਾਂ ਆ ਇਹ ਕੋ ਮਾਨਦਾਰੀ ਦਾ ਫਾਰਮੂਲਾ ਤਾਂ ਹੈ ਨਹੀਂ ਵੀ ਉਹ ਸਾਨੂੰ ਬਾਦਲ ਕਾਪਟਨ ਮਾਰੇ ਲੱਗਦੇ ਆ ਤੇ ਇਹ ਕੰਮੇ ਵਧੀਆ ਲੱਗਣ ਲੱਗਾ ਮੈਂ ਤੋੜ ਲਈ ਇਹਨਾਂ ਦੇ ਦਮਦਦੂਆਂ ਦੇ ਜਿਹੜੇ ਕਾਂਗਰਸ ਖਾਦਗੇ ਜਿਹੜਾ ਇਹ ਮੈਂ ਤੋੜ ਇਹਨਾਂ ਦੇ ਬਾਦਲ ਕਾਪਟਨ ਇਹ ਵੀ ਹਰਾਉਣੇ ਚਾਹੀਦੇ ਫੇਰ ਪੰਜਾਬ ਦਾ ਪਲਾਹੋ ਕਰਦਾ ਨਹੀਂ ਤਾਂ ਕੁਛ ਨਹੀਂ ਹੋਣਾ ਇੱਥੇ ਤੁਸੀਂ ਬੈਠੇ ਸੀ ਇਹੀ ਐਸੀ ਦਾ ਮੈਦਾ ਹਰ ਬੋਲਣੋਂ ਹਟ ਕੇ ਕੋਈ ਚਾਰ ਫਰਮ ਨਹੀਂ ਤੇ ਕੇ ਬੋਲਣੇ ਦਿੰਦੇ ਕਿਸੇ ਨੂੰ ਚਾਰ ਫਰਮ ਜੂਗਾ ਤੁਸੀਂ ਵੀ ਇੱਥੇ ਜੇ ਇਹਨਾਂ ਤੇ ਲਿਆ ਮੇਰ ਨਾਲ ਕਰਨ ਵਿੱਚ ਨਹੀਂ ਉਹਦੇ ਨਾਲ ਗੱਲ ਹੂੰ ਹੋਰ ਬੈਸਟ ਜੀ ਮੈਂ ਤਾਂ ਇਹਨਾਂ ਕੇ ਕਿਹਾ ਥੈਂਕ ਯੂ ਥੈਂਕ ਯੂ ਇਹ ਗੱਲ ਠੀਕ ਹੈ ਗੋਲਡੀ ਜੀ ਜਿਹੜੇ ਦੂਜੀਆਂ ਪਾਰਟੀਆਂ ਚੋਂ ਬੰਦੇ ਹਟ ਕੇ ਆਮ ਆਦਮੀ ਪਾਰਟੀ ਚ ਆਏ ਨੇ ਉਹ ਸੇਮ ਪਰਿਵਾਰ ਦੇ ਸੇਮ ਹੀ ਨੇ ਇਹ ਗੱਲ ਠੀਕ ਹੈ ਹੁਣ ਖੈਰਾ ਵੀ ਗੱਲ ਉਹ ਚੱਲਦੇ ਹੋਵੇ ਉਹ ਹੈ ਗਾਜ ਜੁਮੇਦ ਬਰਾੜ ਨਾਲ ਰਿਸ਼ਤਦਾਰੀ ਹੈ ਦੋਨੇ ਦੁਵਾਰਾ ਸੋਂ ਦੇ ਘਰੇ ਰਿਸ਼ਤੇਦਾਰੀਆਂ ਨੇ ਕੀ ਉਹ ਕਦੇ ਫੇਵਰ ਨੀ ਹੋਊ ਦੂਸਰੇ ਜਿੰਨੇ ਵੀ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਬਹੁਤ ਨੇ ਕਮਲਜੀਤ ਆਪਣੇ ਕੈਪਟਨ ਦਾ ਪਰਿਵਾਰ ਹੈ ਜਿਆ ਪਤਾ ਹੀ ਨਹੀਂ ਕਿੰਨੇ ਪਰ ਜਦ ਉਹਨਾਂ ਨੂੰ ਇਹ ਸਵਾਲ ਆਪਾਂ ਪੁੱਛੇ ਸੀ ਸੰਘੇੜੇ ਹੋਣੀ ਆਇਆ ਸੀ ਉਹ ਕਹਿੰਦੇ ਵੀ ਸਾਨੂੰ ਵਧੀਆ ਬੰਦੇ ਤਾਂ ਚਾਹੀਦੇ ਨੇ ਅਸੀਂ ਕਿੱਥੋਂ ਲੈ ਕੇ ਆਈਏ ਪੋਲਿਟੀਕਲ ਸਿਸਟਮ ਦੇ ਵਿੱਚ ਅਸੀਂ ਸੈੱਟ ਹੋਣਾ ਤਾਂ ਅਸੀਂ ਨਿਕਲਾਂਗੇ ਸਾਨੂੰ ਬੰਦੇ ਕਿੱਥੋਂ ਚਾਹੀਦੇ ਨੇ ਉਹਨਾਂ ਦਾ ਇਹ ਜਵਾਬ ਸੀ ਤੋ ਰਾਜਨੀਤੀ ਜਿਹੜੀ ਆ ਰਾਜਨੀਤੀ ਤਾਂ ਇਸ ਤਰ੍ਹਾਂ ਹੀ ਚੱਲਣੀ ਆ ਪਰ ਅਸਾਦੀ ਰਾਜਨੀਤੀ ਚ ਇਸ ਘੰਟੇ ਆਪਾਂ ਗੱਲ ਕਰਨੀ ਹੈ ਪੂਰਾ ਹਫਤਾ ਹੋ ਗਿਆ ਪੂਰੀ ਕੈਂਪਨ ਸ਼ੁਰੂ ਹੋਈ ਨੂੰ ਤੇ ਤੇਜ਼ੀ ਆ ਨਾਲ ਉਤਲ-ਪੁਤਲ ਕੀ ਆ ਤੇ ਜਿਹੜੀ ਡਰਗ ਦੀ ਗੱਲ ਕੀਤੀ ਆ ਇਹਦੇ ਨਾਲ ਜੋੜ ਕੇ ਮੀਡੀਆ ਬਾਰੇ ਜੋੜ ਕੇ ਗੱਲ ਕਰ ਸਕਦੇ ਜਤਿੰਦਰਪਾਲ ਸਿੰਘ ਸਿੰਘ ਜੀ ਲਾਈਨ ਨੰਬਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਹ ਵੀ ਗੱਲ ਕਰਦੇ ਆ ਨਾ ਵੀ ਡਰੱਗ ਦਾ ਕੰਮ ਆ ਜਾਂ ਡਰੱਗ ਇਹ ਕੋਈ ਉੱਥੇ ਨਜਾਇਜ਼ ਧੰਦਾ ਤੇ ਰਹਿ ਨਹੀਂ ਗਿਆ ਹੂੰ ਇਹ ਕਿਸਮ ਦਾ ਜਾਇਜ਼ ਧੰਦਾ ਬਣ ਚੁੱਕਾ ਆ ਸ਼ਾਇਦ ਤੁਹਾਨੂੰ ਪਤਾ ਹੋਵੇ ਨਾ ਪਤਾ ਹੋਵੇ ਇੱਕ ਵਾਰੀ 1984 ਦੇ ਵਿੱਚ ਡਰੱਗ ਫੜੀ ਗਈ ਸੀ 6 ਕਰੋੜ ਦੀ ਨੇਪਾਲ ਤੋਂ ਆਉਂਦੀ ਫੜੀ ਗਈ ਸੀ ਉਹ ਤਿੰਨ ਚਾਰ ਫਾਲ ਕੇਸ ਦੇ ਲਿਆ ਤੇ ਨੇ ਇਹ ਤਹਫੀ ਦੇਤੀ ਸੀ ਵੀ ਇਹ ਜਿਹੜੀ ਚੀਜ਼ੇ ਪੁਲਿਸ ਕਲੇਮ ਕਰਦੀ ਉਹ ਹੈ ਹੀ ਨਹੀਂ। ਪਰ ਪੂਰਾ ਕੋਈ ਜਵਾਬ ਦੇ ਪੇਟ ਦੇ ਵਿੱਚੋਂ ਨਹੀਂ ਸੀ। ਸੋ ਇਸ ਵਾਸਤੇ ਜਿਹਦਾ ਡਰਗ ਦਾ ਕੰਮ ਹੈ ਤੇ ਖਾਸ ਕਰਕੇ ਜਦੋਂ ਤੁਸੀਂ ਨਾਂ ਲਿਆ ਜਿੰਨਾ ਬੰਦਿਆਂ ਦਾ ਅੰਮ੍ਰਿਤਸਰ ਦੇ ਬੰਦੇ ਲਏ ਨੇ ਤੇ ਉਹ ਦੋ-ਚਾਰ ਪਰਿਵਾਰ ਤਾਂ ਇਹੋ ਜਿਹੇ ਨੇ तकरीबन ਜਿਹੜੇ 40-50 ਸਾਲ ਤੋਂ ਇਸ ਸ਼ੀਟਰੀ ਜੰਨੇ ਆ ਰਹੇ ਨੇ ਔਰ ਉਹ ਜਸੂਸੀ ਦੇ ਧੰਦਾ ਵੀ ਕਰਦੇ ਰਹਿੰਦੇ ਆ ਤੇ ਗੱਲ ਇਹ ਸਾਡਾ ਉਹ ਹਾਲਾਤ ਉਹਦੇ ਇਹ ਬਣ ਚੁੱਕੇ ਆ ਨਸ਼ਾ ਨਹੀਂ ਮੰਨਦੇ ਉਹ ਭੰਗ ਨੂੰ ਨਹੀਂ ਇੱਥੇ ਹੀ ਇੱਥੇ ਜਿਹੜੇ ਭੰਗੇ ਇਹ ਵੀ ਨਸ਼ਾ ਨਹੀਂ ਗੀ ਇਹ ਬੰਦੇ ਵੀ ਦੇ ਨੇ ਕਿ ਮਰਦੇ ਜਿੰਨੇ ਕਿਥੇ ਮਰਨ ਦੇ ਨੇ ਕੈਨੇਡਾ ਦੇ ਵਿੱਚ ਮਰਨ ਦੇ ਨੇ ਜਦੋਂ ਦਵਾਈਆਂ ਜਾਜ ਨਜਾਇਜ਼ ਖਾ ਖਾ ਕੇ ਜੀ ਪਰ ਇਹਦੇ ਵਿੱਚ ਜੋ ਮੈਂ ਜਿੱਥੋਂ ਤੱਕ ਮੇਰੀ ਜੋ ਸੋਚ ਆ ਮੇਰੀ ਸੋਚ ਅਜ ਤੋਂ 20-25 ਸਾਲ ਪਹਿਲਾਂ ਸੀ ਇਹਦੇ ਵਿੱਚ ਅਦਾਲਤਾਂ ਦੇ ਖੁਸ਼ ਜੱਜ ਵੀ ਇਸ ਬੰਦੇ ਦੇ ਵਿੱਚ ਇਨਵੋਲਵ ਔਰ ਅਜੇ ਵੀ ਹੈਗੇ ਨੇ ਉਹ ਲੋਪ ਫਰਦੀ ਦਾ ਦਨਿਸ਼ਤਾ ਲਿਓ ਲੋਕ ਜਿਹੇ ਪਨੀਗੇ ਦਿੱਤਾ ਦਨਸਾ ਨੇ ਤੇ ਬਾਕੀ ਜਿਹੇ ਤਾਂ ਪਾਰਟੀਆਂ ਦੀ ਗੱਲ ਕੀਤੀ ਆ ਜਿਹੋ ਜਿਹੋ ਸਾਡਾ ਕਰਦਾਰ ਹੈ ਜਿਹੜਾ ਸਾਡਾ ਕਰੈਕਟਰ ਬੰਦੇ ਤੇ ਸਾਡੇ ਦੇ ਵੀ ਸਾਡੇ ਸਾਰੇ ਵਿੱਚੇ ਗਏ ਹੁਣ ਉਹ ਉੱਥੇ ਦੂਜੇ ਦੇ ਜਿਹੜਾ ਯੂਪੀ ਕੱਟ ਕੇ ਬਣਾਇਆ ਉਹਦੇ ਵਿੱਚ ਸਾਰੇ ਉਹ ਸਾਰੇ ਕਾਂਗਰਸੀ ਬਾਗੀ ਹੋ ਕੇ ਉੱਧਰ ਚਲੇ ਗਏ ਬੜੇ ਬੜੇ ਚੰਗੇ ਕਰਦਾਰ ਦੇ ਬੰਦੇ ਜਿਹੜੇ ਬੀਜੇਪੀ ਦੇ ਗਏ ਨੇ ਨਰਿੰਦਰਧਤ ਤਵਾਰੀ ਵਰਗੇ ਉਹ ਉਹ ਬੰਦਾ ਜਿਹੜਾ ਅੰਦਾ ਸੀ ਇਹ ਮੇਰਾ ਪੁੱਤ ਨਹੀਂ ਤੇ ਬੰਦੇ ਇਹੋ ਜਿਹੇ ਗਏ ਨੇ ਕਾਂਗਰਸ ਦੇ ਵਿੱਚ ਵੀ ਹਾਂ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜੀ ਸਰ ਸਾਰ ਮਾਰਗਟ ਲਾਈਨ ਨੰਬਰ 5 ਸਤਿਕਾਰ ਜੀ ਗਿਰਸਾ ਸਤਿਕਾਰ ਜੀ ਸਾਹਿਬ ਤੁਹਾਡੇ ਬੜੇ ਇੰਪੋਰਟੈਂਟ ਵਿਸ਼ੇ ਨੇ ਅੱਜ ਜਿਹੜੇ ਢੀਲ ਕਰ ਰਹੇ ਹੋ ਇੱਕ ਤਾਂ ਜੋ ਇੰਡੀਆ ਦੇ ਮੀਡੀਆ ਬਾਰੇ ਡਿਟੇਲਸ ਜਿਸੀਆਂ ਨੇ ਇੰਡੀਆ ਕੇ ਬੜੀਆਂ ਫੈਂਟਾਸਟਿਕ ਔਰ ਬੜੀਆਂ ਨੇ ਕਿਸ ਤਰ੍ਹਾਂ ਆਪਸ ਵਿੱਚ ਸਾਰੇ ਮੀਡੀਆ ਦੀ ਆਪਸੀ ਜੁੜੀਆਂ ਮਿਲੀਆਂ ਹੋਈਆਂ ਨੇ ਔਰ ਇਹ ਨਹੀਂ ਪਤਾ ਲੱਗਦਾ ਮੈਂ ਕਿਹੜਾ ਕਿਹੜੀ ਪਾਰਟੀ ਆ ਪ੍ਰਚਾਰ ਕਰ ਰਿਹਾ ਹੈ ਕਿਹੜੀ ਥਿਊਰੀ ਦਾ ਪ੍ਰਚਾਰ ਕਰ ਰਿਹਾ ਹੈ। ਹਮਮ ਔਰ ਉਹ ਸਾਰਾ ਮੀਡੀਆ ਐਡਾ ਲੱਗਿਆ ਜਿਵੇਂ ਤੁਸੀਂ ਪਿਕਚਰ ਬੰਨੀ ਹੈ ਕਿ ਸਾਰਾ ਮੀਡੀਆ ਦਾ ਰੋਜ਼ਗਾਰ ਜਿਹੜਾ ਹੈ ਉਹ ਉਹ ਆਪਣਾ ਪੈਸੇ ਤੇ ਕਿ ਕਿਸ ਤਰ੍ਹਾਂ ਕਿਸ ਪਾਰਟੀ ਤੋਂ ਕਿਸ ਵਿਅਕਤੀ ਤੋਂ ਕਿਵੇਂ ਪੈਸੇ ਲੈਣੇ ਨੇ ਤੇ ਕਿਵੇਂ ਉਹਦਾ ਪ੍ਰਚਾਰ ਕਰਨਾ ਹੈ। ਮੀਡੀਆ ਦੀ ਥਿਊਰੀ ਜਿਹੜੀ ਮੈਂ ਸਮਝਿਆ ਇਹ ਬਾਹਰਲੇ ਮੁਲਕਾਂ ਤੇ ਵੀ ਲਾਗੂ ਹੁੰਦੀ ਹੈ ਸਾਡੇ ਮੁਲਕ ਤੇ ਵੀ ਲਾਗੂ ਹੋ ਰਹੀ ਹੈ بڑے ਲੋਕਵੇਂ ਢੰਗ ਨਾਲ ਆਪ ਦਾ ਪ੍ਰਚਾਰ ਕੀਤਾ ਜਾ ਰਿਹਾ ਕਈ ਆਪਣਾ ਰੇਡੀਓ ਸਟੇਸ਼ਨਾਂ ਦੇ ਔਰ ਮੈਂ ਨਾ ਨਹੀਂ ਲੈਣਾ ਚਾਹੁੰਦਾ ਔਰ ਉਹ ਇੰਡੀਆ ਤੋਂ ਉਹਨਾਂ ਬੰਦਿਆਂ ਨੂੰ ਰੇਡੀਓ ਤੇ ਲੈ ਕੇ ਆਉਂਦੇ ਨੇ ਜਿਹੜੇ ਕਿ ਪਾਰਟੀ ਦੇ ਵਿਸਥਾਰ ਬਾਰੇ ਦੱਸ ਕਰਨ ਕਿ ਆਪ ਪਾਰਟੀ ਕੀ ਕਰੇਗੀ ਆਪ ਪਾਰਟੀ ਦਾ ਏਜੰਡਾ ਕੀ ਹੋਏਗਾ ਆਪ ਪਾਰਟੀ ਦੇ ਲੀਡਰ ਕਿਵੇਂ ਚੁਣੇ ਗਏ ਨੇ ਤੇ ਆਪ ਪਾਰਟੀ ਦਾ ਕੰਮ ਕਰਨ ਦਾ ਢੰਗ ਕੀ ਹੋਏਗਾ ਔਰ ਕਾਲਰ ਉਹੀ ਲਏ ਜਾਂਦੇ ਨਹੀਂ ਜਿਹੜੇ ਕਿ ਆਪ ਪਾਰਟੀ ਦੇ ਸਪੋਰਟਰ ਹੁੰਦੇ ਨੇ ਉਹ ਆਪ ਪਾਰਟੀ ਬਾਰੇ ਪੂਰੀ ਇਨਫੋਰਮੇਸ਼ਨ ਹੈ ਤੇ ਲੋਕਾਂ ਨੂੰ ਸਪਲਾਈ ਕਰਦੇ ਨੇ ਹਮਮ ਇਹਦੇ ਤੇ ਫੇਸਬੁੱਕ ਮੈਸੇਜ ਆ ਰਿਹਾ ਹੈ ਕਿ 50 ਰੁਪਏ ਦਾ ਇੱਕ ਨੋਟ ਜਿਹੜਾ ਹੈ ਉਹ ਸਰੇ ਜਗ੍ਹਾ ਤੇ ਪਛਾਤਾ ਜਾਵੇ ਤਾਂ ਕਿ ਆਪ ਪਾਰਟੀ ਲਈ ਪੈਸੇ ਇਕੱਠੇ ਕਰਕੇ ਪੰਜਾਬ ਭੇਜੇ ਜਾ ਸਕਣ। ਤੋਂ ਇਸ ਤਰ੍ਹਾਂ ਦਾ ਪ੍ਰਚਾਰ ਜਿਹੜਾ ਜਿਸ ਤਰ੍ਹਾਂ ਹੋ ਰਿਹਾ ਹੈ ਮੈਂ ਸਮਝਦਾ ਕਿ ਆਪ ਪਾਰਟੀ ਲਈ ਜੇ ਪ੍ਰਚਾਰ ਦੇ ਸਾਧਨ ਇਹ ਹਨ ਤੇ ਇਹਨਾਂ ਸਾਧਨਾਂ ਤੇ ਵੀ ਪੈਸੇ ਖਰਚੇ ਜਾ ਰਹੇ ਨੇ। ਕੌਣ ਪੈਸੇ ਖਰਚ ਰਿਹਾ ਹੈ ਪੈਸੇ ਆ ਰਹੇ ਨੇ ਇਹ ਸੋਚਣ ਵਾਲੀ ਗੱਲ ਹੈ। ਤੇ মিডিਆ ਜਿਹੜਾ ਉਹ ਮੈਂ ਸਮਝਦਾ ਸਾਰਾ মিডিਆ ਹੀ ਸ਼ੱਕ ਦੇ ਘੇਰੇ ਚ ਆਇਆ ਹੋਇਆ ਹੈ ਔਰ মিডিਏ ਨੂੰ ਆਪਣੀ ਪੋਜੀਸ਼ਨ ਜਿਹੜੀ ਆ ਕਰਨੀ ਚਾਹੀਦੀ ਜੀ ਸਤਿਕਾਰ ਥੈਂਕ ਯੂ। ਜੀ ਲਾਈਨ ਨੰਬਰ ਕਿ ਸਤਿ ਸ਼੍ਰੀ ਬਾਈ ਜੀ। ਸਤਿ ਸ਼੍ਰੀ ਅਕਾਲ ਜੀ ਰਾਜਵੀਰ ਜੀ। ਬਾਈ ਜੀ ਬਿਓ ਸਭ ਲਾ ਕੇ ਗਏ ਮੈਂ ਤਾਂ 30 ਸੈਕਿੰਡ ਹੀ ਮਤਲਬ ਮੈਂ ਕਹਦਾ ਚਲੋ ਆਮ ਆਦਮੀ ਵਾਲੇ ਚ ਉਹ ਮਾੜਾ ਉਹ ਵੀ ਆ ਗਿਆ ਮਾੜਾ। ਫਿਰ ਚੰਗੇ ਜਾਂ ਤਾਂ ਦੱਸ ਜਾ ਕਰਨ ਵੀ ਬਾਈ ਜੀ ਆ ਚੰਗੇ ਆ ਇਹਨਾਂ ਨੂੰ ਵੋਟ ਪਾ ਦਿਓ ਬਦਲਾਵ ਚਾਹੁੰਦੇ ਆ ਇਹ ਨਾ ਮੁੱਛਤ ਮਾਰ ਉਹ ਤੋਂ ਬਦਲ ਕੇ ਤੀਜਿਆਂ ਨੂੰ ਪਰਪਿਆ ਕੇ ਤਾਂ ਵੇਖ ਲਓ ਫਿਰ ਵੀ ਜਿਹੜਾ ਚੰਗਾ ਅਗਵਾਈ ਕਰਦਾ ਉਹਦੇ ਨਾਲ ਦੋ ਜੇ ਕੋਈ ਉੱਚੇ ਹੁੰਦੇ ਆ ਫਰਕ ਬੈਸਕ ਦਾ ਬਹੁਤ ਪੈ ਜਾਂਦਾ ਤੇ ਗੱਲ ਇਹ ਆ 15 16 ਪਾਰਟੀਆਂ ਫਿਰਦੀਆਂ 25 ਸਾਲੀ ਸਭ ਨੂੰ ਬਦਲ ਦਿਓ ਤੇ ਆਪੇ ਕੋਈ ਨਾ ਕੋਈ ਤਾਂ ਚੰਗਾ ਕੰਮ ਕਰੂਗਾ ਵੀ ਮੈਂ ਕਹਿਣਾ ਸੀ ਵੀ ਤੁਸੀਂ ਹਰ ਆ ਪਾਰਟੀ ਮਾੜੀ ਖੈਰਾ ਰਲ ਗਿਆ ਫਲਾਨਾ ਤੁਸੀਂ ਇਹ ਵੀ ਦੱਸ ਜਿਆ ਕਰੋ ਵੀ ਜੀ ਆ ਮਾੜੇ ਆ ਇਹਨਾਂ ਨੂੰ ਵੋਟ ਮਾੜਾ ਫਿਰ ਤਾਂ ਆਪਾਂ ਨੂੰ ਪਤਾ ਨਾ ਖੇਡਣਾ ਨਾ ਖੇਡਣ ਦੇਣਾ ਕੁੱਤੀ ਪੱਟਣੀ ਵਾਲਾ ਕੰਮ ਹੁੰਦਾ ਤੇ ਮੇਰਾ ਭਾਈ ਦੱਸ ਜ਼ਰੂਰ ਜਾਇਆ ਕਰੇ ਵੀ ਮੇਰੇ ਹਿਸਾਬ ਨਾਲ ਆਹ ਚੰਗੇ ਇਹਨਾਂ ਨੂੰ ਵੋਟ ਪਾ ਦਿਓ ਨਹੀਂ ਤਾਂ ਫਿਰ ਕਾਲੀ ਕਾਂਗਰਸੀ ਰਹਿ ਗਏ ਮਗਰ ਜਿਹੜੇ ਪਹਿਲਾਂ ਜਿੰਨਾਂ ਨੂੰ ਦੇਖ ਹੀ ਲਿਆ ਹੁਣ ਤੱਕ ਆ ਲੋਕ ਨੰਗ ਕੀਤਾ ਪਾਇ ਭੁੱਖੇ ਮਰਦੇ ਉਥੇ ਕੋਈ ਤੇ ਜ਼ਿਆਦਾ ਨਹੀਂ ਬੋਲਣਾ ਮੇਰਾ ਭਾਈ ਦੁਆਰਾ ਇਹ ਚੱਲ ਇਹਨਾਂ ਨੂੰ ਨਾ ਵੀ ਜਿਹੜੇ ਚੰਗੇ ਰਹਿ ਗਏ ਪੌਂਟ ਤੇ ਹੁਣ ਭਾਈ ਕਹਿੰਦਾ ਵੀ ਇਹਨਾਂ ਨੂੰ ਨਾ ਪਾਓ ਫਿਰ ਕਿਹਨੂੰ ਪਾਈਏ ਲੰਗੂ ਗੱਲ ਸਾਹਿਬ ਇੰਨਾ ਹੀ ਕਹਿਣਾ ਸੀ ਧੰਨਵਾਦ ਜੀ ਲਾਈਨ ਨੰਬਰ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਹਾਂਜੀ ਵੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਦੇਖੋ ਭਾਜੀ ਹੁਣ ਗੱਲ ਕਹਿ ਕੇ ਜਾਇਆ ਦੇਖੋ ਗਲਤ ਹੈਗੀ ਬਦਲਾ ਆ ਸਾਲਾਂ ਬਾਅਦ ਦਾ ਮੇਲਾ ਆਉਣਾ ਜੇ ਉਹ ਬੰਦੇ ਸਾਨੂੰ ਨਾ ਸਹੀ ਬੈਠਣਗੇ ਤੇ ਅਸੀਂ ਉਹਨਾਂ ਨੂੰ ਉਹ ਦੀ ਉਹ ਚੇਂਜ ਕਰ ਸਕਦੇ ਆ ਔਰ ਜੇ ਇਸ ਵੇਲੇ ਅਸੀਂ ਉਹਨਾਂ ਨੂੰ ਗਲਤ ਕਹਿ ਕੇ ਦੂਜੇ ਬੰਦਿਆਂ ਦੀ ਸਪੋਰਟ ਕਰਨ ਵਾਲੀ ਗੱਲ ਹੋ ਜਾਂਦੀ ਜੇ ਤੁਹਾਨੂੰ ਲੱਗਦਾ ਠੀਕ ਆ ਉਹਨਾਂ ਦੀ ਸਪੋਰਟ ਕਰੋ ਪਰ ਜੇ ਹੁਣ ਗੱਲ ਬਦਲ ਗਈ ਗਲਤੀ ਕੌਣ ਨਹੀਂ ਕਰਦਾ ਮੈਂ ਗਲਤੀ ਕੀਤੀ ਜ਼ਿੰਦਗੀ ਕਈ ਵਾਰ ਕੀਤੀ ਆ ਉਹਨੂੰ ਸੁਧਾਰਿਆ ਵੀ ਆ ਬਾਅਦ 'ਚ ਕੋਈ ਬੰਦਾ ਹੱਥ ਖੜਾ ਉਹ ਸਾਡਾ ਕਿ ਲੇਖਾ ਉਹਨਾਂ ਨੇ ਕੀਤੀਆਂ ਹੋਣ ਜਾਂ ਮੰਨ ਲਓ ਜੇ ਰਿਸ਼ਤੇਦਾਰੀ ਕੇ ਤਾਂ ਮਾੜੇ ਹੋ ਗਏ ਆ ਰਿਸ਼ਤੇਦਾਰੀ ਹੋਣੀ ਚੀਜ਼ ਆ ਤੁਹਾਡਾ ਇਸ ਕਰਕੇ ਸਾਨੂੰ ਲਿਆ ਕੇ ਦੇਖੀਏ ਜੀ ਨਾ ਚੱਲੂਗਾ ਕੰਮ ਤੇ ਕੋਈ ਗੱਲ ਨਹੀਂ 4-5 ਸਾਲ ਬਾਅਦ ਫੇਰ ਸਹੀ ਫੇਰ ਵਾਰੀ ਆ ਜਾਣੀ ਫੇਰ ਜਿਹੜੇ ਚੰਗੇ ਲੱਗਣਗੇ ਉਹਨਾਂ ਦੀ ਆਪਾਂ ਸਪੋਰਟ ਕਰਦਾਂਗੇ ਅਰ ਇਸ ਵੇਲੇ ਆਪਾਂ ਨੂੰ ਇਹਨਾਂ ਨੂੰ ਵਕਤ ਪੁੱਲਪ ਲਾ ਕੇ ਸਾਰਾ ਕੁਝ ਦੇਖੋ ਗੱਲ ਇਹ ਹੁਣ ਇਹ ਜ਼ੋਰ ਕਰ ਰਹੀ ਆ ਲੋਕ ਬਦਲਾਅ ਦੇ ਹੱਕ ਚ ਖੜੇ ਆ ਬਸ ਗੱਲ ਇਹ ਇੱਥੇ ਖੜੀ ਆ ਬਦਲਾਅ ਬਦਲਾਅ ਬਦਲਾਅ ਬਦਲਾਅ ਪਿਛਲੇ 47 ਤੋਂ ਲੈ ਕੇ ਬਹੁਤ ਸਮਾਂ ਹੋ ਗਿਆ ਤੇ ਉਹ ਮੁਰਮੁਰ ਕੇ ਇੱਕੋ ਹੀ ਗੱਲ ਮੁਰਮੁਰ ਕੇ ਇੱਕੋ ਗੱਲ ਤੇ ਹੁਣ ਲੋਕ ਬਦਲਾਅ ਦੇ ਰੌਂਚੇ ਹੀ ਨੇ ਬਸ ਚੰਗਾ ਮਾੜਾ ਹੁਣ ਜਿਸ ਤਰ੍ਹਾਂ ਉੱਥੇ ਵੇਗ ਹੈ ਮੈਨੂੰ ਨਹੀਂ ਲੱਗਦਾ ਕੋਈ ਕਾਫੂਸ ਉੱਥੇ ਖੜਨਾ ਜਿਸ तरह ਦੀਆਂ ਗੱਲਾਂ ਚੱਲ ਰਹੀਆਂ ਨੇ ਜਿਸ ਤਰ੍ਹਾਂ ਆਪੀਨੀਅਨ ਪੋਲ ਨੇ ਜਿਸ ਤਰ੍ਹਾਂ ਦੇ ਇਕੱਠ ਨੇ ਜੇ ਉਹ ਵੋਟਾਂ 'ਚ ਬਦਲਦੇ ਐ ਆਮ ਆਦਮੀ ਪਾਰਟੀ ਦੇ ਇਕੱਠ ਨੇ ਜਿਹੜੇ ਉਹ ਜੇ ਉਹ ਵੋਟਾਂ 'ਚ ਬਦਲਦੇ ਐ ਫੇਰ ਸੰਭਾਵੀ ਉਹਨਾਂ ਦੀ ਜਿੱਤ ਲੱਗ ਰਹੀ ਹੈ ਪਰ ਕੱਲ ਨੂੰ ਕੀ ਹੋ ਪਰ ਇੱਕ ਬਹੁਤ ਵੱਡੀ ਸੋਚ ਨਾ ਵੋਟਾਂ ਦੇ ਵਿੱਚੋਂ ਦੂਰ ਚਲੇ ਗਈ ਜਿਹੜੀ ਸੋਚ ਦੇ ਆਪਾਂ ਬਹੁਤ ਪ੍ਰੋਬਲ ਨੇੜੇ ਸੀ ਉਹਦੀ ਵੀ ਮੈਂ ਗੱਲ ਕਰਨੀ ਆ ਉਸ ਤੋਂ ਪਹਿਲਾਂ ਸਾਡਾ ਦਲਵੀਰ ਸਿੰਘ ਗਰੇਵਾਲ ਆਸਟ੍ਰੇਲੀਆ ਤੋਂ ਗੱਲਬਾਤ ਕਰਨੀ ਚਾਹੁੰਦੇ ਆ ਲਾਈਨ ਨੰਬਰ ਅ ਕਾ ਖਾਲਸਾ ਵੈਕੁਰਜੀਤ ਜੀ ਖਾਲੀ ਗਰੇਵਾਲ ਸਾਹਿਬ ਗਰੇਵਾਲ ਸਾਹਿਬ ਮੈਂ ਦੇ ਮੈਲਬਨ ਸ਼ਹਿਰ ਤੋਂ ਬੋਲ ਰਿਹਾ ਤੇ ਇੱਥੇ ਹੋ ਗਏ ਤੇ ਮੇਰਾ ਜੀ ਪਿਛਲਾ ਅਸ਼ੋਕਰ ਸਾਡਾ ਲੁਧਿਆਣਾ ਡਿਸਟ੍ਰਿਕਟ ਤੋਂ ਆ ਪਰਖੰਦੇ ਜਿਹੜੇ ਦਾਦੇ ਆ ਯੂਪੀ ਦੇ ਨਾਨਕ ਮਤਾ ਸਾਹਿਬ ਦੇ ਕੋਲ ਸਾਡਾ ਪੰਜਾਬ ਸਾਲ ਤੋਂ ਸੇ ਆਪਣੀ ਕਮਿਊਨਿਟੀ ਬੈਠੀ ਆ ਔਰ 150 ਕਿਲੋਮੀਟਰ ਦੀ ਬੈਲਟ ਆ ਕਾਸ਼ੀਪੁਰ ਤੋਂ ਲੈ ਕੇ ਲਖੀਮਪੁਰ ਖੀਰੀ ਤੱਕ ਜਾ ਕੇ ਉਹ ਆਪਣੇ ਸਾਡੇ ਸਰਦਾਰਾਂ ਦੀ ਹੈ ਜੀ ਹੁਣ ਇਸ ਬੈਲਟ ਦੇ ਵਿੱਚ ਮੈਨੂੰ ਕਿਤੇ ਵੀ ਆਮ ਆਦਮੀ ਪਾਰਟੀ ਦੀ ਕੋਈ ਮਤਲਬ ਐਕਟੀਵਿਟੀ ਨਹੀਂ ਹੈ ਤੇ ਬਿਲਕੁਲ ਨਹੀਂ ਲੈ ਹ ਹ ਤੁਸੀਂ ਦੇਖੋ ਕਿ ਹੁਣ ਤੁਸੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਅਸੀਂ ਲਾਹ ਹਾਇਤ ਬਣੀ ਹੋਈ ਹੈ ਕਿ ਆਮ ਆਦਮੀ ਪਾਰਟੀ ਵੀ ਸਾਡਾ ਬਾਰਡਰ ਏਰੀਆ ਤੇ ਲੱਗਦਾ ਯੂਪੀ ਵੀ ਸਾਡਾ ਸਾਡੇ ਕੋਲ ਹੈ ਉੱਥੇ ਕੁਝ ਵੀ ਨਹੀਂ ਕੋਈ ਪੁੱਛਦਾ ਨਹੀਂ ਆਮ ਆਦਮੀ ਪਾਰਟੀ ਕਿਹੜੀ ਪਾਰਟੀ ਕੋਈ ਨਹੀਂ ਕਿਸ ਨੂੰ ਪਤਾ ਵੀ ਨਹੀਂ ਪਾਰਟੀ ਕਿਹੜੀ ਹੈ ਤੇ ਜਿਹੜੀ ਪਾਰਟੀ ਯੂਪੀ ਜਿੱਤੇ ਉਹਨਾਂ ਦਾ ਹਿੰਦੂ ਜੈਂਡਰ ਉੱਤੇ ਚੱਲਦੀ ਹੈ ਜਿਉਂ ਯੂਪੀ ਉਪਰਾਂਚਲ ਦੇ ਕਾਮਯਾਬ ਨਹੀਂ ਹੋ ਸਕਦੀ ਪੰਜਾਬ ਥੀਮੇ ਕਾਮਯਾਬ ਹੋ ਸਕਦੀ ਹੈ ਮੈਨੂੰ ਸਮਝ ਤੋਂ ਮੇਰੇ ਬਾਹਰ ਹੈ ਗੱਲ ਕਿ ਪੰਜਾਬ ਜਿਹਨਾਂ ਸਕਦੇ ਪਾਰਟੀ ਕੱਢੀ ਜਾਵੇ ਜਿਹੜੀ ਪੰਜਾਬ ਵਿੱਚ ਹੌਲੀ ਹੌਲੀ ਅੱਥੇ ਲਿਆਂਦਾ ਜਾਵੇ ਹੌਲੀ ਹੌਲੀ ਜਿਹੜੀ ਪੰਜਾਬ ਦੀ ਜਿਹੜੀ ਪਾਰਟੀ ਨੂੰ ਖਤਮ ਕੀਤਾ ਜਾਵੇ ਲੈਨ ਲਾਇਆ ਜਾਵੇ ਉੱਥੇ ਕਿ ਨਿਊਟਰਲ ਪਾਰਟੀ ਲਿਆ ਕੇ ਹੌਲੀ ਹੌਲੀ ਆਉਣ ਵਾਲੇ ਸਾਲਾਂ ਦੇ ਵਿੱਚ ਫਿਰ ਅਕਾਲੀ ਦਲ ਦਾ ਪੰਜਾਬ ਦੇ ਨਾਮ ਖਤਮ ਕਰ ਦਿੱਤਾ ਜਾਵੇ ਤੇ ਕਰ ਰਿਹਾ ਹੈ ਠੀਕ ਹੈ ਜੀ ਉੱਥੇ ਬੜੀਏ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਡੀਐਮ ਮੈਨੇਜ ਕਰ ਰਿਹਾ ਉੱਥੇ ਕੀ ਕੀਤਾ ਹੈ ਅੰਦਰ ਚਲੋ ਇੱਕ ਤਾਂ ਜਿੱਥੇ ਆਪਾਂ ਮੇਨ ਗੁਰਦੁਆਰਾ ਸਾਹਿਬ ਤੇ ਮੱਥਾ ਟੇਕਦੇ ਆ ਉੱਥੇ ਤਾਂ ਮੈਂ ਮੈਂ ਬਚਪਨ ਤੋਂ ਉੱਥੇ ਜਾਂਦਾ ਛੋਟੇ ਹੁੰਦਿਆਂ ਤੋਂ ਉੱਥੇ ਇੱਕ ਨਮਾ ਉਹਨਾਂ ਨੇ ਪੂਰਾ ਅੰਦਰ ਨਾਲ ਬਣਾਇਆ ਜਿਹੜਾ ਪੂਰੀ ਜਿਹੀ ਬਣਾਈ ਹੈ ਉੱਥੇ ਉਹਨਾਂ ਨੇ ਪੈਸੇ ਸਿੱਟਣ ਦਾ ਕੰਮ ਸ਼ੁਰੂ ਕਰ ਲਿਆ ਕਿਉਂਕਿ ਜਿਹੜੀ ਉਹਦੀ ਮਾਇਆ ਆ ਸਾਰੀ ਉਹ ਡੀਐਮ ਦੇ ਅੰਡਰ ਜਾਂਦੀ ਹੈ ਜੀ ਤੇ ਮਤਲਬ ਇਹ ਜੇ ਤੁਸੀਂ ਆਪ ਦੇਖਣਾ ਪਊਗਾ ਵੀ ਆਪਾਂ ਨੀਰਾਪੁਰੇ ਇਹ ਨਹੀਂ ਕਹਿ ਸਕਦੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆ ਕੇ ਆਮ ਆਦਮੀ ਪਾਰਟੀ ਕੋਈ ਬਤਨ ਕੀ ਕਰ ਦਊਗੀ ਰੈਵੋਲੂਸ਼ਨ ਇਹ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਇੱਕ ਗੱਲ ਦੇਖੋ ਠੀਕ ਹੈ ਭਗਵੰਤ ਮਾਨ ਕ라우ਡ ਤਾਂ ਸਕਦਾ ਹੈ ਦੇ ਵਿੱਚ ਕੁਆਲਿਫਿਕੇਸ਼ਨ ਕੀ ਹੈ ਉਹ ਕੋਈ ਵਧੀਆ ਨੀਤੀ ਲੈ ਕੇ ਆ ਸਕਦਾ 3M ਰੂਲਸ ਐਂਡ ਰੈਗੂਲੇਸ਼ਨ ਕਰਾਲਿਆ ਨਹੀਂ ਉਹ ਗੱਲਾਂ ਜਰੂਰ ਕਰ ਸਕਦਾ ਤਾਂ ਲੋਕੀ ਪਿੱਛੇ ਮੈਂ ਕਹਿੰਦਾ ਤੁਸੀਂ ਬੰਦੇ ਚੁਣੋ ਪਾਰਟੀਆਂ ਹਰ ਪਾਰਟੀ ਦਾ ਚੰਗਾ ਬੰਦਾ ਚੁਣ ਕੇ ਸਾਹਮਣੇ ਲੈ ਕੇ ਆਓ ਜੇ ਤੁਸੀਂ ਪੰਜਾਬ ਦਾ ਪਲਾ ਕਰਨਾ ਹੈ ਕੋਈ ਫਾਇਦਾ ਨਹੀਂ ਜੇ ਤੁਸੀਂ ਆਮ ਆਦਮੀ ਪਾਰਟੀ ਦੇ ਪਿੱਛੇ ਲੱਗੇ ਹੋ ਨਾ ਪਾਣੀ ਦੇ ਮਸਲੇ ਦੇਖਣੇ ਨੇ ਹਾਂ ਸਾਡੇ ਤੋਂ ਬਦਲ ਸਾਡੇ ਹੈ ਬਦਲ ਤਾਂ ਫਰਮਾਨ ਹੈਗੇ ਨੇ ਸਰਦਾਰ ਮਾਨ ਬਦਲ ਨਹੀਂ ਹੋ ਸਕਦਾ ਪੰਜਾਬ ਦਾ ਉਹ ਪਾਣੀਆਂ ਮਸਲੇ ਤੇ ਵੀ ਖੜਨਗੇ ਉਹ ਹਰ ਮਸਲੇ ਤੇ ਸਿੱਖਾਂ ਦੇ ਨਾਲ ਖੜਨਗੇ ਪੰਜਾਬ ਦੇ ਨਾਲ ਖੜਨਗੇ ਮੈਨੂੰ ਨਹੀਂ ਲੱਗਦਾ ਜਿੱਥੇ ਜੇ ਭਗਵੰਤ ਸਾਨ ਮਾਨ ਹਰ ਮਸਲੇ ਦੇ ਉੱਤੇ ਜਾਂ ਆਮ ਆਦਮੀ ਪਾਰਟੀ ਖੜ ਸਕਦੀ ਆ ਯੂਪੀ ਉਪਰਾੰਚਲ ਤੋਂ ਨਹੀਂ ਫੇਰ ਪੁੱਛਦਾ ਨਹੀਂ ਉਹ ਤੇ ਬੰਦੇ ਨਹੀਂ ਹੈ ਕੋਈ ਇਹ ਗਾਇ ਉਹ ਕੀ ਹੈ ਪਾਰਟੀ ਹਮਸਾ ਪੰਜਾਬ ਜਾ ਕੇ ਇਹਨਾਂ ਨੇ ਪੂਰਾ ਆਪਣਾ ਹਾਈ ਬਣਾਇਆ ਹੋਇਆ ਔਰ ਇਹਨਾਂ ਕੋਣ ਇਹਨਾਂ ਦੇ ਪਿੱਛੇ ਆ ਕੋਣ ਇਹਨਾਂ ਨੂੰ ਚਲਾ ਰਿਹਾ ਕੋਣ ਉਹਨਾਂ ਨੇ ਐਸਟੈਬਲਿਸ਼ ਕਰਾ ਰਿਹਾ ਪੰਜਾਬ ਦੇ ਵਿੱਚ ਸਾਲਾਂ ਸਾਹਮਣੇ ਆਉਣ ਸੋ ਮਚ ਤੁਸੀਂ ਬਹੁਤ ਦੂਰੋਂ ਫੋਨ ਕੀਤਾ ਸਰ ਸਰ ਥੈਂਕ ਯੂ ਜਿਸਟ੍ਰਿਕਟ ਸਾਹਿਬ ਦੇ ਪੈਸੇ ਡੀ ਐਮ ਉਹ ਕਹਿ ਰਹੇ ਸੀ ਮੈਂ ਆਪਣੇ ਤੌਰ ਤੇ ਇਸ ਦਾ ਜਵਾਬ ਇੱਕ ਦੇ ਦੇਵਾਂ ਵੀ ਯੂਪੀ ਦੇ ਵਿੱਚ ਉਹਨਾਂ ਨੇ ਅਫੀਸ਼ੀਅਲੀ ਲਾਂਚ ਨਹੀਂ ਕੀਤਾ ਇਸ ਪਾਰਟੀ ਨੂੰ ਸ਼ੁਰੂ ਨਹੀਂ ਕੀਤਾ ਕਿਉਂਕਿ ਯੂਪੀ ਬਹੁਤ ਵੱਡੀ ਹੈ ਲਈ ਸਮਾਂ ਬਹੁਤ ਘੱਟ ਸੀ ਦਿੱਲੀ ਤੋਂ ਬਾਅਦ ਉਹਨਾਂ ਨੇ ਪੰਜਾਬ ਵਿੱਚ ਜਾਂ ਉਹਨਾਂ ਦੇ ਮੰਚੇ ਉਹ ਵਿੱਚ ਛੋਟਾ ਸੂਬਾ ਸਿਆਣੇ ਲੋਕ ਨੇ ਜਾਂ ਉਹਨਾਂ ਦੇ ਮੰਚ ਕਿਉਂਕਿ ਸਾਰਾ ਪੋਲੀਟਿਕਲ ਉਹਨਾਂ ਨੇ ਬੇਨਤੀਆਂ ਬੇਨਤੀਆਂ ਕਰਕੇ ਇਸ ਨੂੰ ਲਾਂਚ ਕੀਤਾ ਪੰਜਾਬ 'ਚ ਔਰ ਪਿਛਲੇ ਤਿੰਨ ਜਾਂਦੇ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੇ ਜਾਂਦਾ ਉਹ ਕੰਮ ਇੱਥੇ ਹੋ ਰਿਹਾ ਤੇ ਯਸ ਇਹ ਗੱਲ ਬਹੁਤ ਵਧੀਆ ਇਹਨਾਂ ਕਿ ਕਿ ਸਰਦਾਰ ਮਾਨ ਕਿੱਥੇ ਆ ਫਿਰ ਜਿਹੜਾ ਸਦਾ ਹੀ ਨੰਗੇ ਧੜ ਖੜਦਾ ਰਿਹਾ ਉਹਦੀ ਸੋਚ ਫਿਰ ਕਿੱਥੇ ਆ ਜਾਂ 78 ਇਤਿਹਾਸ ਦੀ ਸੋਚ ਕਿੱਥੇ ਚਲੀ ਜਿਹਦੇ ਥਰੂ ਪੰਜਾਬ ਗਿਆ ਤੇ ਜਿਸ ਸੰਤ ਦੇ ਇਕੱਠ ਬੋਲੇ ਤੇ ਲੱਖ ਲੱਖ ਬੰਦਾ ਇਕੱਠਾ ਹੁੰਦਾ ਸੀ ਤੇ ਲੋਕ ਸੁਣਨ ਲਈ ਸਾਰੇ ਪੰਜਾਬ ਦੁਨੀਆ ਤੋਂ ਧਾ ਸਾਹਿਬ ਜਾਂਦੇ ਰਹੇ ਉਹ ਸੰਤ ਦੀ ਸੋਚ ਕਿੱਥੇ ਗਈ ਫਿਰ ਇਹਦਾ ਮਤਲਬ ਵਕਤੀ ਤੌਰ ਤੇ ਅਸੀਂ ਖੜ੍ਹ ਜੰਨੇ ਆ ਤੇ ਵਕਤੀ ਤੌਰ ਤੇ ਅਸੀਂ ਮਿਟ ਜੰਨੇ ਆ ਤੇ ਜਦ ਇਹ ਗੱਲ ਕੀਤੀ ਜਾਂਦੀ ਹੈ ਤਾਂ ਸੋਚ ਨੂੰ ਬਰਾਬਰਤਾ ਦੀ ਤੇ ਵੱਧ ਅਧਿਕਾਰਾਂ ਦੀ ਗੱਲ ਆਦਮੀ ਪਾਰਟੀ ਦੇ ਜਿਹੜੇ ਹੱਕਦਾਰ ਨੇ ਉਹ ਲੈ ਜਾਂਦੇ ਨੇ ਵੀ ਚੰਗਾ ਤਾਂ ਹੋਣ ਤੋਂ ਲੋਕ ਤਾਂ ਮਰ ਰਹੇ ਨੇ ਐਗਜ਼ਿਸਟੈਂਸ ਦੀ ਰੌਲਾ ਪਿਆ ਦੁਨੀਆ ਫਾਹੇ ਆ ਰਹੀ ਹੈ ਦੁਨੀਆ ਕਰਦੇ ਚ ਗਈ ਦੁਨੀਆ ਨਸ਼ੇ ਚ ਹੋਈ ਕੌਮ ਤੋਂ ਪਹਿਲਾਂ ਵੱਜਵੇ ਫਿਰ ਜਿਹੜੀਆਂ ਹੱਕੀ ਮੰਗਾਂ ਦੀ ਗੱਲ ਹੋ ਸਕਦੀ ਉਹਨਾਂ ਦਾ ਤਰਕ ਇਹ ਹੁੰਦਾ ਵਪਾਰਕ ਸੰਮੇਸ਼ਿਆਂ ਤੋਂ ਬਾਅਦ ਵਾਪਸ ਦੇ ਵਿੱਚੋਂ ਬੰਦੇ ਕਿਸ ਤਰ੍ਹਾਂ ਭਰੀ ਹੋ ਰਹੇ ਉਸ ਦੀ ਗੱਲਬਾਤ ਤੁਹਾਨੂੰ ਸੁਣਾ ਕੇ ਹਟਿਆ ਜੀ ਇੱਕ ਸੂਚਨਾ ਦੇਦਣਾ ਕਿ ਜਤਿੰਦਰ ਕੌਰ ਜਿਸ ਨੂੰ ਕੱਕਾ ਕਰਕੇ ਜਾਣਿਆ ਜਾਂਦਾ ਸੀ ਮਲਕੀਤ ਸਿੰਘ ਪੱਟੀ ਤੇ ਦਾ ਬੇਟਾ ਜੀ ਟੋਡਰਪੁਰ ਪਿੰਡ ਹਸ਼ਿਆਰਪੁਰ ਜ਼ਿਲ੍ਹਾ ਵਿੱਚ ਮੰਡਰ ਰਹੇ ਸੀ ਉਹਨਾਂ ਦਾ ਫਿਊਨਲ ਅੱਜ 1 ਵਜੇ ਸੌਰੀ ਲੇਟ ਹੋ ਗਿਆ ਜੀ ਤੇ ਭੋਗ ਜਿਹੜਾ ਉਹ ਵਜੇ ਫਰਾਈਡੇ ਤਾਂ ਕੱਲ ਨੂੰ ਆਈ ਸੌਰੀ ਨੂੰ ਵੀ ਜਨਵਰੀ ਨੂੰ 1 ਵਜੇ ਉਹਨਾਂ ਦਾ ਫਾਈਵ ਰਿਵਰ ਫਿਊਨਲ ਹੈ ਤੇ ਨਾਲ ਉਸ ਦੇ ਵਿੱਚ ਅੰਤਮ ਅਰਦਾਸ 3 ਵਜੇ ਸੋ ਜਿਤਿੰਦਰ ਸਿੰਘ ਪੱਟੀ ਉਹਨਾਂ ਦਾ ਸਸਕਾਰ ਕਲ ਨੂ 1 ਵਜੇ ਫਾਈਬਰ ਰਿਵਰਸਾਈਡ ਹਾਲ ਦੇ ਵਿੱਚ ਫਾਈਬਰ ਰਿਵਰਸਾਈਡ ਫਿਊਨੋ ਹਾਲ ਉਹਦੇ ਬਾਅਦ ਨਾਨਕਸਰ ਗੁਰਦਵਾਰ ਸਾਹਿਬ 3 ਵਜੇ ਭੋਗ ਸਵਿੰਦਰ ਸਿੰਘ ਪੱਟੀ 604 279 79 ਅਨੰਦ ਮੈ ਸਚਾ ਇੱਕਾ ਪੱਟੀ 604 649 2405 ਉਹਨਾਂ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਦਾ ਇਜ਼ਹਾਰ ਕਰ ਸਕਦੇ ਹਰਪਾਲ ਸਿੰਘ ਕੰਗਜੀ ਲਾਈਨ ਨੰਬਰ 2 ਸਤਿ ਸ਼੍ਰੀ ਅਕਾਲ ਜੀ ਸਤਰੀਕਾਲ ਸਰ ਜੀ ਬਰਾੜ ਸਾਹਿਬ ਗੱਲ ਸਭ ਮੈਂ ਤੁਹਾਡਾ ਇਹ ਪੁੱਛਿਆ ਆਮ ਤੌਰ ਤੇ ਨਾ ਕੋਈ ਵੀ ਜਿਹੜਾ ਬੰਦਾ ਆਉਂਦਾ ਹੈ ਕੋਈ ਚੰਗਾ ਬੰਦਾ ਉਹ ਕਹਿੰਦਾ ਵੀ ਚੰਗੇ ਕੈਂਡੀਡੇਟ ਨੂੰ ਵੇਖ ਕੇ ਚੰਗੇ ਬੰਦੇ ਇਮਾਨਦਾਰ ਨੂੰ ਵੇਖ ਕੇ ਵੋਟਾਂ ਪਾਓ ਇਹ ਗੱਲ ਮੈਨੂੰ ਨਹੀਂ ਚੰਗੀ ਲੱਗੀ ਚੰਗੇ ਬੰਦੇ ਸਾਰੀਆਂ ਪਾਰਟੀਆਂ ਚ ਤਾਂ ਨਹੀਂ 2 2 3 3 ਹੁੰਦੇ ਆ ਤੇ ਉਹਨਾਂ ਦੇ ਨਾਂ ਤੇ ਵੋਟਾਂ ਵੀ ਪਾਰਟੀਆਂ ਲੈ ਲੈਂਦੀਆਂ ਹੋਰ ਇਲਾਕਿਆਂ ਤੋਂ ਵੀ ਵੋਟਾਂ ਮਿਲ ਜਾਂਦੀਆਂ ਉਹਨਾਂ ਨੂੰ ਮੂਰੇ ਕਰਕੇ ਤੇ ਉਸ ਤੋਂ ਪਿੱਛੋਂ ਉਹ ਚੰਗੇ ਇਮਾਨਦਾਰ ਬੰਦੇ ਸਾਰੇ ਖੁੰਝਿਆ ਚ ਹੁੰਦੇ ਐ ਇਸ ਕਰਕੇ ਕਹਿਣਾ ਚਾਹੀਦਾ ਜਦੋਂ ਪਾਰਟੀਆਂ ਦਾ ਜਾਂ ਉੱਪਰਲੇ ਲੀਡਰ ਦਾ ਹੀ ਹੁਕਮ ਚੱਲਣਾ ਹੈ ਤੇ ਇਮਾਨਦਾਰਾਂ ਨੇ ਖੁੰਝੇ ਰਹਿਣਾ ਹੈ ਤੇ ਤੁਸੀਂ ਚੰਗੀ ਪਾਰਟੀ ਨੂੰ ਵੋਟ ਪਾਓ ਇਹ ਮੈਨੂੰ ਗੱਲ ਚੰਗੀ ਨਹੀਂ ਲੱਗੀ ਦੂਜੀ ਗੱਲ ਜਿਹੜੀ ਬਦਲਾਅ ਕਰਦੇ ਸੀਗੇ ਕਾਂਗਰਸ ਦਾ ਵੀ ਪਤਾ ਹੈ ਕਾਲੀਆਂ ਦਾ ਵੀ ਪਤਾ ਹੈ ਮੈਂ ਤੁਹਾਨੂੰ ਇੱਕ ਆਪਣੇ ਨਾਲ ਕੀਤੀ ਸ਼ਹਿਰ ਦੇ ਵਿੱਚ ਕੁਝ ਜ਼ਮੀਨ ਇੰਪਰੂਵਮੈਂਟ ਟਰਸ ਨੇ ਐਕਵਾਇਰ ਕੀਤੀ ਸੀ ਕਲੋਨੀ ਬਣਾਉਣ ਵਾਸਤੇ ਉਹ ਲੋਕਾਂ ਨੇ ਕੇਸ ਕਰਤਾ ਹਾਈ ਕੋਰਟ ਤੋਂ ਹਰਗੇ ਸੁਪਰੀਮ ਕੋਰਟ ਤੋਂ ਜਿੱਤ ਕੇ ਲੋਕਾਂ ਨੇ ਕੇਸ ਕਰਕੇ ਐਨਓਸੀ ਲੈਣ ਵਾਸਤਾ ਦਬਾਅ ਪਾਇਆ ਤੇ ਵਿਭਾਗ ਇੰਪਰੂਵਮੈਂਟ ਟਰਸ ਨੇ ਐਨਓਸੀ ਜਾਰੀ ਕਰ ਅੱਜ ਦੇ ਜਿਹੜੇ ਅਕਾਲੀ ਦਲ ਦਾ ਉੱਥੇ ਸਰੂਪ ਚੰਦ ਸਿੰਘਲਾ ਜਿਹੜਾ ਸੀਗਾ ਐਮ ਐਲ ਏ ਜਾਂ ਕਹਿ ਲਓ ਇਲਾਕੇ ਦਾ ਜਿਹੜਾ ਉਹ ਲੀਡਰ ਹੁੰਦਾ ਜ਼ਥੇਦਾਰ ਕਹਿ ਲਓ ਕਹਿੰਦਾ ਮੈਂ ਵੰਡੂਗਾ ਮੈਂ ਉਹਨਾਂ ਲਾਫਤਰ ਜਾ ਕੇ ਮੇਰਾ ਇੱਕ ਛੋਟਾ ਪਲਾਟ ਸੀਗਾ ਵੀ ਐਨਓਸੀ ਦਿਓ ਉਹ ਕਹਿੰਦੀ ਉਹ ਤਾਂ ਸਾਹਿਬ ਦੇ ਦਸਤ ਤੋਂ ਮਿਲਣ ਗਈ ਮੈਂ ਕਿਹਾ ਵੀ ਤੁਸੀਂ ਉਹਨਾਂ ਨੂੰ ਕਿਉਂ ਦਿੱਤੇ ਉਹਨਾਂ ਦਾ ਕੀ ਰੋਲ ਹੈ ਅਸੀਂ ਆਪਦਾ ਮਹਿਕਮੇ ਚ ਆਪਣਾ ਕੋਰਟ ਵਿੱਚ ਕੇਸ ਕਰਕੇ ਅਸੀਂ ਕੇਸ ਜਿੱਤੇ ਆ ਮੇਰਾ ਤੁਸੀਂ ਐਨਓ ਸਿਕਿਉ ਦਿੱਤਾ ਉਹ ਕਹਿੰਦੀ ਜੀ ਸਾਰੇ ਉਹਨਾਂ ਕੋਲੇ ਅਸੀਂ ਕੀ ਕਰੀਏ ਹੁਣ ਦਾ ਜੋਰ ਹੈ ਉਹ ਲੈ ਗਏ ਦੇਖੋ ਉਹਨਾਂ ਨੇ ਐਨਓਸੀ ਵੰਡੇ ਇੱਕ ਤਾਂ ਹੁੰਦਾ ਨਾ ਸਰਕਾਰ ਕੰਮ ਕਰਕੇ ਵੋਟਾਂ ਲੈਂਦੀ ਐ ਇਹ ਕੰਮ ਰੋਕ ਕੇ ਵੀ ਮੰਗਦੇ ਐ ਵੀ ਜੇ ਤੁਸੀਂ ਸਾਨੂੰ ਵੋਟਾਂ ਨਹੀਂ ਪਾਓਗੇ ਸਾਰੇ ਦੇ ਨਿੱਕੇ ਨਿੱਕੇ ਲੋਕਾਂ ਦੀਆਂ ਗੱਲਾਂ 'ਚ ਰੁਕਾਵਟ ਪਾ ਕੇ ਵੋਟਾਂ ਮੰਗਦੇ ਰਿਹਾ ਫਿਰ ਬਦਲਾਤ ਜੋ ਹੋਣੀ ਉਹਦਾ ਫਿਰ ਕਦੋਂ ਆਊਗਾ ਜੀ ਥੈਂਕ ਯੂ ਥੈਂਕ ਯੂ ਇਹ ਗੱਲ ਠੀਕ ਹੈ ਇਮਾਨਦਾਰ ਪੁਲਿਸ ਜੀ ਡੀਜੀਪੀ ਇਮਾਨਦਾਰ ਆਜੂ ਤਾਂ ਕੇ ਬਾਹਰ ਲਾਉ ਜਾਂ ਪਾਰਟੀ ਇਮਾਨਦਾਰ ਆ ਉਹ ਵਧੀਆ ਡੀਜੀਪੀ ਗੱਲ ਠੀਕ ਹੈ ਇਹਨਾਂ ਦੀ ਗੁਰਤੇਜ ਸਿੰਘ ਜੀ ਲਾਈਨ ਨੰਬਰ 3 ਸੱਤਿਕਾਰ ਬਾਈ ਜੀ ਸੱਤਿਕਾਰ ਜੀ ਬਾਈ ਜੀ ਅਲੀ ਬਾਈ ਜੀ ਕਿ ਨਾ ਆਸਟ੍ਰੇਲੀਆ ਤੋਂ ਕਾਲ ਆਈ ਸੀ ਤੁਹਾਨੂੰ 2-3 ਕਾਲਾਂ ਤੋਂ ਐਡ ਤੋਂ ਪਹਿਲਾਂ ਮੈਂ ਉਹ ਬਾਈ ਨੂੰ ਪੁੱਛਣਾ ਚਾਹਣਾ ਉਹ ਕਹਿੰਦਾ ਭਗਵਾਨ ਸਤਿ ਬੰਦਾ ਤਕਬੀਰ ਵਾਲੇ ਤੋਂ ਪੜ੍ਹਿਆ ਲਿਖਿਆ ਹੋਰ ਕੋਈ ਵੱਧ ਹੈ ਹੀ ਨਹੀਂ ਜੀ ਫਿਰ ਕੈਪਟਨ ਮਨਿੰਦਰ ਸਿੰਘ ਤੋਂ ਵੱਧ ਦਾ ਲਿਖਿਆ ਕੋਈ ਹੈ ਹੀ ਨਹੀਂ ਜੀ ਇੰਨਾ ਲੋਕਾਂ ਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਬੰਦੇ 10 ਸਾਲ ਹੋ ਗਏ ਆਸਟ੍ਰੇਲੀਆ 'ਚ ਬੈਠਾ ਫਿਰ ਤੂੰ ਆਸਟ੍ਰੇਲੀਆ ਛੱਡ ਕੇ ਪੰਜਾਬ ਕਿਹੜਾ ਤੁਸੀਂ ਜਦੋਂ ਤੁਸੀਂ ਆਪਣੀ ਗੱਲ ਕਰੋ ਬਾਈ ਜੀ ਇੰਉਂ ਨਾ ਟਾਰਗੇਟ ਨਾ ਕਰੋ ਤੁਸੀਂ ਇੱਕ ਜੰਦ ਗੱਲ ਕਰੋ ਉਹਨਾਂ ਨੇ ਇਸ ਤਰ੍ਹਾਂ ਗੱਲ ਕਰੋ ਕਿ ਪੰਜਾਬ ਦੇ ਹਾਲਾਤ ਹੋਰ ਨਹੀਂ ਘਟੀਆ ਬੰਦੇ ਜਦੋਂ 에ਅਰਲਾਈਨ ਤੇ ਆਉਂਦੇ ਦੁੱਖ ਬਹੁਤ ਹੁੰਦਾ ਕੋਈ ਨਾ ਕੋਈ ਨਾ ਸਾਰੇ ਗੱਲ ਕਰਦੇ ਇਸ ਤਰ੍ਹਾਂ ਨਾ ਕਰੋ ਪਲੀਜ਼ ਨਰਵੇਤ ਸਿੰਘ ਜੀ ਲਾਈਨ ਨੰਬਰ 4 ਜੀ ਸਤਿ ਸ਼ਕਾਲ ਜੀ ਇਹ ਕਿਹੜਾ ਚੋਰੋ ਭਾਜੀ ਦੇਖੋ ਕੱਲ ਭਗਵਾਨ ਸਵਾਮ ਤੜਕੇ 2 ਵਜੇ ਹੈ ਕਿ ਕਿਹ ਕੇਜਰੀਆ ਦਾ ਫੋਨ ਆ ਲੋਕਾਂ ਨੂੰ ਘਬਰਾਹ ਕਿਉਂ ਕਰ ਰਹਾ ਹੈਗਾ ਇਹ ਕਾਲੀਦਾਰ ਵਾਲੇ ਭੱਜ ਗਏ ਭੱਜ ਗਏ ਜੀ ਉੱਥੇ ਅਮਰੋਦ ਸਾਹਿਬ ਵਧੀਆ ਪ੍ਰਸ਼ਾਸਨ ਦੇਣ ਦੀ ਗੱਲ ਕਰਦੇ ਆ ਆ ਬਡਾਲੇ ਜਿੱਤੇ ਸਾਹਿਬ ਦੇ ਮੁਕਾਬਲੇ ਨਕੋਦਰ ਦੂਜਾ ਕੈਂਡੀਡੇਟ ਬਦਲਿਆ ਉੱਥੇ ਕਹਿੰਦਾ ਜਗਦਾਰ ਸੰਘੇੜਾ ਸੀ ਤਿੰਨ ਕੇ ਚੱਲਦੇ ਲੋਕਾਂ ਦੀ ਜ਼ਮੀਨ ਦੱਬੀ ਉਹਦੇ ਬੰਗਿਆਂ ਦੇ ਵਿੱਚੋਂ ਤਾਂ ਇਹ ਬਲਪਾਈਂ ਦੇ ਵਿੱਚ ਆ ਉਹਨੂੰ ਟਿਕਟ ਦਿੱਤੀ ਆ ਨਵੇਂ ਯਰ ਤੋਂ ਚੰਡੀ ਨੂੰ ਟਿਕਟ ਦਿੱਤੀ ਆ ਪੈਸੇ ਲੈ ਕੇ ਕਰੋੜਾ ਆ ਆਪਣੀ ਪੀੜੀ ਕਰੇ ਦੋਤਾ ਦਾ ਥੈਂਕ ਯੂ ਜੀ ਥੈਂਕ ਯੂ ਲਾਈਨ ਨੰਬਰ 5 ਹਲੋ ਹਾਂਜੀ ਚਾਹੁੰਦਾ ਦੇਖੋ ਜੀ ਸਰ ਆਪਣਾ ਤੁਸੀਂ ਮਨਜਿਆ ਵਿਚਾਰਾਂ ਦਾ ਰੱਖਿਆ ਹਰ ਬੰਦਾ ਆਪਣੇ ਵਿਚਾਰ ਦੇ ਸਕਦਾ ਹੈ ਨਾ ਜੀ ਮੈਂ ਕਿਸੇ ਦਾ ਹੱਕ ਜ ਨਹੀਂ ਮੈਂ ਕਿਸੇ ਦੇ ਵਿਰੋਧ ਵਿੱਚ ਨਹੀਂ ਹੈਗਾ ਜਿਵੇਂ ਉਹਨਾਂ ਵੀਰਾਂ ਨੇ ਦੇ ਦਿੱਤੇ ਜਦੋਂ ਹੁਣ ਵਾਈਕ ਆਸਟ੍ਰੇਲੀਆ ਵਾਲੇ ਤੇ ਕਮੈਂਟ ਦੇਖੋ ਹਰ ਇੱਕ ਬੰਦੇ ਨੇ ਇਹ ਗੱਲ ਤਾਂ ਮੈਂ ਕਹਿੰਦਾ ਵੀ ਜਿਹੜੇ ਦੂਜੀ ਬੱਕਰੇ ਵਿਚਾਰ ਰੱਖਣੇ ਜਾਂਦੇ ਉਹ ਲੋਕ ਕਾਲ ਕਰਨੋਂ हट ਜਾਂਦੇ ਆ ਫਿਰ ਜਦੋਂ ਤੁਸੀਂ ਇਹ ਕਰੋ ਕੱਲਿਆਵਾ ਦੀ ਪਾਰਟੀ ਵਾਲੇ ਕਾਲ ਕਰ ਦੂਜੇ ਕਰਨਾ ਆ ਜੇ ਮੇਰਾ ਇਹ ਮੰਨ ਕਰਦਾ ਵੀ ਇਹ ਆ ਜਿਹੜੇ ਉਹਨਾਂ ਦੇ ਰਹਿ ਕੇ ਨਹੀਂ ਬੋਲੇ ਐਫਐਲ ਦੇ ਵਿੱਚ ਉਹਨਾਂ ਲੋਕਾਂ ਨੂੰ ਬਾਦਲਾ ਨੇ ਉਹ ਕਦੇ ਰਾਤੋਂ ਰਾਤ ਤਾਂ ਕਿਉਂ ਨਹੀਂ ਕਰਜਾ ਨਹੀਂ ਕਰ ਲਿਆ ਪੰਜਾਬ ਦੇ ਉੱਤੇ ਉਹਨਾਂ ਨੂੰ ਵੀ ਕਈ ਸਾਲ ਲੱਗੇ ਉਹ ਵੀ ਬਾਦਲ ਦਾ ਦੇਖ ਲੈ ਪਜਾਮਾ ਪਾ ਕੇ 60 70 ਸਾਲ ਪਹਿਲਾਂ ਉਹੀ ਬਿਆਮਾ ਦੀ ਪਾਰਟੀ ਬਣ ਕੇ ਆਇਆ ਸੀ ਆਮ ਬੰਦਾ ਹੈਗਾ ਸਰਪੰਚੀ ਦਾ ਗਿਰੂ ਕੀਤਾ ਮੇਰਾ ਕਹਿਣਾ ਮਤਲਬ ਅਸੀਂ ਲੋਕ ਜਦੋਂ ਇਹਨਾਂ ਨੂੰ ਇੰਨੇ ਇਹਨਾਂ ਦੇ ਮਗਰ ਇਹਨਾਂ ਦੀਆਂ ਗਲਤੀਆਂ ਸੁਣਨ ਤੋਂ ਹਟ ਜਾਂਦੇ ਆ ਅਰ ਜੇ ਮੈਂ ਇੱਕ ਕੁਐਸਚਨ ਇਹਨਾਂ ਨੂੰ ਪੁੱਛ ਲਵਾਂ ਮੈਂ ਤਾਂ ਬਾਈਕਰਨਾ ਮੈਂ ਤੁਸੀਂ ਗੱਲ ਕਰੋ ਦੱਸੋ ਵੀ ਆਪਾਂ ਨੂੰ ਹੁਣ ਪਤਾ ਖਾਰਿਆ ਨਹੀਂ ਵੀ ਪੰਜਾਬ ਦੇ ਕੈਪਟਨ ਐਸੇ ਲਈ ਮੇਨ ਚੀਅਰ ਆ ਮੁੱਖ ਕੀਤਾ ਹੈਗਾ ਮੈਂ ਆਵਾਜ਼ ਦੀ ਪਾਰਟੀ ਪੁੱਛਣਾ ਚਾਹੁੰਦਾ ਜਦ ਕੇਜਰੀਵਾਲ ਸਾਹਿਬ ਨੇ ਸ਼ੀਲਾ ਦੇ ਵਿਰੋਧ ਲੜ ਡਿਕਲੇਅਰ ਕੀਤਾ ਘੱਟਾ ਮੁੱਖ ਮੰਤਰੀ ਬਾਨਾ ਇਹਨਾਂ ਦੇ ਕੋਲੋਂ ਇਹ ਮੈਨੂੰ ਦੱਸ ਇਹਨਾਂ ਦੇ ਕੋਲੋਂ ਇੱਕ ਕੈਂਡੀਡੇਟ ਉਹਦੇ ਵਿਰੋਧ ਕਿਉਂ ਖੜਾ ਕਰ ਰਿਹਾ ਕੀ ਉਹਨਾਂ ਦਾ ਰਲੇਓ ਆ ਜਾਂ ਕੀ ਕੀਤਾ ਇਹਨਾਂ ਨੂੰ ਉਹਦੇ ਨਾਂ ਤੱਕ ਦਾ ਨਹੀਂ ਕੈਂਡੀਡੇਟ ਨੂੰ ਪਤਾ ਹੁਣ ਪਟਿਆਲੇ ਤੋਂ ਕੌਣ ਖੜਾ ਡਾਕਟਰ ਬਲਵੀਰ ਸਿੱ ਜਿਉ ਡਾਕਟਰ ਮਨਵੀਰ ਸਿੰਘ ਨੂੰ ਪਟਿਆਲੇ ਨੂੰ ਉਹਨੂੰ ਹਰਾਉਣ ਯੋਗਾ ਨਹੀਂ ਹੈਗਾ ਤੇ ਇਹ ਫਿਰ ਇਹ ਕਿਹੜੀਆਂ ਗੱਲਾਂ ਕਰਦੇ ਆ ਮੈਂ ਦੇਖੋ ਮੈਂ ਕਿਸੇ ਵਿਰੋਧ ਨਹੀਂ ਹੈਗਾ ਜਿੱਦਾਂ ਮਰਜੀ ਤੁਸੀਂ ਆਪਣਾ ਬਦਲਾ ਲਿਓ ਇਨਕਲਾਬ ਲਿਓ 4 ਤਰੀਕ ਤੋਂ ਬਾਅਦ ਪਤਾ ਲੱਗ ਜਾਣਾ ਤੁਸੀਂ ਵੀ ਇੱਥੇ ਅਸੀਂ ਵੀ ਇੱਥੇ ਆ ਨਹੀਂ ਹੈਗਾ ਪੰਜਾਬ ਦੇ ਮੁੱਦਿਆਂ ਦੇ ਸਪੋਰਟਰ ਜਿਹੜਾ ਪੰਜਾਬ ਦੇ ਈਸ਼ੂਆਂ ਦੀ ਗੱਲ ਕਰੂਗਾ ਉਹ ਹੀ ਆ ਜਿਹੜਾ ਪੰਜਾਬ ਦੇ ਮੁੱਦਿਆਂ ਦਾ ਸਪੋਰਟਰ ਜੁਮਲੇ ਸੁਣਾਉਣ ਵਾਲਾ ਸਾਡਾ ਉਹ ਕੋਈ ਸਾਡਾ ਉਹਦੇ ਨਾਲ ਐਡਾ ਨਹੀਂ ਆ ਠੀਕ ਆ ਸਾਰੇ ਇੱਕੋ ਜਿਹੇ ਬੇਰੂਧੀ ਪਾਰਟੀਆਂ ਦੇ ਬਮਾਪਨੀਆਂ ਬਾਲੀ ਇੱਕੋ ਨਹੀਂ ਵੀ ਸਪੋਰਟ ਤੁਸੀਂ ਜੈਨੋ ਮਰਜ਼ੀ ਪਾਉਂਦੇ ਤੇ ਮੇਰਾ ਮਕਸ ਬੜੀ ਆਪਣੀ ਮਾਨੀ ਮੇਰੇ ਨੂੰ ਸਾਰਿਆਂ ਨੂੰ ਮੇਰਾ ਕੋਈ ਨਾ ਮੇਰਾ ਇਸ਼ੂ ਹੈ ਕਿ ਤੁਸੀਂ ਸਵਾਲ ਨੌਜਵਾਨ ਮੁੰਡਾ ਪਿਛਲੇ ਦਿਨੀਂ ਕਾਰ ਕਰ ਗਿਆ ਉਸ ਦਾ ਫਿਊਨਰਲ ਵਜੇ ਆ ਇਹ ਸਾਊਂਡ ਵਾਲੇ ਸ਼ਨੀਵਾਰ ਪਰਸੋਂ ਨੂੰ ਰਿਵਰਸਟਾਈ ਫਿਨੋ ਹਾਲ ਦੇ ਵਿੱਚ ਦਸ਼ਮੇਸ਼ ਉਸ ਦੀ ਅੰਤਮ ਰਾਸਾ ਦਰਸ਼ਨ ਸਿੰਘ ਮੰਗਟ ਸਰਕਾਰ ਜੋਗੋਸ ਦੇ ਪਿਤਾ ਜੀ 604002 7330 ਨੰਬਰ ਹੈ ਨਾਲ ਹੀ ਜੈਰੀ ਬਰਾਡ ਪ੍ਰੋਗਰਾਮ ਦੇ ਸਪான்ਸਰ 6047628899 ਬਸਤੀ ਇਲਾਨ ਬਸਤੀ ਜੈਰੀ ਬਰਾਡ ਮਾਰਗੇਜ ਸਾਰੇ ਬੀਸੀ ਦੇ ਅੰਦਰ ਹੈ ਜੈਰੀ ਬਰਾਡ ਦੇ ਨਾਲ ਗੱਲਬਾਤ ਕਰ ਲਿਓ ਜਦ ਕੋਈ ਮਾਰਗੇਜ ਦਾ ਕੰਮ ਹੈ ਜਾਂ ਕੋਈ ਲਾਈਨ ਆਫ ਕ੍ਰੈਡਿਟ ਲੈਣੀ ਹੈ ਪਰਸਨਲ ਫਾਈਨਾਂਸਿੰਗ ਕਰਾਉਣੀ ਹੈ ਗ੍ਰੈਂਟਾਜ ਫਰੀਦਾ ਤਾਜ ਕੁਲਤਾਰ ਸਿੰਘ ਖਿਆੜਾ ਹਰਪਾਲ ਸਿੰਘ ਸੂਝ ਤੇ ਸੁੱਚਾ ਸਿੰਘ ਵੱਡਾ 6046178484 6545924342 ਵੱਡੀਆਂ ਛੋਟੀਆਂ ਪਾਰਟੀਆਂ ਸਿੱਦੇ ਦੀਆਂ ਵੱਡੀਆਂ ਪਾਰਟੀਆਂ ਜਿਹੜੀਆਂ ਗ੍ਰੈਂਟਾਜ ਚ ਹੁੰਦੀ ਹੈ 6046178484 ਫਾਈਬਰ ਐਕਸਕਵੇਟਿੰਗ ਹਰਪੀ ਸਿੰਘ ਕੰਗ 6047270424 ਤੇ ਗੁਰਦੀਪ ਸਿੰਘ ਗਰੇਵਾਲ 7788469942 ਲੋਟ ਪਟਾਉਣੀਆਂ ਕੋਈ ਘੱਟ ਹੋਣਾ ਕੋਈ ਡਰੇਨ ਟਾਈਲ ਕੋਈ ਲਾਈਨ ਨੰਬਰ 2 ਤੁਸੀਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਗੱਲ ਇਹ ਆ ਬਾਈ ਜੀ ਬਈ ਕਾਫੀ ਲੋਕ ਚਲੋ ਹਰ ਚਾਰ ਵਿਰੋਧ ਚ ਹੁੰਦੇ ਨੇ ਭਵੰਤਮਾਨ ਦੇ ਕਾਫੀ ਵਿਰੋਧ ਵੀ ਨੇ ਲੋਕ ਹਮ ਹਰੇਕ ਨੂੰ ਆਪਣਾ ਹੱਕ ਆ ਦਾ ਆਪਣੇ ਵਿਊ ਰੱਖਣ ਦਾ ਪਰ ਮੈਂ ਇੱਕ ਗੱਲ ਕਹਿਣਾ ਵੀ ਭਗਵਾਨਤਮਾਨ ਅੱਜ ਨਹੀਂ ਤਾਂ 20 ਸਾਲ ਦਾ ਕਰਪਟ ਸਿਸਟਮ ਦਾ ਰੌਲਾ ਲੋਕੋ ਬੋਲੋ ਤੁਸੀਂ ਪੱਟੇ ਜਾਉਂਗੇ ਇਸ ਪ੍ਰੇਸ਼ਤ ਰਾਜਨੀਤੀ ਕਿ ਵੋਟਾਂ ਮੰਗਦੇ ਨੇ ਜਾ ਕੇ ਇਹ ਕੋਈ ਆਪਣੇ ਹਿੰਦੀ ਚੈਨਲ ਤੇ ਵੱਡੇ ਚੈਨਲ ਤੇ ਵੀ ਉਹਨੇ ਪੇਸ਼ ਕੀਤਾ ਈ ਇਹ ਕਿ ਮੈਂ ਸ਼ੇਰ ਹੱਥ ਜੋੜ ਕੇ ਖੜਦਾ ਬੋਟਾ ਵੇਲੇ ਹੂੰ ਤੇ ਉਹ ਬਿਆੰਗ ਰਹੀਂ ਆਮ ਆਦਮੀ ਪਾਰਟੀ ਦਾ ਜਨਮ ਵੀ ਨਹੀਂ ਸੀ ਹੋਇਆ ਜਦੋਂ ਸਾਲ ਪਹਿਲਾਂ ਮੈਂ ਤੇ ਆਪਣੇ ਕਈ ਮਿੱਤਰ ਅਸੀਂ ਇਕੱਠੇ ਹੋ ਕੇ ਕਹਿੰਦੇ ਸੀ ਵੀ ਇਹ ਬੰਦੇ ਨੂੰ ਕਿੰਨੀ ਚਿੰਤਾ ਪੰਜਾਬ ਦੀਆਂ ਗੱਲਾਂ 'ਚ ਕਿੰਨੀ ਗਹਿਰਾਈ ਆ ਦੂਜੀ ਗੱਲ ਜਿਹੜੀ ਮੈਂ ਕਰਨੀਆਂ ਆ ਮਾਨ ਸਾਹਿਬ ਦੇ ਕਈ ਬੰਦੇ ਸਮਰਥਕ ਨੇ ਆਪਾਂ ਵੀ ਕਿਸੇ ਟਾਈਮ ਰਹੇ ਆ ਮੈਂ ਸੱਨ ਟੰਨ ਜੇਲ੍ਹ 'ਚ ਵੀ ਰਹੇ ਆ ਜੀ ਮਾਨ ਸਾਹਿਬ ਕਰਕੇ ਮਾਨ ਸਾਹਿਬ ਦਾ ਮੈਨੂੰ ਪਰ ਅੱਜ ਮੈਨੂੰ ਐ ਲੱਗਦਾ ਵੀ ਜਦੋਂ ਪੂਰੀ ਪੰਜਾਬ ਦੇ ਵਿੱਚ ਮਸਲਾ ਭਸਿਆ ਹੋਇਆ ਸੀ ਇੱਕ ਪਾਸੇ ਬਾਦਲ ਮਤਲਬ ਕਿ ਲੋਂਗੋਵਾਲ ਗਰੁੱਪ ਪਾਸੇ ਮੁੰਡੇ ਆਪਣੇ ਤੱਤੇ ਹੋਏ ਫਿਰਦੇ ਸੀ ਉਸ ਸਮੇਂ ਦੌਰਾਨ ਕਾਂਗਰਸ ਬਿਲਕੁਲ ਜ਼ੀਰੋ ਤੇ ਚੱਲੀ ਗਈ ਸੀ ਕਾਂਗਰਸ ਨੇ ਮੈਨੂੰ ਲੱਗਦਾ ਵੀ ਕਾਂਗਰਸ ਨੂੰ ਹੋਰ ਕੋਈ ਤਰੀਕਾ ਨਹੀਂ ਸੀ ਕਿ ਬਾਦਲ ਨੂੰ ਜਾਂ ਅਕਾਲੀ ਦਰਬ ਨੂੰ ਜਾਂ ਉਹਨੂੰ ਕਿਵੇਂ ਕਨਵਰਟ ਕੀਤਾ ਜਾਵੇ ਜਾਂ ਬਾਦਲ ਨੂੰ ਢਾਇਆ ਜਾਵੇ ਉਹਨਾਂ ਨੇ ਇਹ ਚੀਜ਼ ਮੈਨੂੰ ਲੱਗਦਾ ਵੀ ਉਦੋਂ ਇਹ ਕੀਤੀ ਕਿ ਮਾਨ ਸਾਹਿਬ ਨੂੰ ਉਸ ਤਰੀਕੇ ਨਾਲ ਪੇਸ਼ ਕੀਤਾ ਕਿ ਕੀਤਾ ਜਾਵੇ ਤੇ ਬਿਲਕੁਲ ਵੋਟਾਂ ਪਾਈਆਂ ਲੋਕਾਂ ਦਾ ਵੇਵ ਉੱਤਰ ਚਲੀ ਗਈ ਫਿਰ ਕਿਰਪਾਨ ਦਾ ਮਸਲਾ ਹੋਇਆ ਪਾਰਲੀਮੈਂਟ 'ਚ ਜਾ ਕੇ ਫਿਰ ਉਹ ਸਾਰਾ ਕੁਝ ਖਿਲਰ ਗਿਆ ਤੇ ਮੈਨੂੰ ਨਹੀਂ ਲੱਗਦਾ ਵੀ ਵੀ ਜ਼ਰੂਰ ਇਹਦੇ ਵਿੱਚ ਕੈਪਟਨ ਸਾਹਿਬ ਦਾ ਸਾਧੂ ਵੀ ਮਾਨ ਸਾਹਿਬ ਤੇ ਜਰੂਰ ਹੈ ਵਿੱਚ ਕੋਈ ਨਾ ਕੋਈ ਗੱਲ ਹੋ ਸਕਦੀ ਆ ਕਿਉਂਕਿ ਪੱਤੇ ਪੱਤਰ ਤੇ ਇਹ ਆਪਾਂ ਨੂੰ ਰਾਜਨੀਤੀ ਦੇ ਗੱਲਾਂ ਦਾ ਨਹੀਂ ਪਤਾ ਹੁੰਦਾ ਜਿੱਥੋਂ ਸ਼ੁਰੂ ਕਰਦੇ ਨੇ ਕਾਫੀ ਪਰੇ ਕੇ ਉਹਦਾ ਸੱਪ ਘੜਦੇ ਨੇ ਜੱਗ ਸੋ ਇਸ ਤਰੀਕੇ ਦੇ ਤੌਰ ਤੇ ਸਕਦੇ ਆ ਤੇ ਮੇਰਾ ਡਾਊਟ ਆ ਕਿਉਂਕਿ ਮੈਂ ਕਿਸੇ ਟਾਈਮ ਸਮਰਥਕ ਵੀਰੇ ਨੂੰ ਮੈਂ ਦੱਸਿਆ ਅੱਜ ਮੇਰਾ ਡਾਊਟ ਥੈਂਕ ਯੂ ਤਾਂ ਮੰਗਤਾ ਜੀ ਲਾਈਨ ਨੰਬਰ 3 ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਇਹ ਜਿੱਦਾਂ ਬਈ ਨੇ ਵਧੀਆ ਗੱਲਾਂ ਕੀਤੀਆਂ ਪਰ ਅਸਲੀ ਕਾਰਨ ਇਹ ਆ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਕੀਤਾ ਨਾ ਨਸ਼ੇ ਦੇ ਉੱਤੇ ਜਿਹੜਾ 1984 ਤੋਂ ਬਾਅਦ ਉਹਨਾਂ ਨੇ ਪਤਾ ਵੀ ਕੌਮ ਨੂੰ ਸਿੱਖ ਕੌਮ ਨੂੰ ਖਤਮ ਕਰਨਾ ਤੇ ਉਹ ਇਸ ਕਰਕੇ ਨਸ਼ਾ ਜਿਹੜਾ ਪੰਜਾਬ ਤੇ ਸਾਰਾ ਬੰਡਿਕਾ ਬੇਸੁਰਤ ਨਾ ਨੂੰ ਵੀ ਪਾਰਟੀਆਂ ਦੇ ਨਾਲ ਜੁੜ ਜਾਣ ਦਿਮਾਗ ਇਹਨਾਂ ਦੇ ਕੰਮ ਨਾ ਕਰਨ ਉਹ ਕਾਮਜਾਬ ਹੋ ਗਿਆ ਤਾਂ ਜਿਹੜਾ ਹੁਣ ਤੁਸੀਂ মিডিਆ ਦੀ ਕੀਤੀ ਸੀ ਇੰਡੀਆ ਦੀ মিডিਆ ਦੀ ਦਿੱਲੀ ਦੀ ਗੱਲ ਕੀਤੀ ਸੀ ਉੱਥੇ মিডিਆ ਇਹ ਪੇਸ਼ ਕੰਤਾਸਰ ਬਿਆਨ ਕਿਉਂ ਨਹੀਂ ਲੈਂਦੇ ਉੱਥੇ ਉੱਥੇ ਜੋ ਕਹਿੰਦਾ ਸੱਚ ਬੋਲਦਾ ਉੱਥੇ ਜਾ ਕੇ ਆਪ ਦੀ ਦਾਲਤ ਪ੍ਰੋਗਰਾਮ ਉਹਦਾ ਉਹਨੂੰ ਕਿਉਂ ਨਹੀਂ ਭਾਗ ਲੈਣ ਦੇ ਨੇਤਾ ਜਿਹੜੇ ਲੋਕ ਆ ਕਿਉਂ ਨਹੀਂ ਹੋ ਜਾਂਦੇ ਉਹਨੂੰ ਉਹਨੂੰ ਜਿੱਦਾਂ ਵੇ ਕੀਤਾ ਆ মিডিਆ ਦਾ ਅਸਲੀ ਰੋਲ ਨਹੀਂ ਉਹ ਉਹ ਪੰਜਾਬ ਦਾ ਜਿੱਦਾਂ ਕਹਿੰਦਾ ਪੰਜਾਬ ਦੀ ਉਹ ਗੱਲ ਹੀ ਨਹੀਂ ਕਰਦੇ ਕੋਈ ਗੱਲ ਕਰਦੇ ਆ ਭਈ ਆ ਭੰਗੜਾ ਪੰਜਾਬ ਦਾ ਉਹ ਢੋਲ ਵਜਾਂਦੇ ਆ ਪੰਜਾਬ ਦਾ ਤੇ ਉਹ ਸਿੱਖਾ ਦਾ ਕੋਈ ਮੁੱਦਾ ਨਹੀਂ ਨੰਦਕੋਟ ਦਾ ਮੁੱਦਾ ਸੀਗਾ ਉਹ ਕੋਈ ਨਹੀਂ ਵਾਰਦਾ ਕੀ ਹੋਇਆ ਪੰਜਾਬ ਤੇ ਕੀ ਨਹੀਂ ਹੋਇਆ ਉਹ ਪਾਕਿਸਤਾਨ ਦਾ ਪਾਕਿਸਤਾਨ ਦੀ ਗੱਲ ਕਰਨਗੇ ਤਾਂ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਭਈ ਉਹ ਜੋ ਕੁਝ ਕਰਨਾ ਸੀ ਉਹ ਕਰ ਦਿੱਤਾ ਤਾਂ ਅੱਜ ਦਾ ਨੂੰ ਨਾ ਅੱਜ ਦਾ ਨਸ਼ਈ ਬਣਾਤਾ ਤੇ ਪਕਾਉ ਪਕਾ ਕੌਮ ਬਣਾਤੀ ਤਾਂ ਉਹਨਾਂ ਨੇ ਆਪਣਾ ਕੰਮ ਕਰਤਾ ਹੁਣ ਰਾਜ ਬੜਾ ਵਧੀਆ ਉਹ ਆਪਣਾ ਕਰੀ ਜਾਣਗੇ ਕਿੰਨੇ ਚਿਰ ਰਾਜ ਪਾਰਟੀਆਂ ਦਾ ਜੋਰ ਸਾਹਿਬ ਇੱਕ ਗੱਲ ਹੋਰ ਆ ਜੀ ਇਨਕਲਾਬ ਤਾਂ ਬੱਲੇ ਸੋਨੇ ਦਾ ਨਾਰਾ ਜਿਹੜਾ ਇਕੱਠਾ ਕਰ ਦਿੱਤਾ ਇਹਦਾ ਕੀ ਅਰਥ ਆ ਭਈ ਜਿੱਦਾਂ ਕਹ ਲੋ ਪਾਸੇ ਇਨਕਲਾਬ ਕਹਿ ਰਹੇ ਆਮ ਪਾਰਟੀ ਵਾਲੇ ਬੱਲੇ ਸੋਨੇ ਧਾਰਮਿਕ ਉਹ ਤਾਂ ਧਾਰਮਿਕ ਨਾਰਾ ਆ ਸਿੱਖਾਂ ਦਾ ਨਾਰਾ ਆ ਬਿਲਕੁਲ ਧਾਰਮਿਕ ਨਾਰਾ ਸਤਿ ਸ੍ਰੀ ਅਕਾਲ ਬਿਲਕੁਲ ਸਤਿ ਸ੍ਰੀ ਅਕਾਲ ਕਮਲਜੀਤ ਸਿੰਘ ਦੀ ਲਾਈਨ ਨੰਬਰ 4 ਸਸ ਜੀ ਬਾਈ ਕਮਲਜੀਤ ਬੋੜੀ ਬਟਿੰਡੇ ਤੋਂ ਬਲੋਂਗ ਕਰਦਾ ਹਾਂ ਜੀ ਮੈਂ ਤੇ ਜੀ ਬਾਈ ਮੈਂ ਇਹੀ ਕਹਿਣਾ ਫਰੈਂਡ ਸਰਕਲ ਚੋਂ ਤਕਰੀਬਨ ਤਕਰੀਬਨ ਵਧੀਆ ਨੌਕਰੀਆਂ ਕਰਦੇ ਮੁੰਡੇ-ਮੁੰਡਿਆਂ ਨੂੰ ਪਰ ਨੌਕਰੀ ਕਿਸੇ ਵੱਲ ਦੀ ਚੰਡੀਗੜ੍ਹ ਜਾਂ ਨਵੈਦਾ ਦਿੱਲੀ ਜਾਣਾ ਪੈਂਦਾ ਬਾਅਦ ਚ ਉਹ ਕਹਿੰਦੇ ਸਿਸਟਮ ਨਹੀਂ ਵਧੀਆ ਉਹਨਾਂ ਨੂੰ ਬਾਹਰ ਨਿਕਲਣਾ ਹੀ ਪੈਂਦਾ ਯਾਨੀ ਕਿ ਸਿਸਟਮ ਦੇ ਬੰਦੇ ਵੀ ਗਏ ਨੇ ਮੂਵ ਹੋਏ ਨੇ ਕਿ ਜੇ ਸਿਸਟਮ ਨਹੀਂ ਸਹੀ ਹੈਗਾ ਤਾਂ ਹੀ ਜਾਂਦਾ ਆਪਾਂ ਸਿਸਟਮ ਨੂੰ ਬਦਲਣਾ ਦੂਸਰੀ ਗੱਲ ਇਹ ਕਿ ਬਿਆ ਦੁਬਈ ਤੋਂ ਆਇਆ ਸੀਗਾ ਮੈਨੂੰ ਪੁਲਿਸ ਪ੍ਰੂਫ ਚਾਹੀਦੀ ਦੁਬਈ ਤੋਂ ਤੇ ਫਿੰਗਰਪ੍ਰਿੰਟ ਕਰਵਲ ਲਈ ਮੈਂ ਦੇ ਮੈਂ ਡੇਢ ਮਹੀਨਾ ਚੱਕਰ ਘੜਦਾ ਰਿਹਾ ਬਿਨਾਂ ਸਫਾਰਸ਼ ਤੋਂ ਮੇਰਾ ਉਹ ਕੰਮ ਨਹੀਂ ਹੋਇਆ ਮੇਰੇ ਫਰੈਂਡ ਵੀ ਫਰੈਂਡ ਨੇ ਕਿਸੇ ਦੀ ਸਫਾਰਸ਼ ਕੋਈ ਫਿਰ ਉਹ ਕੁਰਤੀ ਵਾਲੇ ਨੇ ਕੰਮ ਕੀਤਾ ਡੇਢ ਮਹੀਨਾ ਮੈਂ ਆਪਣੇ ਬੇਸ ਤੇ ਰੋਲਦਾ ਰਿਹਾ ਕਿ ਮੈਂ ਇਦਾਂ ਹੀ ਕਰਾਉਣਾ ਕੰਮ ਜਿੱਦਾਂ ਬਾਹਰ ਹੁੰਦਾ ਕਿ ਜੈਨੂਇਨ ਪਰ ਨਹੀਂ ਮੈਨੂੰ ਸਫਾਰਸ਼ ਲੈਣੀ ਪਈ ਤੇ ਫਿਰ ਮੇਰਾ ਕੰਮ ਹੋਇਆ ਸਸ ਜੀ ਨੇ ਕਹਿਣਾ ਇਹ ਕਿ ਸਿਸਟਮ ਨੂੰ ਬਦਲਾਈ ਆਪਾਂ ਨੂੰ ਥੈਂਕ ਯੂ ਵਪਾਰਕਸ ਜੀ ਇੱਕ ਬੇਨਤੀ ਕਰਦਾ ਜੇ ਅਸੀਂ ਸਾਡੀਆਂ ਪਿਛਲੇ ਸਿਆਣੇ ਨਹੀਂ ਹੁੰਦੇ ਤਾਂ ਹਾਲਾਤ ਪੰਜਾਬ ਦੇ ਬਹੁਤ ਖਰਾਬ ਹੈ ਸਭ ਤੋਂ ਮੁੱਦਾ ਪਾਣੀਆਂ ਦਾ ਉੱਥੇ ਹੈ ਕਿਹੜੀ ਮੁਕਤ ਸਮਾਜ ਸਿਰਜ ਸਕਦੀ ਹੈ ਨਸ਼ਿਆਂ ਨੂੰ ਕੰਟਰੋਲ ਕਰ ਸਕਦੀ ਹੈ ਪਾਣੀਆਂ ਤੇ ਗੱਲ ਕਰ ਸਕਦੀ ਹੈ ਪੰਜਾਬ ਦੇ ਮੁੱਦੇ ਬਹੁਤ ਸਿਰ ਚੜੇ ਹੋਏ ਐ ਤੇ ਲੋਕ ਆਕੀ ਹੋਏ ਹੋਏ ਬਹੁਤ ਇਸ ਦਾ ਖਿਆਲ ਰੱਖਣ ਦੀ ਲੋੜ ਐ ਹੁਣ ਉਹ ਸਿਆਣੇ ਹੋਣ ਉਹਨਾਂ ਦੀ ਹੋਣੀ ਨੀਅਤ ਹੋਈ ਹੋਈ ਐ ਆਉਣ ਵਾਲੇ 10-15 ਸਾਲਾਂ ਚ ਪਤਾ ਲੱਗ ਜੂ ਜਿਵੇਂ 130 ਬਲਾਕਾਂ ਚੋਂ 110 ਬਲਾਕ ਡਾਰਕ ਜ਼ੋਨ ਚ ਆ ਗਏ ਇਸ ਤਰ੍ਹਾਂ ਹੀ ਅਗਲੇ ਆ ਜਾਣਗੇ ਥੇਹਾਂ ਬਣ ਜਣਗੇ ਥੇਹਾਂ ਜੇ ਨਾ ਪਾਣੀ ਸਮਝਿਆ ਫਾਈਨਲ ਆ ਸਾਲਟ ਵੇਖ ਲਿਓ ਫਿਲਮ ਕੀ ਹਾਲ ਅਕੀਦ ਦੇ ਵਿਚ ਮਾਨਕ ਦਾ ਕੀ ਤੇ ਕੱਲ ਨੂੰ 11 ਵਜੇ ਫੇਰ ਮੁਰਦਾ ਮਾਨਕ ਦੀ ਕਲੀ ਰੱਬ ਰਾਖਾ